2150 AM ਤੇ ਦਾ ਦਿਨ ਹੈ ਮੰਗਲਵਾਰ ਹੈ ਵਰਾ 2017 ਦਾ 4 ਮਾਗ ਨਾਨਕਸ਼ਹੀ ਸੰਮਤ 548 ਨਿੱਘਾ ਹਾਰਦਿਕ ਸਵਾਗਤ ਹੈ ਜੀ ਆਜੋ ਫਿਰ ਅੱਜ ਦੀ ਲੋਕ ਸੱਭ ਦੇ ਵਿੱਚ ਅਸੀਂ ਘਟਾਵਾਂ ਗੱਲਾਂ ਬਾਤਾਂ ਗੀਤ ਸੰਗੀਤ ਸੁਰਗ ਦੇ ਮਸਲਿਆਂ ਤੇ ਗੱਲਬਾਤ ਹੋਈ ਹੈ ਕਿਹੜਾ ਜ ਫੇੜਿਆ ਹੋਇਆ ਪਹਿਲੇ ਹਿੱਸੇ ਦੇ ਵਿੱਚ ਖਬਰਾਂ ਥੋੜੀਆਂ ਜਿਹੀਆਂ ਸੁਣਾਉਣਾ ਤੇ 11:40 ਤੇ ਨਿਸ਼ਾ ਡੋਗੜਾ ਜੀ ਨੇ ਤੁਹਾਡੀ ਸਿਹਤ ਕਿਵੇਂ ਸੰਭਾਲਣੀ ਹੈ ਉਹਦੀ ਗੱਲ ਕਰਨੀ ਹੈ ਤੇ 12:10 ਤੋਂ ਲੈ ਕੇ 1:00 ਤੱਕ ਡਾਕਟਰ ਸ਼ਿੰਦਰ ਪੁਰੇਵਾਲ ਪੰਜਾਬ ਦੀ ਰਾਜਨੀਤੀ ਨੂੰ ਖੜਕਾਉਣਗੇ ਅੱਜ 1:10 ਤੇ ਗੁਰਜਤ ਸਿੰਘ ਗੋੜਾ ਨੇ ਜੀਵਨ ਚਰਚਾ ਦੇ ਵਿੱਚ ਆਉਣਾ ਹੈ 2:00 ਤੱਕ ਇਹ ਪ੍ਰੋਗਰਾਮ ਸਾਰਾ ਪਰ ਗੱਲਾਂ ਬਹੁਤ ਵਧੀਆ ਹੋਣ ਅਗਲੇ ਸੋਮਵਾਰ ਫੇਰ ਸਕਰੀਪ ਸਿੰਘ ਔਣੀ ਸੁਨੀਲ ਸ਼ਰਮਾ ਜੀ ਤੇ ਸਰ ਜਸਵਿੰਦਰ ਸਿੰਘ ਵਿਦੇਸ਼ਾ ਫੇਰ ਪੰਜਾਬ ਦੇ ਪਾਣੀਆਂ ਦੀ ਲੁੱਟ ਦੀ ਕੜੀ ਅੱਗੇ ਤੋਰਨਗੇ 12 ਤੋਂ 1 ਵਜੇ ਤੱਕ ਇੱਕ ਪੰਜਾਬ ਜਾਣੇ ਉਹ ਦਾ ਪੰਜਾਬ ਕੋਈ ਗਿਆ ਹੋਇਆ ਪਾਣੀਆਂ ਦੇ ਸੰਕਟ ਪਾਣੀਆਂ ਦਾ ਸੰਕਟ ਪੰਜਾਬ ਲਈ ਖਤਰੇ ਦੀ ਘੰਟੀ ਕਿਰਪਾਲ ਸਿੰਘ ਦਰਦੀ ਦੀ 100 ਰੁਪਏ ਦੀ ਕਿਤਾਬ ਆ ਸਿਰਫ ਬਲਵੰਤ ਪ੍ਰਕਾਸ਼ਨ ਜਲੰਧਰ ਨੇ ਛਾਪੀ ਆ ਇਹ ਤੋਹਫਾ ਦਿਓ ਉੱਥੇ ਪਿੰਡਾਂ 'ਚ 10 20 50 ਕਿਤਾਬਾਂ ਦੇ ਕੇ ਮੁੰਡਿਆਂ ਨੂੰ ਦੋ ਪੜਨੋ ਉਹ ਵੋਟਾਂ ਬਾਟਾਂ ਦੀ ਗੱਲ ਛੱਡ ਦਿਓ ਵੋਟਾਂ ਤੋਂ ਬਾਅਦ ਵੀ ਉਹਨਾਂ ਨੂੰ ਪਤਾ ਲੱਗੇ ਕਿ ਪੰਜਾਬ ਦਾ ਮੁਸ਼ਕਲ ਪੰਜਾਬ ਦੀ ਕੀ ਹੈ ਪਾਣੀਆਂ ਦਾ ਸੰਕਟ ਪੰਜਾਬ ਲਈ ਖਤਰੇ ਦੀ ਘੰਟੀ ਸਰਾ ਕ੍ਰਿਪਾ ਸੀ ਦਰਦੇ ਦੀ ਇੱਕ ਬਹੁਤ ਵਧੀਆ ਕਿਤਾਬ ਤੇ ਨਾਲ ਗੀਤ ਸੰਗੀਤ ਹੋਵੇਗਾ ਤੁਸੀਂ ਸ਼ਾਮਲ ਹੋਣਾ 174 247 1550 184424715 50 ਬਰਗਰ ਪੀਜੇ ਖਾਣ ਵਾਲੀਏ ਕਦੇ ਸਾਗ ਬਣਾਵੇਂ ਪਤਾ ਫੇਰ ਲੱਗੇ ਪੋਪਕਾਰਨ ਮੱਕੀ ਦੀ ਰੋਟੀ ਖਾਵੇਂ ਫੇਰ ਲੱਗੇ ਪਬ ਫਿਰਦੀਆਂ ਚਾਰ ਕਿਤਾਬਾਂ ਪੜ ਸਿਆਣੀ ਬਣਦੀਆਂ ਬਜ਼ੁਰਗਾਂ ਵਿਚ ਪਤਾ ਫੇਰ ਲੱਗੇ ਮਾਂ ਬਾਪ ਦੇ ਸਿਰ ਤੇ ਐਸ਼ ਕਰਨ ਵਾਲੀਏ ਦੋ ਡੰਕ ਦੀ ਰੋਟੀ ਲਈ ੱਟਕੇ ਖਾਵੇਂ ਪਤਾ ਫੇਰ ਲੱਗੇ ਸੁਖਦੀਪ ਸਿੰਘ ਬਰਾੜ ਨੇ ਕਿਹੜਾ ਲਿਖਤਾ ਬਹੁਤ ਵਧੀਆ ਲਿਖਿਆ ਜਿਹੜੀ ਅਗਲੀ ਪੀੜ੍ਹੀ ਸਾਡੀ ਕੰਮ ਕਾਰ ਛੱਡ ਕੇ ਬਾਪੂਆਂ ਤੇ ਮਾਮਾ ਦੇ ਪੈਸਿਆਂ ਤੇ ਰਾਜ ਕਰਦੀ ਆ ਉਹਨਾਂ ਨੂੰ ਥੋੜਾ ਜਿਹਾ ਪਤਾ ਲੱਗੇ ਕਿ ਕਹਾਣੀ ਕੀ ਐ ਵੇਖਿਓ ਕਦੇ ਮਾਮਾ ਤੇ ਪਿਓ ਕਿਵੇਂ ਕੰਮ ਕਰਨ ਜਾਂਦੇ ਆ ਕਿਵੇਂ ਧਮੀਰੀਆਂ ਫਿਰਦੇ ਇੱਕ ਜਾਂਦਾ ਇੱਕ ਆਉਂਦਾ ਪਰ ਤੁਸੀਂ ਵੀ ਸਮਝੋ ਥੋੜਾ ਜਿਹਾ ਕੱਖ ਨਹੀਂ ਜੈਨੂ ਉਹ ਵਿਹਣੇ ਕਰਨੇ ਆ ਗਾਂ ਸਾਲ 10 ਰਹਿ ਜਾਂਦੇ ਆ ਬਸ ਨਿਬੜ ਗਿਆ ਕੰਮ ਨਾਲ ਸ਼ਕਲੋ ਬਾਦਚ ਨੰਦੰਦ ਰਹਿਣੇ ਨੇ ਤੇ ਉਧਰੋਂ ਸ਼ੂਗਰ ਹੋ ਜਾਣਾ ਨਾਲ ਜ਼ਿੰਦਗੀ ਨੂੰ ਬਰਾਬਰ ਨਾਲ ਤੁਸੀਂ ਐਪ ਡਾਊਨਲੋਡ ਕਰ ਸਕਦੇ ਹੋ ਦੋਨੇ ਚੀਜ਼ਾਂ ਰਹਿ ਜਾਂਤਰ ਲੋਕ 60 ਤੇ ਸਾਰੇ ਪ੍ਰੋਗਰਾਮ YouTube ਤੇ ਪੈ ਨੇ ਲੋਕੇ s ਤੇ ਜਿੱਥੇ ਤੁਸੀਂ ਪ੍ਰੋਗਰਾਮ ਸੁਣ ਸਕਦੇ ਹੋ ਪੰਜਾਬ ਦੇ ਵਿੱਚ ਡੇਟੇ ਦਾ ਕੰਮ ਔਖਾ ਹੈ ਫਿਰ ਵੀ ਕੋਸ਼ਿਸ਼ ਕਰਕੇ ਵੇਖ ਲਿਓ ਜੇ ਉੱਥੇ ਕੋਈ ਸੁਣ ਲੈਂਦਾ ਜਾਂ ਕਿਸ ਤਰ੍ਹਾਂ ਘੱਲਦੇ ਹੋ ਖਬਰਨਾਮੇ ਤੇ ਵੀ ਮੁੰਡੇ ਇਟਲੀ ਤੋਂ ਪ੍ਰੋਗਰਾਮ ਸਾਰਾ ਪਾਉਂਦੇ ਨੇ ਉਹ ਐਡ ਕੱਢ ਕੇ ਪਾ ਦਿੰਦੇ ਆ ਉਹਨਾਂ ਨੂੰ ਵੀ ਫੋਲੋ ਕਰ ਲਓ ਉਥੋਂ ਗਾਹਾਂ ਕਰ ਲਿਓ ਦੇਖ ਲਿਓ ਜਿਵੇਂ ਮਰ ਗੱਲ ਚੰਗੀ ਖਾਸ ਤੌਰ ਤੇ ਪਾਣੀਆਂ ਦੀ ਪੰਜਾਬ ਦੇ ਵਿੱਚ ਜ਼ਰੂਰ ਪਤਾ ਲੱਗੇ ਲੋਕ ਸਾਥ ਹੈ ਲੋਕ ਐਸ ਏ ਡਬਲ ਟੀ ਐਚ ਇਹ YouTube ਦਾ ਚੈਨਲ ਹੈ 8442471550 ਆਉਣੇ ਨੰਬਰ ਹੈ ਨਿਮੀ ਡੋਲਾਜੀ ਦਾ ਨੰਬਰ 6044406462 info@krpiaradio.com ਇਹ ਦਫ਼ਤਰ ਦੀ ਈਮੇਲ ਹੈ ਹਰਜੀਤ ਸਿੰਘ ਗਿੱਲ ਦਾ ਫੇਸਬੁੱਕ ਦਾ ਪੇਜ ਤੇ ਅਕਾਊਂਟ harjeet.g@krpiaradio.com ਸਰ ਮੰਗਟੋਣਾ ਨੇ ਕੱਲ ਫੋਨ ਕਰਕੇ ਉਹ ਕਲਾਸ 1 ਇੰਜੀਨੀਅਰ ਰਹੇ ਨੇ ਉਹਨਾਂ ਨੇ ਪੰਜਾਬ ਦੇ ਪਾਣੀਆਂ ਤਾਰੀ ਛੱਡ ਕਿਵੇਂ ਹੋਣਾ ਹੈ ਉਸ ਦੇ ਬਾਰੇ ਕਿਸ ਦਿਨ ਗੱਲ ਕਰਦੇ ਮੈਂ ਕੋਸ਼ਿਸ਼ ਕਰਾਂਗਾ ਉਹਨਾਂ ਨੂੰ ਲਾਈਨ ਤੇ ਲੈ ਕੇ ਤਾਂ ਉਹ ਦੱਸ ਸਕਣ ਕਿ ਕਿਹੜੀਆਂ ਕਿਹੜੀਆਂ ਅਸੀਂ ਤਕਨੀਕਾਂ ਜਿਹੜੀਆਂ ਉਹ ਲਾ ਸਕਦੇ ਆ ਕਰ ਸਕਦੇ ਆ ਕੇ ਸਾਡਾ ਪਾਣੀ ਬਚ ਰਿਹਾ ਇਹ ਤਾਂ ਮਹਿਸੂਸ ਨੀ ਹੋ ਰਿਹਾ ਸਾਨੂੰ ਲੱਗ ਨਹੀਂ ਰਿਹਾ ਸਾਡੀ ਧਰਤੀ ਸੀ ਪੰਜਾਬ ਚੋਂ ਤਿੰਨੇ ਰਹਿ ਗਏ ਤਿੰਨ ਸੁੱਕਦੇ ਜਾਂਦੇ ਤਾਂ ਮਾਰ ਕੁਦਰਤੀ ਪੈ ਗਈ ਗਲੇਸ਼ੀਅਰ ਉੱਪਰ ਸੁੱਕ ਗਏ ਫਰਕ ਪੈ ਗਿਆ ਵਾਤਾਵਰਨ ਦਾ ਰਹਿਦੀ ਖੂੰਦੀ ਸਾਡੇ ਹੱਕਾਂ ਤੇ ਡਾਕੇ ਵੱਜ ਗਏ ਸਾਨੂੰ ਪਤਾ ਹੀ ਨਹੀਂ ਸਾਡੇ ਰਿਪੇਰਤੀਆਂ ਲੋ ਜਿਹੜਾ ਦੁਨੀਆ ਦਾ ਉਹਦੇ ਥੱਲੇ ਸਾਨੂੰ ਨੱਪਿਆ ਜਾ ਰਿਹਾ ਫਿਰ ਵੀ ਆਪਣੇ ਆਪ ਨੂੰ ਸਾਖਰ ਕਰੋ ਪਤਾ ਲੱਗੇ ਕਿਉਂਕਿ ਪਤਾ ਨਹੀਂ ਨਾ ਹੁਣ ਜਸ ਸਿੱਟ ਦੀ ਆ 20 20 30 30 ਕਿੱਲੇ ਝੋਨੇ ਦੇ ਪਾਲ ਡੂੰਘੇ ਖੂਹ ਵਾਲੀ ਕੰਨਾਂ ਚ ਗੂੰ ਜਦ ਪਾਣੀ ਛੜ ਦਿੰਦੀ ਐ ਸਿੱਕੀ ਥੱਲੇੋਂ ਤੇ ਜੈਂ ਡੋਰੀ ਵਾਲਾ ਕੰਮ ਜਿਹੜਾ ਪੁਰਾਣਾ ਸੀ ਤੁਸੀਂ ਉਹ ਯਾਦ ਕਰ ਲੋ ਟਰੈਕਟਰ ਦੇ ਨਾਲ ਜੇ 14 ਤੇ 27 ਦੇ ਸਕੌਟ ਦੇ ਨਾਲ ਪਟਾ ਪਾ ਕੇ ਪਿੱਛੇ ਪੁਲੀ ਤੋਂ ਬਾਹਰਲੇ ਬੰਨੇ ਪਾਣੀ ਨਿਕਲਦਾ ਰਿਹਾ ਨਹੀਂ ਘੱਟ ਗੇੜਿਆਂ ਤੇ ਥੋੜੇ ਜਿਹੜੇ ਬਾਹਰਲੇ ਬੰਨੇ ਉੱਪਰ ਹੀ ਪਾਣੀ ਰੱਖ ਕੇ ਤੁਸੀਂ ਥੋੜੀ ਜਿਹੀ ਜੈਂਡੋਰੀ ਕੱਸ ਦੇਣੀ ਮਹਾਰਾਜ ਬਰੋਜ਼ਾ ਲਾ ਦੇਣਾ ਪੱਖੇ ਬਾਹਰੋਂ ਪਾਣੀ ਚੱਕਦੇ ਸੀ ਹੁਣ ਵੇਖ ਲਓ ਖੂਹੀਆਂ ਕਿੱਡੀਆਂ ਕਿੱਟੀਆਂ ਇਹ ਸਮਝ ਜਾਣਾ ਚਾਹੀਦਾ ਪਰ ਲੋਕ ਸਮਝੀ ਰਹੇ ਉੱਥੇ ਸਾਡੇ ਸਮਝਾਇਆ ਕੱਖ ਨਹੀਂ ਬਣਨਾ ਸਾਡੇ ਕੋਲ ਬਹੁਤ ਹੈ ਪਰ ਉੱਥੇ ਲਈ ਅਸੀਂ ਤਰਸਦੇ ਉੱਥੇ ਦੱਸੋ ਵੱਧ ਤੋਂ ਵੱਧ 1847 247 1500 50 ਆਉਣ ਯਰ ਨੰਬਰ ਹੈ ਥੋੜ ਚਿੜੀਆਂ ਸਾਵੀਆਂ ਰੁੱਤਾ ਨਹੀਂ ਜਿੰਦੇ ਮੇਰੀਏ ਥੋੜ ਚਿੜੀਆਂ ਸਾਵੀਆਂ ਰੁੱਤਾ ਨਹੀਂ ਜਿੰਦੇ ਮੇਰੀਏ ਮਾਲ ਲੈ ਸਿਰ ਤੇ ਜਦੋਂ ਤੱਕ ਸ਼ਾਂ ਨਹੀਂ ਜਿੰਦੇ ਮੇਰੀਏ ਵਿਛੜ ਜਾਂਦੇ ਜ਼ਿੰਦਗੀ ਦੇ ਆਪਲੇ ਇੱਕ ਤੋਂ ਧੂੜ ਵਿੱਚ ਰਲ ਜਾਂਦੀਆਂ ਪੈੜਾਂ ਨਹੀਂ ਜਿੰਦੇ ਮੇਰੀਏ ਫੇਰ ਨਾ ਜਾਣੇ ਉਡਾ ਕੇ ਲੈ ਜਾਏ ਕਿੱਥੇ ਹਵਾ ਢਾਲ ਤ ਦੀ ਕਿਹੜੀ ਥਾਂ ਨਹੀਂ ਜਿੰਦੇ ਮੇਰੀਏ ਜਿੰਦੀ ਆਖਰ ਕੱਲਿਆਂ ਵਕਤ ਦੀ ਤੁੱਪ ਸੇਕਣੀ ਚਲ ਹੀ ਜਾਂਦੀ ਰਿਸ਼ਤਿਆਂ ਦੀ ਸ਼ਾ ਨਹੀਂ ਜਿੰਦੇ ਮੇਰੀਏ ਰਹਿੰਦੇ ਦੀ ਕਬਰ ਵਿੱਚ 30 ਬਣ ਬਣ ਉੱਭਰਦੇ ਕਈ ਨਾ ਨਹੀਂ ਜਿੰਦੇ ਮੇਰੀਏ ਭਾਵਨਾਵਾਂ ਦੇ ਨਗਰ ਭਾਵਨਾਵਾਂ ਦੇ ਨਗਰ ਵਿੱਚ ਕੌਣ ਕੱਲਾ ਰੋ ਰਿਹਾ ਦੂਰ ਤੱਕ ਨੇ ਸੁਨੀਆਂ ਜੂੰਹਾਂ ਨਹੀਂ ਜਿੰਦੇ ਬੇਰੀਏ ਦੂਰ ਤੱਕ ਨੇ ਸੁਨੀਆਂ ਜੂੰਹਾਂ ਨਹੀਂ ਜਿੰਦੇ ਮੇਰੀਏ ਸਵਿੰਦਰ ਅਵਰਤ ਜਦ ਵਕਤ ਸਬਾ ਹੁੰਦਾ ਸੁੱਬੀ ਦਾ ਸੱਪ ਦੇ ਵਿੱਚ ਬੋਕੋ ਹਰਾਮ ਬੈਠੇ ਸੀ ਉਹਨਾਂ ਦੇ ਉੱਪਰ ਨਾਈਜੀਰੀਆ ਦੀ 에ਅਰ ਫੋਰਸ ਦੇ ਇੱਕ ਜੈਟ ਨੇ ਬੰਬਾਰੀ ਕਰ ਦਿੱਤੀ 100 ਬੰਦੇ ਮਰ ਬੋਕੋ ਹਰਾਮ ਦਾ ਗੜਾ ਜਿਹੜਾ ਕੈਮਰੂਨ ਦੇ ਬਾਰਡਰ ਦਾ ਏਰੀਆ ਜਿਹੜਾ ਜਿਸ ਨੂੰ ਮੇਦੂਗੁਰੀ ਕਿਹਾ ਜਾਂਦਾ ਹੈ ਤੋਂ 100 ਕਿਲੋਮੀਟਰ ਦੂਰ ਇਹ ਕੈਂਪ ਸੀ ਜਿਹਦੇ ਵਿੱਚ ਬੰਦੇ ਰਹਿ ਰਹੇ ਸੀ ਬੱਚੇ ਸੀ ਔਰਤਾਂ ਸੀ 100 ਦੇ ਕਰੀਬ ਇਹਦੇ ਵਿੱਚ ਮਾਰੇ ਗਏ ਉਹ ਕੋਹਰਾਮ ਦਾ ਕੈਂਪ ਸਮਝ ਕੇ ਉੱਪਰੋਂ ਫਾਈਟਰ ਨੇ ਜਿਹੜੇ ਨੇ ਬੰਬ ਦਿੱਤੇ ਜਿਹੋ ਜਿਹਾਲੇ ਉਹ ਜੇ ਕੁਝੇ ਪਤਾ ਨਹੀਂ ਲੱਗਿਆ ਦੁਨੀਆ ਕਿੱਥੇ ਫਿਰਦੀ ਆ ਦੁਨੀਆ 10 ਪੈਸੇ ਕਿਤੇ ਕੰਧਾਰ ਦੀਆਂ ਦੀਆਂ ਸੜਕਾਂ ਤੇ ਹੁਣ ਸਾਡੀਆਂ ਸੈਟਲਾਈਟਸ ਇੱਥੋਂ ਬੈਠੇ ਵੇਖਦੀਆਂ ਫੜਨਾ ਨਾ ਫੜਨਾ ਅਲੱਗ ਗੱਲ ਹੈ ਪਰ ਇਨਾ ਦੇਸ਼ਾਂ ਦੇ ਵਿੱਚ ਜਿੱਥੇ ਵਕਤ ਦੇ ਮਾਰੇ ਉਹੀਓ ਲੋਕ ਸਾਥ ਬਣਿਆ ਪਾਣੀ ਖੜੋ ਮਰ ਰਹੇ ਹੈ ਤੇ ਰਹਿਦਾ ਖੂੰਦਾ ਬੋਕੋ ਹਰਾਮ ਰਹੇ ਹੈ ਦੇ ਵਿੱਚ ਸ਼ਰੀਆ ਤੇ ਇਸਲਾਮ ਦੇ ਲਾਅ ਦੀ ਗੱਲ ਇਸਲਾਮ ਦੇ ਰਾਜ ਦੀ ਗੱਲ ਚੱਲ ਰਹੀ ਹੈ ਤੇ ਬੋਕੋ ਹਰਾਮ ਦੇ ਆਈਸਿਸ ਦੇ ਨਾਲ ਪੈਨਾਲ ਕੈਦਾ ਦੇ ਨਾਲ ਵੀ ਸੰਬੰਧ ਰਹੇ ਨੇ ਉਹਨਾਂ ਵੱਲੋਂ ਭੁਜਾਏ ਲੋਕ ਤੰਮੂਆਂ 'ਚ ਪਏ ਸੀ ਤੇ ਉਹਦੇ ਉੱਪਰ nigeria air force دے ایک جہاز نے بمب ਸੜتے تے 100 جنے مر گئے 100 تا ہلے دسیا ہی ہے 100 ਨਾਲ نہیں گل بات بنی ہونی میجر جنن لکی ارا بورڈ نے جڑا کمانڈر ہے اپریشن لیفیا ڈولدا اس نے کہیا کہ یہ غلطی ہوگی غلط چیز فیل ہو گئی تے sadde بہلو بہت وجرے غلطی ہوگی 100 جنے تے 20 او دے وچ ایڈ ورکر سی او باقی زخمی کنے ہوں گے 100 نہیں بندے بد مرے ہون ਦੱਸਿਆ ਸਹਾ ਉਹ ਕੁਝ ਤਾਂ ਦੱਸਣਾ ਹੀ ਆ ਜਿੱਥੇ ਪਤਾ ਹੀ ਕੁਝ ਨਹੀਂ ਆਪਰਾ ਪੱਕਣੀ ਨੇ ਤੇ ਬਲਡੋਜਰ ਨਾਲ ਧੱਕੇ ਥੱਲੇ ਸਿੱੜ ਨੇ ਮਾਰੇ ਨੇ ਇਰਾਕ ਤੇ ਸੀਰੀਆ ਦੇ ਇਰਾਕ ਦੇ ਵਿੱਚ ਲੋਕ ਯਜ਼ੀਦੀਆਂ ਦੀਆਂ ਮੈਂ ਤਾਂ ਸੋਚਦਾ ਠੀਕ ਆ ਸੀਰੀਆ ਦੇ ਵਿੱਚ ਮੁਸ਼ਕਲ ਸੀ ਸੀਰੀਆ ਦੇ ਵਿੱਚ ਲੋਕਾਂ ਨੇ ਆਪਣੇ ਰਾਜ ਦੇ ਤਖਤਾ ਪਲਟਣ ਲਈ ਗੱਲ ਕੀਤੀ ਤੇ ਉੱਥੇ ਮੁਸ਼ਕਲ ਪੈ ਗਈ ਪਰ ਯਜ਼ੀਦੀ ਤਾਂ ਉਹਨਾਂ ਦਾ ਨਸਲ ਘਾਤ ਉਸ ਤਰ੍ਹਾਂ ਹੋ ਰਿਹਾ ਘਟ ਗਿਣਤੀ ਦੇ ਸੌਰਤ ਜੇਕਰ ਰਿਫਿਊਜੀ ਲਿਓਣੇ ਚਾਹੀਦੇ ਨੇ ਜ਼ਜ਼ੀਦੀ ਲੋਕ ਲਿਓਣੇ ਚਾਹੀਦੇ ਅਸਲ ਜਿਹੜੇ ਇਸ ਸਮੇਂ ਜਿਨ੍ਹਾਂ ਨੂੰ ਜ਼ਰੂਰਤ ਸਭ ਤੋਂ ਵੱਡੀ ਉਹਨਾਂ ਦੀ ਪ੍ਰਾਇੋਰਟੀ ਚਾਹੀਦੀ ਹੈ ਦੁਨੀਆ ਜਿਹੜਾ ਉਹ ਲੜਾਈ ਦੇ ਵਿੱਚ ਸਭ ਕੁਝ ਜਾਇਜ਼ ਹੈ ਜਿਸ ਤਰ੍ਹਾਂ ਪਿਆਰ ਤੇ ਜਾਇਜ਼ਾ ਕਹਿੰਦੇ ਪਰ ਇਹ ਬਹੁਤ ਵੱਡੀ ਮੁਸ਼ਕਲ ਜਿਹੜੀ ਲੋਕਾਂ ਲਈ ਸੋ ਇਹ ਖਬਰਾਂ ਆ ਰਹੀਆਂ ਨੇ ਨਜ਼ੀਰੀਆ ਦੇ ਵਿੱਚ ਰਾਹਤ ਕੈਂਪਾਂ ਦੇ ਵਿੱਚ ਬੰਦੇ ਜਿਹੜੇ ਸੀ ਇਸਤਰੀਆਂ ਲੋਕ ਉਹਨਾਂ ਤੇ ਬੰਬਾਰੀ ਹੋ ਗਈ। ਵਪਾਰਕ ਸੁਨੇਸ਼ 11:27 ਮਿੰਟ ਹੋ ਗਏ ਜੀ। ਮੰਗਲਵਾਰ ਦਾ ਦਿਨ ਹੈ। ਸਾਰਿਆਂ ਦਾ ਤੁਹਾਡਾ ਧੰਨਵਾਦ ਹੈ। ਕੱਲ ਦੇ ਪੰਜਾਬ ਦੇ ਪਾਣੀਆਂ ਦੀ ਗੱਲ ਤੁਸੀਂ ਬਹੁਤ ਪਸੰਦ ਕੀਤੀ ਹੈ। ਧੰਨਵਾਦ ਹੈ ਤੁਹਾਡਾ। ਮੇਅਰ ਹੈਪਨਰ ਦੀ ਗੱਲ ਮੈਂ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਸਮਝ ਗਏ ਵੈਸੇ ਤਾਂ ਸਾਰੇ ਉਹ ਜਿਸ ਤਰ੍ਹਾਂ ਪਹਿਲਾਂ ਆਪਾਂ ਮਿਲ ਰੇਟ ਦੀ ਗੱਲ ਤੇ ਸਾਬ ਬਰਾੜ ਇੱਕ ਦਿਨ ਐਵਸਫੋਰਟ ਦੱਸ ਕੇ ਗਏ ਸੀ ਕੇ ਕੀ ਕਹਾਣੀਆਂ ਦੇਖੋ ਇਹਦੇ ਵਿੱਚ ਕੋਈ ਦੂਸਰੀ رائے ਨਹੀਂ ਕਿ ਸਾਨੂੰ ਨਹੀਂ ਪਤਾ ਕਿ ਮਿਲ ਰੇਟ ਕੀ ਹੁੰਦੀ ਆ ਪਰਸੈਂਟੇਜ ਕੀ ਹੁੰਦੀ ਆ ਪੈਸੇ ਕਿੰਨੇ ਵਧੇ ਸਾਰਾ ਕੁਝ ਪਤਾ ਗੱਲ ਇਵੈਂਚੁਅਲੀ ਕੰਦ ਜੇ ਗਿੱਲੀ ਹੋਵੇ ਉਹ गिर ਪੈਂਦੀ ਇਹ ਜਿਹੜੀਆਂ ਸੜਨ 3-3 ਲੱਖ ਦੀਆਂ ਐਸੈਸਮੈਂਟਾਂ ਵਧੀਆਂ ਇਹ ਖਤਰੇ ਦੀ ਘੰਟੀ ਹੈ ਜਿਨੇ ਘਰ ਦੇ ਵਿੱਚੇ ਰਹਿਣਾ 25-30 ਸਾਲ ਜੀਨੇ ਘਰ ਵੇਚਣਾ ਹੀ ਲੱਖ ਕਈ ਇਸ ਦੇ ਵਿੱਚ ਵਧੀਆਂ ਕੀਮਤਾਂ ਦੀਆਂ ਗੱਲਾਂ ਬਹੁਤ ਕਰਨ ਲੱਗੇ ਸਾਡਾ ਘਰ ਮਿਲੀਅਨ ਦਾ ਹੋ ਗਿਆ ਸਾਡਾ 11 ਲੱਖ ਕੀ ਕਰਾਉਣਾ ਤੁਸੀਂ 11 ਲੱਖ ਤੋਂ ਜਾਂ ਤੁਹਾਡੇ ਸਿਰ ਤੇ ਸ਼ਰਤਾਂ ਤੁਸੀਂ ਰੱਖਣੀਆਂ ਮੈਂ ਹੈਪਨਰ ਦੇ ਨਾਲ ਗੱਲਾਂ-ਵੱਤਾਂ ਜਿਹੜੀਆਂ ਹੋਈਆਂ ਵੋਟਾਂ ਦੇ ਵੇਲੇ ਜਦੋਂ ਆਏ ਸਨ ਅਕਸਰ ਉਹ ਕਹਿੰਦੇ ਸੀ ਨੇ 2 ਮਹੀਨੇ ਬਾਅਦ ਆਇਆ ਕਰੋ ਕੌਣ ਪੁੱਛਦਾ ਨਗਰ ਕਹਨੇ ਚ ਤੂਤੀ ਦੀ ਫਿਰ ਗੱਲਾਂ ਹੋਰ ਹੋ ਜਾਂਦੀਆਂ ਜਿਹੜੇ ਵਿਰੋਧਤਾ ਕਰਦੇ ਆ ਫਿਰ ਬੁੱਕਲਵੇ ਬਣ ਜਾਂਦੇ ਆ ਨੇੜੇ ਬਣ ਜਾਂਦੇ ਆ ਨਾਲੇ ਇਸ ਦੁਨੀਆ ਦੇ ਵਿੱਚ ਫੈਂਸੀ ਸ਼ਬਦ ਬੜਾ ਵਧੀਆ ਫੈਂਸੀ ਬੰਦੇ ਫੈਂਸੀ ਬੈਠਣ ਵਾਲੀ ਚੀਜ਼ ਫੈਂਸੀ ਸਟੂਡੀਓ ਤੇ ਮਲਮੀਆਂ ਗੱਲਾਂ ਕਰਕੇ ਹੱਕ ਦੀਆਂ ਗੱਲਾਂ ਕਰਕੇ ਜਿਹੜਾ ਮਰਜ਼ੀ ਸੱਤ ਜਿੱਥੇ ਰੇਤ ਫਿਰਣੀ ਹੈ ਫਿਰ ਉੱਥੇ ਜੇ ਤੁਹਾਡੀਆਂ ਗੱਲਾਂ ਹੋਣੀਆਂ ਨੇ ਉਹ ਕਰੜੀਆਂ ਹੋਣੀਆਂ ਜਦੋਂ ਉਹਨਾਂ ਨੂੰ ਕਿਹਾ ਕਿ ਤੁਸੀਂ ਕਹਿ ਕੇ ਨਹੀਂ ਆਇਓ ਕਰਨ ਤੁਸੀਂ ਪੁੱਛਿਆ ਨਹੀਂ ਮੈਂ ਕਿਹਾ ਬੀਬਾ ਜੀ ਉੱਚੀ ਤੁਸੀਂ ਬਹਿਨੇ ਬਹੁਤ ਉੱਚਿਆਂ ਦੱਤਰਾ ਚ ਮੇਰੀ ਰੇਂਜ ਹੈ ਨਹੀਂ ਉੱਥੇ ਤੱਕ ਮਾੜੇ ਪੰਜਾਬ ਪਿੰਡਾਂ ਦੇ ਵਿੱਚ ਕਦੇ ਟਾਵਰ ਹੈ ਨਹੀਂ ਮੋਬਾਈਲ ਫੋਨ ਦੀ ਰੇਂਜ ਮੁੱਕ ਜਾਂਦੀ ਹੈ ਜਿਵੇਂ ਉਸ ਕਹਿੰਦੇ ਵੀ ਨਹੀਂ 100 ਡਾਲਰ ਦਾ ਫਰਕ ਪੈਣਾ ਤੇ ਜਿਹੜੇ 5 ਲੱਖ ਵਧੇ ਆ ਘਰ ਉਹਨਾਂ ਦੀ ਕੀਮਤ ਦਾ ਫਰਕ ਪਊਗਾ ਫੇਰ ਗੱਲ ਲੈਵਿਸ ਦੀ ਚੱਲੀ ਉਹ ਕਹਿੰਦੇ ਅਸੀਂ ਲੈਵਿਸ ਕਰਦੇ ਮੈਂ ਕਿਹਾ ਫੇਰ ਲੈਵਿਸ ਨੂੰ ਮੋੜ ਕੇ ਲੈ ਕੇ ਆਇਆ ਕਰੋ ਸਾਡੇ ਲਈ ਮੋੜ ਕੇ ਲਾਉਂਦੇ ਸਕੂਲਾਂ ਸਾਡੇ ਜਵਾਕ ਬਾਹਰ ਬੈਠੇ ਆ ਸੜਕਾਂ ਸਾਡੀਆਂ ਟੁੱਗੀਆਂ ਤੇ ਲੋਕ ਇਮੀਗ੍ਰੈਂਟ ਹੋ ਰਹੇ ਨੇ ਸੀਰੀਅਨ ਲੋਕ ਬਹੁਤ ਆ ਰਹੇ ਨੇ ਸ਼ਹਿਰ ਦਾ ਮੂੰਹ ਮਹਾਂਦਰਾ ਬਦਲੇਗਾ ਉਹਨੂੰ ਦੱਸਾਂ ਵਾਲਾ ਸਾਲਾਂ 'ਚ ਬਹੁਤਾਤ 'ਚ ਇਹ ਲੋਕ ਹੋਣਗੇ ਜਿਹੜੇ ਪਹਿਲਾਂ ਲੋਕ ਰਹਿੰਦੇ ਆ ਉਹ ਬਾਹਰ ਕਿੱਧਰ ਨੂੰ ਜਾਣਗੇ ਗੈਟੋ ਬਣੂ ਨਿਊਟਨ ਅਲੱਗ ਹੋਜੂ ਅਹ ਏਰੀਆ ਤੇ ਅਮੀਰ ਲੋਕ ਨੇ ਜਿਹੜੇ ਉਹ ਇਸੇ ਦੀ ਚ ਨਿਕਲ ਜਾਣਗੇ ਕੋਈ ਅਹ ਕੋਈ ਸਮਾਂ ਆਉ ਪੰਜਾਂ ਦਸਾਂ 15 ਸਾਲਾਂ ਤੱਕ ਗੇਟਡ ਕਮਿਊਨਿਟੀਾਂ ਚ ਲੋਕ ਬਣਨ ਨਾਲ ਨਾਲ ਹਾਈਵੇ 10 ਦੇ ਬਾਕੀ ਵੀ ਲਾ ਦੇਣੀਆਂ ਗੇਟ ਬਣਾ ਦੇਣੇ ਨੇ ਤੇ ਮਤਲਬ ਮਹਿੰਗੇ ਵਾਲੀ ਕਹਾਣੀ ਜਿਹੜੀ ਅਪਰ ਕਾਸਟ ਲੋਅਰ ਕਾਸਟ ਜਿਹੜੀ ਪਿੱਛੇ ਸਿਸਟਮ ਹੈ ਉਹੀ ਕਹਾਣੀ ਇੱਥੇ ਅਵੈਂਚੂਲੀ ਹੋਏਗੀ ਤੇ ਜਾਂ ਫਿਰ ਅਸੀਂ ਖੇਤਾਂ ਚੋਂ ਬੜਾਂਗੇ ਖੇਤਾਂ ਨੂੰ ਮੁੱਕ ਜਾਣੇ ਆ ਆ ਤੁਹਾਡਾ ਜਿਹੜਾ ਸਨ ਐਵਰਸਪੋਰਟ ਦੇ ਵਿੱਚ ਵਿੱਚ ਹੈ ਇਹ ਵੇਖਿਓ ਐਗਰੀਕਲਚਰ ਲੈਂਡ ਰਿਜ਼ਰਵ ਨੇ ਇਹ ਚੇਂਜ ਨਹੀਂ ਹੋਣੇ ਜਗਾ ਘਟ ਜਾਣੀਆਂ ਬਹੁਤ ਜਗਾ ਤੇ ਫਿਰ ਕੌਂਸਲਰ ਗਿੱਲ ਦੇ ਨਾਲ ਉਹ ਕਹਿੰਦੇ ਵੀ ਪ੍ਰਾਣੀਆਂ ਨੇਬਰਹੂਡਸ ਨੇ ਇਹਨਾਂ ਦੇ ਵਿੱਚ ਮੁਸ਼ਕਲ ਆ ਜਿਸ ਤਰ੍ਹਾਂ ਨਿਊਟਨ ਆ ਜੇ ਵੀ ਇਹਨਾਂ ਚ ਹਲੇ ਫੈਸਿਲਿਟੀਆਂ ਅਸੀਂ ਹੋਰ ਦੇ ਰਹੇ ਆ ਟਾਈਮ ਲੱਗੇਗਾ ਦੇਖੋ ਇਹਦੇ ਵਿੱਚ ਕੋਈ ਸੈਕੰਡ ਥਾਟ ਗੱਲ ਨਹੀਂ ਉਹੀ ਪੁਲਿਸ ਸਾਊਥ ਤੇ ਫੇਜ਼ਰ ਹਾਈਟ ਦੇ ਵਿੱਚ ਪੰਜਾ ਚਾਰ ਮਿੰਟਾਂ ਚ ਦਰ ਤੇ ਉਕਰਾ ਕੇ ਤੇ ਰਹਿੰਦੀ ਹੈ ਉਹੀ ਪੁਲਿਸ ਨਿਊਟਨ ਦੀਆਂ ਤੇ ਗਿਲਫਰਡ ਦੀਆਂ ਨਹੀਂ ਇਹ ਗੱਲ ਠੀਕ ਹੈ ਸੀਐਮਪੀ ਪੁਲਿਸ ਅਫੀਸਰ ਘਟਨੇ ਬਾਕੀ ਰੈਫਰੈਂਡਮ ਦੀ ਗੱਲ ਹੋਈ ਮੇਰੇ ਕਿਤੇ ਨਾ ਕਿਤੇ ਯਾਦ ਹੈ ਕਿ ਗੱਲ ਕਿਤੇ ਚੱਲੀ ਸੀ ਕਿ ਅਸੀਂ ਰੈਫਰੈਂਡਮ ਕਰਵਾਵਾਂਗੇ ਔਰਡ ਸਿਸਟਮ ਪਰ ਕਲ ਮੇਅਰ ਕਹਿੰਦੇ ਵੀ ਨਾ ਇਹ ਤਾਂ ਗੱਲੇ ਨੀ ਹੋ ਸਕਦੀ ਤੁਹਾਡੇ ਸਾਹੇ ਕਾਉਂਸਲਰ ਨੇ ਜੀ ਨਾਲ ਮਰਜ਼ੀ ਕਰੋ ਸਾਹੇ ਤਾਂ ਹੈ ਸਾਡੀ ਰੇਂਜ ਚ ਹੈ ਨੀ ਕੋਈ ਕਿਹੜਾ ਲੱਗਾ ਉੱਥੇ ਵੱਡਿਆਂ ਦੀਆਂ ਗੱਲਾਂ ਵੱਡੇ ਹੀ ਸੁਣਦੇ ਔਰ ਇਹ ਕਿਤੇ ਵੀ ਦੁਨੀਆ ਚ ਚਲੇ ਜਾਓ ਮਿੱਤਰੋ ਕੋਈ ਅਜਿਹੀ ਜਗ੍ਹਾ ਨਹੀਂ ਜਿੱਥੇ ਜਿਹੜੇ ਨੇ ਸੋਰਸ ਨੇ ਉਹ ਕੰਮ ਨਾ ਕਰਨ ਪਰ ਫਿਰ ਵੀ ਇਹ ਉਹ ਕਹਿੰਦੇ ਨਹੀਂ ਤੁਹਾਡਾ ਪ੍ਰਾਪਰਟੀ ਟੈਕਸ 100 ਡਾਲਰ ਵਧੇਗਾ ਇਹ ਨੇ ਦੱਸਿਆ ਵੀ ਸਾਡੀ ਬਕਟ ਹੁੰਦੀ ਆ ਬਜਟ ਦੀ ਗੱਲ ਕਰਦੇ ਸੀ ਇਹਦੇ ਵਿੱਚੋਂ ਲੋਕਾਂ ਜੀ ਵੀ ਆਰ ਡੀ ਲਈ ਅਸੀਂ ਲੈਨੇ ਆ ਪੈਸੇ ਤੇ ਉਹਦੇ ਲਈ ਲੈਨੇ ਆ ਦੇ ਵਿੱਚੋਂ ਵਾਪਸ ਵੀ ਹੋਣਾ ਚਾਹੀਦਾ ਆਪਰੇਸ਼ਨ ਦੇ ਲਈ ਉਹ ਪੈਸੇ ਜਾਂਦੇ ਆ ਪਰ ਸਿਟੀ ਦੀਆਂ ਸੜਕਾਂ ਜੇ ਤੁਸੀਂ ਨਿਊਟਨ ਦੀਆਂ ਸੜਕਾਂ ਅੰਦਰ ਲੀਆਂ ਵੇਖੋ ਬਹੁਤਾਤ 126 ਨੂੰ ਵੇਖ ਲਿਓ ਤਾਲੇ-ਤਾਲੇ ਕਿੰਨੇ ਕੈਂਪਾਂ ਖੜੀਆਂ ਨੇ ਖਿੜਕੀ ਮੇਂ ਆਪਣੇ ਖਿੜਕੀਆਂ ਨੇ ਤੇ ਕਿਤੇ ਸ਼ੋਲਡਰ ਹੈ ਨਹੀਂ ਕਿਤੇ ਕਰਨ ਵਾਲਾ ਬਹੁਤ ਕੁਝ ਹੈ 18 ਦੇ ਵਿੱਚ ਵੋਟਾਂ ਪੈਣੀਆਂ ਆਹ ਸਾਲ ਲੰਘ ਕੇ 18 ਦੇ ਸ਼ੁਰੂ ਚ ਤੇਜ਼ੀ ਹੋਊਗੀ ਕੋਸ਼ਿਸ਼ ਕਰ ਰਹੇ ਨੇ ਉਹ ਕਹਿੰਦੇ ਰੈਪਿਡ ਗ੍ਰੋਥ ਹੋ ਰਹੀ ਆ ਬੰਦੇ 12-14 ਹਜ਼ਾਰ ਹਰ ਸਾਲ ਆ ਰਹੇ ਨੇ ਸਰੀ ਦੇ ਵਿੱਚ 5 ਲੱਖ 200 ਹੋ ਗਈ ਹੈ ਤੇ ਇਸ ਤਰ੍ਹਾਂ ਵੱਧਦੀ ਗਈ ਵੱਧਦੀ ਗਈ 6 ਲੱਖ ਹੋ ਜਾਣੇ 2020 ਤੱਕ ਜਗਾ ਸਾਡੇ ਕੋਲ ਹੈ ਹਲੇ ਰਹਿਣ ਨੂੰ ਫਾਸਟੈਸਟ ਗਰੋਇੰਗ ਸਿਟੀ ਹੈ ਪਰ ਲੋਕ ਕਿਸ ਤਰ੍ਹਾਂ ਮਹਿਸੂਸ ਕਰਦੇ ਆ ਕਿ ਉਹਨਾਂ ਦੀ ਸੁਣਵਾਈ ਜਿਹੜੀ ਸੁਣਵਾਈ ਸਿਟੀ ਹਾਲ ਦੇ ਵਿੱਚ ਹੈ ਇਹ ਉਹ ਬਾਕੀ ਕਾਉਂਸਲਰ ਜਾਣਦੇ ਆ ਕਿਉਂਕਿ ਜਦ ਤੁਸੀਂ ਉਸ ਰਤਵੇ ਤੇ ਬਹਿ ਜਾਂਦੇ ਆ ਫਿਰ ਗੱਲਾਂ ਹੋਰ ਨੇ ਵੋਟਾਂ ਵੇਲੇ ਗੱਲਾਂ ਹੋਰ ਨੇ ਕੈਂਪੇਨ ਹੋਰ ਹੈ ਫਿਰ ਇਹ ਕਾਉਂਸਲਰ ਤੇ ਮੇਅਰ ਕਿਵੇਂ ਤੁਹਾਨੂੰ ਆ ਕੇ ਮਿਲਣ ਲੱਗ ਜਾਂਦੇ ਆ ਘਰ ਘਰ ਸੋਡੇ ਇਕੱਠਾਂ ਚ ਕਿਵੇਂ ਰਹਿੰਦੇ ਤੇ ਜਦ ਫਿਰ ਜਿੱਤ ਜਾਂਦੇ ਆ ਤੇ ਫਿਰ ਡਿਸਪੀਅਰ ਕਿਉਂ ਹੋ ਜਾਂਦੇ ਉਹਦਾ ਜਵਾਬ ਉਹ ਆ ਕਹਿੰਦੇ ਅਸੀਂ ਬਿਜ਼ੀ ਸਿੰਘ ਕਾਂਗਰਸ 600 472 0424 ਗੁਰਪ੍ਰੀਤ ਸਿੰਘ ਗਰੇਵਲ 778 846 9942 ਲੋਟ ਪਟਾਉਣੀਆਂ ਕੋਈ ਡਰੇਨ ਟਾਈਪ ਪਾਉਣੇ ਨੇ ਕੋਈ ਅ ਰੇਤਾ ਬਜਰੀ ਚਾਹੀਦੀ ਹੈ ਟਰੱਕਾਂ ਦਾ ਕੰਮ ਐਕਸਕੇਵੇਟਿੰਗ ਦਾ ਕੰਮ ਆ ਪੰਜਾਬ ਦੇ ਨੌ ਤੇ ਫਾਈਵ ਰਿਵਰਜ਼ ਐਕਸਕੇਵੇਟਿੰਗ ਹਰਪ੍ਰੀਤ ਸਿੰਘ ਕਾਂਗ 6677270424 ਤੇ ਤੁਸੀਂ ਫੋਨ ਕਰ ਸਕਦੇ ਹੋ ਇੱਕ ਕੰਪਨੀ ਚ ਲੋਕ ਸਾਥ ਦਾ ਹਵਾਲਾ ਦਿਓ ਤਾਂ ਤੁਹਾਨੂੰ ਖਾਸ ਡਿਸਕਾਊਂਟ ਮਿਲੇਗਾ ਗ੍ਰੀਨ ਇੰਡੀਅਨ ਕੁਜ਼ੀਨ 6045033535 ਐਵਨਿਊ ਵਾਲੇ ਪਲਾਜ਼ੇ ਚ ਪੀਜ਼ਾ ਮਠਾਈ ਨਾਲ ਭਾਰਤੀ ਖਾਣੇ ਆਰਡਰ ਕਰੋ ਤੇ ਬੈਠ ਕੇ ਖਾ ਕੇ ਆਓ ਬਹੁਤ ਵਧੀਆ ਰੈਸਟੋਰੈਂਟ ਨਵੇਂ ਸ਼ਖ ਤੇ ਬਹੁਤ ਵਧੀਆ ਕੁਕਿੰਗ ਕਰਦੇ ਆ ਗ੍ਰੀਨ ਇੰਡੀਅਨ ਕੁਜ਼ੀ 6545033535 ਸਵਰਨ ਚਾਹਲ ਜੀ ਲਾਈਨ ਨੰਬਰ 2 ਅਜੀ ਗੱਲ ਜੀ ਸਾਥ ਸਾਹਿਬ ਆਤਮਾਨੀਆਂ ਗੱਲ ਕਰੋ ਜੀ ਸੁਣ ਗਿਆ ਜਨ ਸਰ ਕੱਲ ਕੱਲ ਮੈਂ ਬਹੁਤ ਕੋਸ਼ਿਸ਼ ਕੀਤੀ ਮੈਂ ਕਾਲ ਕਰਨੀ ਸੀਗੀ ਆਪਣੇ ਜਦੋਂ ਮੇਰ ਸਾਹਿਬ ਆਈ ਸੀ ਤਾਂ ਆਪਣੇ ਕਮਲ ਸਾਹਿਬ ਆਏ ਸੀ ਪਰ ਫੋਨ ਨਹੀਂ ਚੱਕ ਹੋਇਆ ਉਧਰੋਂ ਜਿਹੜਾ ਆ ਬਹੁਤ ਕੋਸ਼ਿਸ਼ ਕੀਤੀ ਮੈਂ ਇਹਨਾਂ ਨੂੰ ਪੁੱਛਣਾ ਸੀਗਾ ਸਾਨੂੰ ਇਹ ਦੱਸੋ ਵੀ ਜੇ ਸਬੰਦੇ ਨੇ ਘਰ ਨਹੀਂ ਵੇਚਣਾ ਉਹਨੂੰ ਕਿਉਂ ਟੈਕਸ ਲੱਗ ਰਿਹਾ ਦੂਸਰੀ ਗੱਲ ਸੀਗੀ ਜਿੰਨੀਆਂ ਵੀ ਜੜੀਆਂ ਅੰਦਰ ਦੀਆਂ ਲਿੰਕ ਰੋੜਾ ਆ ਉਹਨਾਂ ਦੇ ਸਰੀਰ ਦੇ ਵਿੱਚ ਕੋਈ ਕੁਝ ਨਹੀਂ ਆ ਰਿਹਾ ਕੋਈ ਕੁਝ ਨਹੀਂ ਕਰ ਰਿਹਾ ਨਾ ਕੋਈ ਇਨਫਰਟ ਆਇਆ ਨਾ ਕੋਈ ਇਹਨਾਂ ਬੰਦਾ ਆ ਰਿਹਾ ਹਜੇ ਤਾਈਂ ਜਿਹੜੀ ਅਸਨ ਉਹ ਜੰਮੀ ਹੋਈ ਹੁਣ ਮੀ ਫੈਨਲ ਦਾ ਥੋੜਾ ਸ਼ੁਰੂ ਹੋਈ ਆ ਮੈਂ ਪੁੱਛਣਾ ਸੀਗਾ ਤੁਸੀਂ ਲਿੰਕ ਰੋੜਾ ਜਿਹੜੀਆਂ ਉਹਨਾਂ ਤੇ ਕਿਉਂ ਨਹੀਂ ਆਉਂਦੇ ਕੋਈ ਸਾਲਟ ਪਾਉਣ ਨਹੀਂ ਆਉਂਦਾ ਕੋਈ ਜਿਹੜਾ ਇਹਨਾਂ ਦਾ ਕੋਈ ਪੁੱਛਦਾ ਨਹੀਂ ਆ ਤੁਸੀਂ ਟੈਕਸ ਜਿਹੜਾ ਕਹਿੰਦੇ ਸਾਰਿਆਂ ਨੂੰ ਮਜ਼ਾਦਾਨ ਮੁੜਕੇ ਜਨ ਕਰਨੀ ਵਿੱਚ ਨਾ ਉਹਨੂੰ ਦੋ ਦੋ 2.5 ਨਜ਼ਰ ਗਾਹ ਉਹਨਾਂ ਜਿਹੜਾ ਇਹਦਾ ਅਸੈਸਮੈਂਟ ਤੇ ਪਾ ਦੇਣਗੇ ਤੇ ਉਹਦਾ ਕੌ ਵਤਕਲ ਮਰਤਾ ਨਹੀਂ ਹਣੇ ਵਤਕਲ ਮਰਤਾ ਨਹੀਂ ਮਨੇ ਮਰੀ ਤੇ ਆਇਆ ਰਤਾ ਵਾਸ਼ ਵਾਸ਼ ਦਾ ਰਮ ਵੈਂਕੀ ਥੈਂਕ ਯੂ ਥੈਂਕ ਮਰਤਾ ਨਹੀਂ ਆਇਆ ਕੋਸ਼ਿਸ਼ ਥੈਂਕ ਯੂ ਥੈਂਕ OK OK ਹੈਪੀ ਨਾਈਟ ਕੋਟੀ ਦਾ ਕੀ ਜਿਸ ਤਰ੍ਹਾਂ ਤੁਹਾਨੂੰ ਮੈਂ ਸ਼ੁਰੂ ਦੇ ਵਿੱਚ ਦੱਸਿਆ ਸੀ ਕਿ ਐਡਵਾਂਸ ਜੀਨੋਮਿਕਸ ਨਿਸ਼ਾ ਡੋਗਰਾ ਜੀ ਨੇ ਅੱਜ ਗੱਲਬਾਤ ਕਰਨੀ ਹੈ ਇੱਕ ਬਹੁਤ ਵਧੀਆ ਸੈਮੀਨਾਰ ਜਿਹੜਾ ਰਿਪੋਰਟ ਚ ਲੱਗ ਰਿਹਾ ਇਸ ਐਤਵਾਰ ਨੂੰ 22 ਜਨਵਰੀ ਨੂੰ ਹੈਲਥ ਬਾਰੇ ਆਮ ਸਿਹਤ ਬਾਰੇ ਨਿਸ਼ਾ ਡੋਗਰਾ ਜੀ ਗੱਲ ਕਰਨਗੇ ਨਿਸ਼ਾ ਜੀ ਤੁਹਾਡਾ ਸਵਾਗਤ ਹੈ ਆਕਾ ਸੱਸਿਆਕਾਲ ਹਰਜੀਤ ਦੀ ਤੇ ਵਾਲੇ ਸਾਰੇ ਨੂੰ ਮੇਰੀ ਪਿਆਰ ਭਾਈ ਇਹ ਗੀ ਸੱਸਿਆਕਾਲ ਔਰ ਨਵੇਂ ਸਾਲ ਦੀ ਬਹੁਤ ਬਹੁਤ ਲੱਖ ਲੱਖ ਵਧਾਈ ਹੈ ਜੀ ਬਹੁਤ ਵਧੀਆ ਲੱਗਿਆ ਜੀ ਤੁਹਾਨੂੰ ਕੁੜੀ ਮੁੰਡੇ ਦੀ ਲੋਹੜੀ ਤੇ ਮਿਲ ਕੇ ਪੰਜਾਬੀ ਸੂਟ ਤੁਸੀਂ ਬੜਾ ਵਧੀਆ ਪਾਇਆ ਸੀ ਧੰਨਵਾਦ ਥੈਂਕ ਯੂ ਅੱਛਾ ਜੀ ਬਹੁਤ ਅੱਛਾ ਲੱਗਾ ਜੀ ਤੇ ਇਹ ਦੱਸਿਓ ਜੀ ਕੇ ਇੰਨੀ ਤੇਜ਼ੀ ਇੰਨੀ ਨਵੀਂ ਟੈਕਨੋਲੋਜੀ ਹੈ ਇੰਨੇ ਮੈਡੀਕਲ ਐਕਸਪਰਟਸ ਨੇ ਲੋਕਾਂ ਦੀ ਸਿਹਤ ਹੈ ਜਿਹੜੀ ਦਿਨੋ ਦਿਨ ਖਰਾਬ ਹੁੰਦੀ ਜਾ ਰਹੀ ਹੈ ਜਿਹਦਾ ਕਾਰਨ ਕੀ ਹੈ ਨਸ਼ਾ ਹਾਂਜੀ ਹਰਜੀਤ ਜੀ ਇਸ ਤਰ੍ਹਾਂ ਹੈ ਕਿ ਇਸ ਤਰ੍ਹਾਂ ਜਿਸ ਤਰ੍ਹਾਂ ਅਸੀਂ ਪੁਰਾਣੇ ਮੈਥਡ ਯੂਜ਼ ਕਰਨੇ ਆ ਕਿ ਇਹ ਬਿਮਾਰੀ ਆ ਤੇ ਇੱਕੜੀ ਦਵਾਈ ਖਾ ਲੋ ਇੱਕੜੀ ਬਿਮਾਰੀ ਆ ਤੇ ਇਹ ਦਵਾਈ ਖਾ ਲੋ ਉਹ ਵਾਲੇ ਹੁਣ ਤਰੀਕੇ ਜਿਹੜੇ ਨਾ ਉਹ ਚੱਲਦੇ ਨਹੀਂ ਕਿਉਂਕਿ ਉਹ ਪੁਰਾਣੇ ਤਰੀਕੇ ਨੇ ਜਿਸ ਤਰ੍ਹਾਂ ਕਿ ਹੁਣ ਜਿਸਾ ਟੈਕਨੋਲੋਜੀ ਵੱਧਦੀ ਪਈ ਹੈ ਦੱਸਿਆ ਕਿ ਪਹਿਲੇ ਅਸੀਂ ਬਲੈਕ ਐਂਡ ਵਾਈਟ ਟੀਵੀ ਦੇਖਦੇ ਸੀ ਫਿਰ ਕਲਰ ਟੀਵੀ ਆ ਗਿਆ ਹੁਣ ਬਲੂ ਰੇ ਆ ਗਿਆ ਐਚ ਡੀ ਟੀਵੀ ਆ ਗਿਆ ਇਸ ਤਰ੍ਹਾਂ ਹੀ ਸੈੱਲ ਫੋਨ ਦੇਖੋ ਪਹਿਲੇ ਮ ਲ ਉਹ ਜੇ ਹੁੰਦੀ ਸੀ ਲੈਂਡ ਲਾਈਨ ਹੁੰਦੀ ਸੀ ਹੁਣ ਹਰ ਕਿਸੇ ਕੋਲ ਸੈੱਲ ਫੋਨ ਨੇ ਇਸ ਤਰ੍ਹਾਂ ਟੈਕਨੋਲੋਜੀ ਚੇਂਜ ਹੁੰਦੀ ਰਹਿੰਦੀ ਹੈ ਜਿਸ ਤਰ੍ਹਾਂ ਜਿਸ ਤਰ੍ਹਾਂ ਟਾਈਮ ਅੱਗੇ ਜਾਂਦਾ ਰਹਿੰਦਾ ਹੈ ਟੈਕਨੋਲੋਜੀ ਦੀ ਹੋਂਦ ਹੀ ਨੇ ਇਸ ਤਰ੍ਹਾਂ ਹੀ ਹੁਣ ਅੱਜਕੱਲ ਹਰਜੀਤ ਜੀ ਸਿਰਫ ਹੋ ਗਿਆ ਕਿ ਬਿਮਾਰੀਆਂ ਵਿੱਚ ਵੀ ਕਾਫੀ ਬਦਲਾਅ ਆ ਗਿਆ ਹੁਣ ਤੁਸੀਂ ਪਹਿਲੇ ਅਗਰ ਦੇਖਿਆ ਜਾਏ ਤੇ ਪਹਿਲੇ ਬਿਮਾਰੀਆਂ ਹੁੰਦੀਆਂ ਸੀ ਸਿਰਫ ਕਿ ਹਾਂਜੀ ਬਲੱਡ ਪ੍ਰੈਸ਼ਰ ਹੈ ਕੋਲੇਸਟ੍ਰੋਲ ਹੈ ਹੈ ਹੁਣ ਨਵੀਂ-ਨਵੀਂ ਬਿਮਾਰੀਆਂ ਬਣਦੀ ਪਈਆਂ ਨੇ ਤੇ ਬਿਮਾਰੀਆਂ ਜਿਹੜੀਆਂ ਨੇ ਉਹਨਾਂ ਕਾਫੀ ਸਾਰੇ ਮਲਟੀ ਰੋਲ ਪਲੇ ਕਰਦੇ ਨੇ ਕੋਈ ਇੱਕ ਕਾਰਨ ਨਹੀਂ ਹੁੰਦਾ ਡਾਇਰੈਕਟ ਕਿ ਇਹ ਬਿਮਾਰੀ ਹੈ ਤੇ ਇਹਦਾ ਇੱਕ ਕਾਰਨ ਹੈ ਅਸੀਂ ਇਹ ਦੇਖਿਆ ਕਿ ਜਿੱਦ ਸਾਡੇ ਐਕਸਪੀਰੀਅੰਸ ਦਾ ਕਿ 25 30 ਸਾਲ ਹੋ ਗਏ ਨੇ ਇਸ ਫੀਲਡ ਵਿੱਚ ਕਿ ਇਹ ਜਿਹੜੇ ਹੁਣ ਜਿਹੜੇ ਕਹਿੰਦੇ ਬੈਕਟੀਰੀਆ ਉਹ ਵੀ ਮਿਊਟੇਟ ਹੋ ਗਏ ਉਹ ਵੀ ਚੇਂਜ ਹੋ ਗਏ ਉਹ ਐਂਟੀਬਾਇਓਟਿਕਸ ਕੰਮ ਹੀ ਨਹੀਂ ਕਰਦੀਆਂ ਬਹੁਤ ਸਾਰੇ ਕਹਿੰਦੇ ਨਹੀਂ ਐਂਟੀਬਾਇਓਟਿਕ ਖਾ ਲਈਆਂ ਨਹੀਂ ਦੋਈਆਂ ਖਾ ਲਈਆਂ ਬਿਮਾਰੀਆਂ ਫਿਰ ਉੱਥੇ ਦੀ ਉੱਥੇ ਕਿਉਂਕਿ ਬੈਕਟੀਰੀਆ ਜਿਹੜੇ ਹਵਾ 'ਚ ਹੁੰਦੇ ਜਰਾਸੀਮ ਜਿਹੜੇ ਹੁੰਦੇ ਸਾਰੇ ਉਹ ਚੇਂਜ ਹੋ ਗਏ ਦੇ ਉਹ ਦਵਾਈਆਂ ਦੇ ਅਸਰ ਕਰਦੇ ਨਹੀਂ ਇਸ ਤਰ੍ਹਾਂ ਸਾਡੀ ਬੋਡੀ ਦੇ ਅੰਦਰ ਵੀ ਕਈ ਚੀਜ਼ਾਂ ਅਸਰ ਹੀ ਨਹੀਂ ਕਰਦੀਆਂ ਤੇ ਇੱਕ ਇੱਕ ਗੱਲ ਇਹ ਹੈ ਦੂਜੀ ਗੱਲ ਇਹ ਹੈ ਕਿ ਕੋਈ ਵੀ ਬਿਮਾਰੀ ਲੈ ਲੋ ਚਾਹੇ ਬਲੱਡ ਪ੍ਰੈਸ਼ਰ ਹੈ ਕੋਲੇਸਟ੍ਰੋਲ ਹੈ ਜਾਂ ਸ਼ੂਗਰ ਹੈ ਜਾਂ ਪੇਟ ਦੀਆਂ ਤਕਲੀਫਾਂ ਨੇ ਜਾਂ ਅਲਰਜੀਜ਼ ਨੇ ਹੁਣ ਦੇਖੋ ਕਿ ਉਹਦੇ ਮਲਟੀਪਲ ਕਾਰਨ ਨੇ ਇੱਕ ਦੇ ਹੁੰਦੇ ਜਿਸ ਤਰ੍ਹਾਂ ਅਸੀਂ ਹਰ ਵਾਰ ਹੀ ਕਹਿੰਨੇ ਹਰਜੀਤ ਜੀ ਕਿ ਜੀਨਸ ਤੁਹਾਨੂੰ ਕਿੱਦਾਂ ਪੇਰੈਂਟਸ ਕੋਲੋਂ ਤੁਹਾਡੀ ਹੈ ਕਿ ਤੁਸੀਂ ਕਿੱਦਾਂ ਦਾ ਖਾਣਾ ਪੀਣਾ ਖਾਂਦੇ ਹੋ ਮੈਂ ਇਹ ਵੀ ਦੇਖਿਆ ਬਹੁਤ ਸਾਰੇ ਕਹਿੰਦੇ ਬਹੁਤ ਹੈਲਦੀ ਖਾਣਾ ਖਾਂਦੇ ਆ ਲੇਕਿਨ ਆਪਣੀ ਬਾਡੀ ਦੇ ਹਿਸਾਬ ਦੇ ਮੁਤਾਬਿਕ ਖਾਣਾ ਖਾਂਦੇ ਆ ਕਿ ਨਹੀਂ ਕਿੱਦਾਂ ਦਾ ਖਾਣਾ ਅਸੀਂ ਖਾਈਏ ਕਿ ਸਾਨੂੰ ਉਹ ਪਚਾ ਕੇ ਸਾਨੂੰ ਤਾਕਤ ਮਿਲੇ ਤੇ ਹੋਰ ਵੀ এনवायरमेंटਲ ਵੀ ਹੈ ਨੇ ਲਾਈਫ ਸਟਾਈਲ ਵੀ ਹੈ ਨੇ ਬਹੁਤ ਸਾਰੇ ਫੈਕਟਰ ਹੁੰਦੇ ਨੇ ਔਰ ਉਹਨਾਂ ਸਾਰਿਆਂ ਤੇ ਨਜ਼ਰ ਮਾਰਾਂਗੇ ਤਾਂ ਹੀ ਉਹਦਾ ਧਿਆਨ ਸੰਗਤਾਂ ਹੀ ਬਿਮਾਰੀਆ ਕਾਬੂ ਹੋ ਸਕਦੀ ਨੇ ਇੱਕ ਚੀਜ਼ ਨਾਲ ਹਰਜੀਤ ਜੀ ਬਿਮਾਰੀ ਕਾਬੂ ਚ ਨਹੀਂ ਆਂਦੀ ਮੈਂ ਅੱਜ ਗਾਰਡੀਨ ਦਾ ਇੱਕ ਲੇਖ ਪੜ੍ਹ ਰਿਆ ਸੀ ਆਪਣੇ ਨਿਸ਼ਾ ਜੀ ਪੰਜਾਬ ਦੇ ਯੂਰੇਨੀਅਮ ਕਰਕੇ ਬੱਚੇ ਜਿਹੜੇ ਨੇ ਅਪੰਗ ਜੰਮ ਰਹੇ ਨੇ ਬਹੁਤ ਔਖਾ ਹੈ ਸਾਲ ਪਹਿਲੀ ਉਹਦੀ ਰਿਪੋਰਟ ਸੀ ਗਾਰਡੀਨ ਦੀ ਯੂਕੇ ਦੀ ਤੇ ਪਾਣੀਆਂ ਕਰਕੇ ਹੁਣ ਇੱਥੇ ਤਾਂ ਬਹੁਤ ਸਾਫ਼ ਮੌਸਮ ਹੈ ਵਾਤਾਵਰਣ ਸਾਫ਼ ਹੈ ਪਾਣੀ ਬਹੁਤ ਹੈ ਪਰ ਸਾਡੇ ਬੱਚਿਆਂ ਨੂੰ ਇੱਥੇ ਛੋਟੀ ਉਮਰ ਦੇ ਵਿੱਚ ਹੀ ਉਹਨਾਂ ਨੂੰ ਦਵਾਈਆਂ ਸ਼ੁਰੂ ਹੋ ਗਈਆਂ ਜੀ ਕੋਈ ਐਂਗਜ਼ਾਇਟੀ ਹੈ ਕੋਈ ਐਗਰੈਸ਼ਨ ਕੋਈ ਬੱਚਿਆਂ ਦਾ ਪਤਾ ਹੀ ਨਹੀਂ ਕੀ ਕਾਰਨ ਹੈ ਜੀ ਇਹ ਕੀ ਗੱਲ ਹੋ ਗਈ ਇੱਥੇ ਬੱਚਿਆਂ ਨੂੰ ਹਾਂਜੀ ਹਰਜੀਤ ਜੀ ਇਹ ਜਿਹੜੇ ਅਸੀਂ ਤੁਸੀਂ ਬਹੁਤ ਹੀ ਵਧੀਆ ਗੱਲ ਕੀਤੀ ਹੈ ਔਰ ਬਹੁਤ ਹੀ ਇੰਪੋਰਟੈਂਟ ਹੈ ਜਿਹੜੇ ਜਿਹੜੇ ਅਸੀਂ ਐਡਵਾਂਸ ਬੜੇ ਸਿਰਫਲੀ ਫੋਲੋ ਕਰਦੇ ਪਿਆ ਕਿ ਜਿਹੜੀਆਂ ਮਾਤਾ ਜਿਹੜੀਆਂ ਕਿ ਜਿਹੜੇ ਪ੍ਰੀਪੇਅਰ ਹੁੰਦੇ ਪਏ ਕਪਲ ਕਿ ਅਸੀਂ ਬੇਬੀ ਪੈਦਾ ਕਰਨਾ ਹੈ ਜਾਂ ਕਈਆਂ ਦੇ ਬੇਬੀ ਨਹੀਂ ਹੁੰਦੇ ਉਹਨਾਂ ਵਾਸਤੇ ਵੀ ਬਹੁਤ ਜ਼ਰੂਰੀ ਕੀ ਆਪਣੀ ਸਿਹਤ ਦੇਖਣੀ ਕਿ ਸਾਡੀ ਸਿਹਤ ਕਿੱਦਾਂ ਹੈ ਹਰਜੀਤ ਤੁਹਾਨੂੰ ਪਤਾ ਹੋਏਗਾ ਕਿ ਜਿਸ ਚੰਗੀ ਫਸਲ ਵਾਸਤੇ ਚੰਗੀ ਖਾਦ ਦੀ ਜ਼ਰੂਰਤ ਹੁੰਦੀ ਚੰਗੀ ਜ਼ਮੀਨ ਦੀ ਜ਼ਰੂਰਤ ਹੁੰਦੀ ਹੈ ਤੇ ਚੰਗੇ ਬੀਜ ਦੀ ਜ਼ਰੂਰਤ ਹੁੰਦੀ ਹੈ ਇਦਾਂ ਹੀ ਅੱਛੇ ਬੱਚੇ ਜਾਂ ਹਲਦੀ ਬੱਚੇ ਹੋਣੇ ਵਾਸਤੇ ਵੀ ਆਪਣੀ ਸਿਹਤ ਦੇਖਣੀ ਬਹੁਤ ਜ਼ਰੂਰੀ ਹੈ ਦੋਨੋਂ ਸਾਈਡ ਦੀ ਮਤਲਬ ਪੇਰੈਂਟ ਦੋਨੋਂ ਕਪਲ ਦੀ ਹਸੇ ਦੀ ਜ਼ਰੂਰਤ ਹੈ ਕਿ ਸਿਹਤ ਪਹਿਲੇ ਦੇਖਣੀ ਚਾਹੀਦੀ ਕਿ ਮੇਰੀ ਸਿਹਤ ਕਿੱਦਾਂ ਹੈ ਤੇ ਅਗਰ ਅੱਜ ਦੀ ਡੇਟ ਸਾਡੀ ਸਿਹਤ ਅੱਛੀ ਹੈ ਤਾਂ ਸਾਡੇ ਬੱਚੇ ਦੀ ਵੀ ਸਿਹਤ ਹੈਲਦੀ ਹੋਏਗੀ ਹਰਜੀਤ ਜੀ ਇਸ ਤਰ੍ਹਾਂ ਹੀ ਇੱਕ ਨਾ 12 ਸਾਲ ਦੀ ਰਿਸਰਚ ਸਟੱਡੀਜ਼ ਹੋਈ ਸੀ ਔਰ ਉਹਦੇ ਵਿੱਚ ਆਰਟੀਕਲ ਵੀ ਪਬਲਿਸ਼ ਹੋਇਆ ਉਹਦੇ ਵਿੱਚ ਦੱਸਿਆ ਕਿ ਛੋਟੇ ਬੱਚਾ ਜਿਸ ਪੈਦਾ ਹੀ ਹੁੰਦਾ ਜਿਆਦਾ ਹੁੰਦੇ ਬੱਚੇ ਦੇ ਟੈਸਟ ਕੀਤੇ ਔਰ 257 ਕੈਮੀਕਲਸ ਜਿਹੜੇ ਕੀ ਬੋਡੀ ਨੂੰ ਖਰਾਬ ਕਰਦੇ ਨੇ ਉਹਦੀ ਬੋਡੀ ਦੇ ਅੰਦਰ ਮਿਲੇ ਨੇ ਦੇ ਕਰੀਬ ਨਿਊਰੋਟੌਕਸਿਕ ਬਲੱਡ ਵਿੱਚੋਂ ਮਿਲੇ ਜਿਹੜਾ ਕਿ ਬੱਚੇ ਨੇ ਸਿਰਫ ਪਹਿਲਾ ਸਾਹ ਹੀ ਲਿਆ ਇਸ ਦੁਨੀਆ 'ਚ ਇਹ ਹਰਜੀਤ ਜੀ ਬੜੀ ਸੀਰੀਅਸਲੀ ਸੋਚ ਰਹੀ ਗੱਲਾਂ ਕਿ ਆਉਂਦੇ ਨੇ ਇਹਨੇ ਕੈਮੀਕਲਸ ਕਿੱਥੋਂ ਆਉਂਦੇ ਨੇ ਜਿਹੜਾ ਬੱਚਾ ਪੈਦਾ ਹੀ ਇਹਨੇ ਕੈਮੀਕਲਸ ਲੈ ਕੇ ਹੋਇਆ ਉਹ ਸੋਚੇ ਕਿ ਉਹਦੀ ਬੇਚਾਰੇ ਦੀ ਲਾਈਫ ਕਿੱਦਾਂ ਹੋਏਗੀ ਬਿਲਕੁਲ ਕਈ ਬੱਚਿਆਂ ਦੇ 3-3 ਸਾਲ ਦੇ ਬੱਚੇ ਜਿਹੜੇ ਥਾਇਰੋਇਡ ਦੀ ਗੋਲੀ ਖਾਂਦੇ ਨੇ 6-7 ਸਾਲ ਦੇ ਬੱਚੇ ਅੱਤੇ ਦੀ ਕੋਲੇਸਟ੍ਰੋਲ ਦੀ ਗੋਲੀ ਦਵਾਈ ਖਾਂਦੇ ਪੇ 19-19 18 ਸਾਲ ਦੇ ਬੱਚਿਆਂ ਨੂੰ ਹਾਰਟ ਅਟੈਕ ਹੁੰਦਾ ਪਿਆ ਸੋ ਇਹ ਬੜਾ ਸੀਰੀਅਸ ਜੀ ਇਸ਼ੂ ਪੈ ਗਿਆ ਔਰ ਤੁਸੀਂ ਇਹਦੇ ਤੇ ਦ੍ਰਿਸ਼ਟੀ ਪਾਈ ਹੈ ਮੈਨੂੰ ਬੜੀ ਇਹਦੀ ਖੁਸ਼ੀ ਹੋਈ ਹੈ ਤਾਂ ਕਿ ਜਿਹੜੇ ਸੁਣਨੇ ਵਾਲੇ ਨੂੰ ਪਤਾ ਲੱਗੇ ਕਿ ਇਹ ਬਹੁਤ ਸੀਰੀਅਸ ਇਸ਼ੂ ਹੈ ਸਿਰਫ ਅੱਜ ਦੀ ਡੇਅ ਤੇ ਮੇਰੀ ਬਿਮਾਰੀ ਮੇਰੀ ਦਵਾਈਆਂ ਦੀ ਗੱਲ ਨਹੀਂ ਰਹਿ ਗਈ ਏ ਅਸੀਂ ਪੂਰੇ ਆਪਣੇ ਬੱਚਿਆਂ ਦੇ ਆਪਣੀ ਫੈਮਿਲੀ ਦੀ ਆਪਣੀ ਕਮਿਊਨਿਟੀ ਦੇ ਬਾਰੇ ਵਿੱਚ ਵੀ ਸੋਚਣੇ ਦੀ ਜ਼ਰੂਰਤ ਹੈ ਕਿ ਇਹ ਬਿਮਾਰੀਆਂ ਸਾਨੂੰ ਕਿੱਥੇ ਲੈ ਕੇ ਜਾਣ ਤੇ ਅੱਜ ਦੀ ਡੇਟ 'ਚ ਅਸੀਂ ਕੀ ਕਰੀਏ ਕਿ ਕੀ ਰੋਕथाम ਅਸੀਂ ਬਿਮਾਰੀਆਂ ਦੀ ਕਰ ਸਕਨੇ ਆ ਅੱਜ ਕੀ ਕਰੀਏ ਕਿ ਬਿਮਾਰੀਆਂ ਬਦਲ ਨਾਲ ਤਾਂ ਕਿ ਬਿਮਾਰੀਆਂ ਘਟਣ ਜਾਂ ਬਿਮਾਰੀਆਂ ਖਤਮ ਹੀ ਹੋ ਜਾਣ ਨਿਸ਼ਾ ਜੀ ਫਾਰਮੇਸੀ ਵਾਲੇ ਕਹਿਣ ਲੱਗੇ ਕਿ ਇਹ ਤੁਹਾਨੂੰ ਪੈਕੇਜ ਬਣਾ ਕੇ ਦੇ ਦਾਂਗੇ ਅਸੀਂ ਬਲਿਸਟਰ ਪੈਕਿੰਗ ਕਰਾਂਗੇ ਸਵੇਰੇ ਤੁਸੀਂ ਆ ਦੁਪਹਿਰੇ ਆ ਖਾਣੀਆ ਸ਼ੂਗਰ ਦੀ ਹਾਈ ਬਲੱਡ ਪ੍ਰੈਸ਼ਰ ਦੀ ਲੈ ਲਓ ਇੱਕ ਮਸਲ ਪੇਨ ਦੀ ਲੈ ਲਓ ਤੇ ਇਹ ਗੋਲੀਆਂ ਤਾਂ ਲੋਕ ਚਾਕਲੇਟ ਵਾਂਗੂ ਖਾਣ ਲੱਗੇ ਕਿਉਂਕਿ ਸਾਡਾ ਮਾਈਂਡ ਸੈਟ ਹੋ ਗਿਆ ਬਈ ਚਲੋ ਸਿਰ ਦੁਖਿਆ ਕੋਈ ਇੰਪੋਰਟ ਹੁੰਦੀ ਹੈ ਜੀ ਬਹੁਤ ਹੁੰਦੀ ਹੈ ਤੇ ਅਸੀਂ ਜੋ ਫਿਰ ਇਸ ਨੂੰ ਕਿਸ ਤਰ੍ਹਾਂ ਠੀਕ ਕਰ ਸਕਦੇ ਹਾਂ ਤੁਹਾਡੇ ਹਿਸਾਬ ਨਾਲ ਤੇ ਐਡਵਾਂਸ ਜੀਨੋਮਿਕਸ ਤੇ ਕੀ ਹੋ ਸਕਦਾ ਹਾਂਜੀ ਦੇਖੋ ਹਰਜੀਤ ਜੀ ਇਸ ਵਾਰ ਦਾ ਕਿ ਕਈ ਵਾਰੀ ਵੀ ਪੈ ਜਾਂਦੀਆਂ ਕੋਈ ਐਂਟੀਬਾਇਟਿਕ ਲੈਣੀ ਵੀ ਪੈਂਦੀ ਹੈ ਜਾਂ ਕੁਝ ਹੋਰ ਵੀ ਦਵਾਈਆਂ ਲੈਣੇ ਪੈਂਦੀਆਂ ਨੇ ਪਰ ਦੇਖੋ ਲੌਂਗ ਟਰਮ ਲਈ ਅਸੀਂ ਸੋਚੀਏ ਕਿ ਇਹ ਬਿਮਾਰੀਆਂ ਸਾਨੂੰ ਸਾਨੂੰ ਕਿੱਥੇ ਲੈ ਕੇ ਜਾਂਦੀ ਪਈਆਂ ਨੇ ਅਗਰ ਆਪਣੇ ਪੇਰੈਂਟਸ ਨੂੰ ਜਾਂ ਗ੍ਰੈਂਡਪੇਰੈਂਟਸ ਨੂੰ ਹੀ ਦੇਖੀਏ ਕਿ ਉਹਨਾਂ ਨੇ ਵੀ ਸਾਰੀ ਉਮਰ ਦਵਾਈਆਂ ਖਾਧੀਆਂ ਕਿ ਆ ਉਹ ਠੀਕ ਹੋ ਗਏ ਨੇ। ਕੀ ਇਹ ਬਿਮਾਰੀਆਂ ਉਹਨਾਂ ਦੀ ਖਤਮ ਹੋ ਗਈਆਂ ਨੇ? ਔਰ ਅਸੀਂ ਵੀ ਇਹ ਨਵੀਂ ਹੁਣ ਇੱਕ ਉਹ ਹੀ ਰੂਟੀਨ ਸ਼ੁਰੂ ਕਰਦੇ ਪਏ ਫਿਰ ਅਸੀਂ ਵੀ ਦਵਾਈਆਂ ਖਾਂਦੇ ਪਏ ਆ ਫਿਰ ਅੱਗੇ ਬੱਚਿਆਂ ਨੂੰ ਵੀ ਇਦਾਂ ਹੀ ਦੇਣੇ ਪਿਆ ਤੇ ਉਹ ਹੀ ਬਿਮਾਰੀਆਂ ਵੀ ਨਾਲ ਨਾਲ ਚੜਦੀਆਂ ਰਹਿੰਦੀਆਂ ਨੇ ਤੇ ਇਹ ਦਵਾਈਆਂ ਵੀ ਨਾਲ ਨਾਲ ਚੜਦੀ ਰਹਿੰਦੀਆਂ ਨੇ ਤੇ ਕੀ ਇਹਦਾ ਕੋਈ ਰੋਗ ਜਾਂ ਕੋਈ ਭਰੇਜ ਜਾਂ ਕੋਈ ਕੁਝ ਹੋ ਸਕਦਾ ਜਾਂ ਹੋਰ ਕੋਈ ਆਲਟਰਨੇਟ ਪੁਛ ਵੀ ਹੋ ਸਕਦਾ ਕਿ ਅਸੀਂ ਇਹਦਾ ਬਿਮਾਰੀਆਂ ਤੋਂ ਬਚ ਜਾਈਏ। ਇਦੇ ਵਾਸੇ ਹੀ ਅਸੀਂ ਲਗਾਤਾਰ ਸੈਮੀਨਾਰ ਵੀ ਕਰਦੇ ਰਹੇ ਆ ਸਾਰੇ ਨੂੰ ਅਵੇਅਰਨੈਸ ਦੇਣੀ ਆ ਮਾਈਂਡ ਸੈਟ ਜਿਸ ਨਾਲ ਤੁਸੀਂ ਗੱਲ ਕੀਤੀ ਬੜੀ ਵਧੀਆ ਗੱਲ ਕੀਤੀ ਕਿ ਮਾਈਂਡ ਚੇਂਜ ਕਰਨੇ ਦੀ ਲੋੜ ਹੈ ਅੱਜ ਦੀ ਡੇਟ ਵਿੱਚ ਅੱਛਾ ਜੀ ਤੇ ਪੁਸ਼ਕ ਪ੍ਰੋਗਰਾਮ ਤੇ ਤੁਸੀਂ ਗੱਲਬਾਤ ਕਰਦੇ ਆ ਕੀ ਕੀਤਾ ਜਾ ਸਕਦਾ ਜਿਹਦੇ ਨਾਲ ਸਾਡੀ ਬੱਚਤ ਰਹਿ ਜਾਵੇ ਪ੍ਰੀਵੈਂਸ਼ਨ ਵਿੱਚ ਹਰਜੀਤ ਜੀ ਕਿਤੇ ਬਹੁਤ ਇੰਪੋਰਟੈਂਟ ਹੈ ਕਿ ਅਗਰ ਤੁਹਾਨੂੰ ਕੋਈ ਤਕਲੀਫ ਹੈ ਤੇ ਇਹ ਜਾਣਨੇ ਜ਼ਰੂਰਤ ਹੈ ਕਿ ਮੈਨੂੰ ਇਹ ਤਕਲੀਫ ਕਿਉਂ ਹੋਂਦੀ ਪਈ ਹੈ ਕੀ ਕਾਰਨ ਹੈ ਮੇਰੀ ਬਾਡੀ ਵਿੱਚ ਕੀ ਚੱਲਦਾ ਪਿਆ ਕਿ ਇਹ ਮੈਨੂੰ ਬਿਮਾਰੀ ਬਣ ਗਈ ਹੈ ਚਾਹੇ ਬਲੱਡ ਪ੍ਰੈਸ਼ਰ ਹੈ ਕੋਲੇਸਟ੍ਰੋਲ ਹੈ ਕੋਈ ਵੀ ਬਿਮਾਰੀ ਹੈ ਇਹ ਬਿਮਾਰੀ ਦੀ ਅਸਲੀ ਜੜ ਕੀ ਹੈ ਇਹ ਅਸੀਂ ਐਡਵਾਂਸ ਜੀਨੋਮਿਸ ਪਹਿਲੇ ਫਾਈਂਡ ਆਊਟ ਕਰਨਿਆ ਕੰਪਰੀਹੈਂਸਿਵ ਹੈਲਥ ਅਸੈਸਮੈਂਟ ਉਹਦੀ ਜਨਰਲ ਬਿਮਾਰੀਆਂ ਦਾ ਪਤਾ ਲੱਗਦਾ ਕਿ ਤੁਹਾਡੇ ਅੰਦਰ ਕਿਹੜੀ ਕਿਹੜੀ ਤਕਲੀਫਾਂ ਜਿਹੜੀ ਪਈਆਂ ਨਹੀਂ ਜਿਹੜੀਆਂ ਕਿ ਅੱਗੇ ਜਾ ਕੇ ਖਤਰਨਾਕ ਬਿਮਾਰੀਆਂ ਬਣ ਸਕਦੀਆਂ ਨੇ ਅਗਰ ਕੁਝ ਐਸੀਆ ਬਿਮਾਰੀਆਂ ਤੇ ਨਹੀਂ ਹੈਨ ਪਰਦੀ ਪਈ ਜਿਹੜੀਆਂ ਅਸੀਂ ਅੱਗੇ ਬੱਚਿਆਂ ਨੂੰ ਜਾਂ ਅੱਗੇ ਅਸੀਂ ਜਨਰੇਸ਼ਨ ਵਿੱਚ ਪਾਸ ਆਨ ਕਰਦੇ ਪਿਆ ਨੰਬਰ 3 ਹੈ ਕਿ ਅਸੀਂ ਜੋ ਅਸੀਂ ਸਾਡਾ ਲਾਈਫ ਸਟਾਈਲ ਹੈ ਜੋ ਅਸੀਂ ਖਾਣਾ ਪੀਣਾ ਜੋ ਅੱਜ ਦੀ ਡੇਟਾ ਅਸੀਂ ਕਰਦੇ ਪਿਆ ਕਿਹੜੀਆਂ ਅੰਦਰ ਤਕਲੀਫਾਂ ਜਿਹੜੀਆਂ ਵੱਧਦੀ ਪਈਆਂ ਜਿਹਦੇ ਨਾਲ ਇਫੈਕਟ ਪੈਂਦਾ ਪਿਆ ਜਾਂ ਹਾਰਟ ਦੇ ਉੱਤੇ ਇਫੈਕਟ ਪੈਂਦਾ ਜਾਂ ਕਿਡਨੀਆਂ ਦਾ ਨਹੀਂ ਖਰਾਬ ਹੁੰਦੀ ਪਈਆਂ ਜਾਂ ਬ੍ਰੇਨ ਤੇ ਨਹੀਂ ਖਰਾਬ ਹੁੰਦਾ ਪਿਆ ਸੋ ਇਹ ਜਿਹੜੀ ਸਾਰੀ ਜਾਣਕਾਰੀ ਲੈਣਾ ਜਿਹੜਾ ਅੱਜ ਦੇ ਡੇਅ ਚ ਬਹੁਤ ਜ਼ਰੂਰੀ ਹੈ ਮੈਨੂੰ ਪਤਾ ਸਾਡੇ ਜਿਹੜੇ ਦਰਸ਼ਕ ਸੁਣਨੇ ਵਾਲੇ ਨੇ ਇਹ ਬਹੁਤ ਹੀ ਅੱਜਕੱਲ ਇੰਟੈਲੀਜੈਂਟ ਨੇ ਸਾਰੇ ਪੜੇ ਲਿਖੇ ਨੇ ਕੋਈ ਇਦਾਂ ਨਹੀਂ ਹੈ ਅੱਜਕੱਲ ਗੂਗਲ ਵੀ ਹੈ ਇੰਟਰਨੈਟ ਦਾ ਜਮਾਨਾ ਸਾਰੀ ਜਾਣਕਾਰੀ ਮਿਲ ਜਾਂਦੀ ਹੈ ਪਰ ਇਹ ਵੀ ਹੈ ਕਿ ਬਿਮਾਰੀਆਂ ਦਾ ਖੁੱਲਕੇ ਪਤਾ ਲੱਗੇ ਕਿ ਬਿਮਾਰੀਆਂ ਅਸਲੀ ਹੈ ਕੀ ਨੇ ਨੂੰ ਕਿੱਦਾਂ ਖਤਮ ਕਰ 2 ਮਿੰਟ ਆਪਣੇ ਕੋਲ ਹੋਰ ਨੇ ਐਟ ਲਾਸਟ ਮੈਂ ਲੈ ਬ੍ਰੇਕ ਤੇ ਮੈਨੂੰ ਐ ਦੱਸੋ ਜਿਹੜਾ ਐਵਰਸਪੋਰਟ ਦਾ ਸੈਮੀਨਾਰ ਆ ਬਾਰੇ ਹੁਣ ਜਿਹੜੇ ਪਹਿਲਾਂ ਸਰੀ ਸੈਮੀਨਾਰ ਲੱਗੇ ਨੇ ਉਸ ਬਾਰੇ 2 ਮਿੰਟ ਹੋਰ ਨੇ ਜਿਸ ਦੇ ਬਾਰੇ ਜਾਣਕਾਰੀ ਦਿਓ ਹਾਂਜੀ ਹਰਜੀਤ ਜੀ ਜੀ ਮੈਂ ਕਿਹਾ ਮੈਂ ਫਿਨਿਸ਼ ਕਰ ਲਈਏ ਆਪਾਂ ਬ੍ਰੇਕ ਮੈਨ ਲਾਸਟ ਆ 세ਮੀਨਾਰ ਬਾਰੇ ਦੱਸ ਦਿਓ ਜੀ ਹਾਂਜੀ ਇਸ ਤਰ੍ਹਾਂ ਹੈ ਕਿ ਜਿਹੜੇ ਇਹ ਸੈਮੀਨਾਰ ਹੁੰਦੇ ਪਏ ਨੇ ਇਹ ਅਸੀਂ ਪਿਛਲੇ ਪਿਛਲੇ ਕੱਲ ਇਸ ਸੰਡੇ ਨੂੰ ਕਰਦੇ ਪਏ ਆ ਜਨਵਰੀ ਨੂੰ 2 ਵਜੇ ਤੋਂ ਲੈ ਕੇ 5 ਵਜੇ ਤੱਕ ਐਬਸਫੋਰਡ ਵਿੱਚ ਯੂਨਿਟ ਨੰਬਰ 202 2669 ਲੈਂਗਡਨ ਸਟਰੀਟ ਐਬਸਫੋਰਡ ਇਹਦਾ ਫੋਨ ਨੰਬਰ ਹੈ 604 5935030 6045935030 ਤੇ ਫੋਨ ਕਰਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਕਿਉਂਕਿ ਸੀਟ ਲਿਮਟਿਡ ਹੁੰਦੀਆਂ ਨੇ ਔਰ ਜਿਹੜੇ ਆਉਣਾ ਚਾਹੁੰਦੇ ਨੇ ਉਹ ਆਪਣਾ ਨਾਮ ਲਿਖਾ ਦੇਣ ਤੇ ਆਪਣੀ ਸੀਟ ਬੁੱਕ ਕਰਾ ਸਕਦੇ ਨੇ ਫੋਨ ਨੰਬਰ ਰਿਕੁਆਇਰੀ ਮੇਂ ਔਰ ਦਸਤਕ ਲਈ ਹੈ 6045935030 ਐਬਸਫੋਰਡ ਹੈ ਇਸ ਸੰਡੇ 22 ਜਨਵਰੀ ਨੂੰ 2 ਵਜੇ ਤੋਂ ਲੈ ਕੇ 5 ਵਜੇ ਤੱਕ ਔਰ ਜਿਆਦਾ ਜਾਣਕਾਰੀ ਜਿਹੜੀ ਹੈ ਸਾਡੀ ਵੈਬਸਾਈਟ ਵਿੱਚ ਵੀ ਹੈ ਐਡਵਾਂਸ ਜੀਨੋਮਿਕਸਟਟ ਸੀਏ ਔਰ ਫੋਨ ਨੰਬਰ ਹੈ 6045935030 6045935030 ਤੇ ਫੋਨ ਕਰਕੇ ਆਪਣੀ ਸੀਟ ਰਿਜ਼ਰਵ ਕਰਵਾ ਸਕਦੇ ਨੇ ਨਿਸ਼ਾ ਜੀ ਇਹਦੇ ਵਿੱਚ ਕਿੰਨੇ ਕੁ ਸਮੇਂ ਦਾ ਸੈਮੀਨਾਰ ਹੋਣਾ ਤੇ ਇਹਦੇ ਵਿੱਚ ਬੇਸਿਕ ਬੇਸਿਕਲੀ ਕੀ ਕੀ ਕਰਦੇ ਹੋ ਤੁਸੀਂ ਹਾਂਜੀ ਇਹਦੇ ਵਿੱਚ ਬੇਸਿਕਲੀ ਅਸੀਂ ਇਹ ਅਵੇਅਰਨੈਸ ਦੇਣੀ ਆ ਕਿ ਇਹ ਬਿਮਾਰੀਆਂ ਕੀ ਕੀ ਹੁੰਦੀਆਂ ਨੇ ਕਿੱਦਾਂ ਫੈਲਦੀਆਂ ਨੇ ਔਰ ਅਸੀਂ ਦੂਜਾ ਕਿ ਅਸੀਂ ਕਿਸ ਤਰ੍ਹਾਂ ਦੇ ਖਾਣੇ ਨਹੀਂ ਖਾਣੇ ਚਾਹੀਦੇ ਕਿੱਦਾਂ ਦੇ ਖਾਣੇ ਖਾਣੇ ਚਾਹੀਦੇ ਡਾਈਟ ਪਲਾਨ ਕੀ ਹੁੰਦਾ ਕਿੱਦਾਂ ਦੀ ਬੈਲੈਂਸ ਡਾਈਟ ਹੁੰਦੀ ਹੈ ਔਰ ਫਿਰ ਅਲਰਜੀਜ਼ ਇਨਫੈਕਸ਼ਨਸ ਜਿਹੜੀਆਂ ਹੁੰਦੀਆਂ ਨੇ ਇਹਨਾਂ ਦੇ ਕਾਰਨ ਕੀ ਨੇ ਕਿੱਦਾਂ ਬਚਾ ਸਕਦੇ ਆ ਛੋਟੇ ਬੱਚਿਆਂ ਨੂੰ ਕਿੱਦਾਂ ਅਸੀਂ ਬਿਮਾਰੀਆਂ ਤੋਂ ਬਚਾ ਸਕਨੇ ਆ ਔਰ ਜਾਂ ਫਿਰ ਸਕੋਰ ਇਹਨਾਂ ਨੇ ਟਿਫਨ ਲੈ ਕੇ ਜਾਣੇ ਨੇ ਬੱਚਿਆਂ ਨੂੰ ਹੈਲਦੀ ਲੰਚ ਕਿੱਦਾਂ ਦੇਣੇ ਨੇ ਜਾਂ ਇਹਨਾਂ ਦੀ ਕਿੱਦਾਂ ਵੀ ਇਹਨਾਂ ਦੀ ਐਕਸਰਸਾਈਜ਼ ਹੋਣੀ ਚਾਹੀਦੀਆਂ ਜਾਂ ਮੈਂਟਲ ਲੈਵਲ ਦੇ ਮੈਮਰੀ ਕਿੱਦਾਂ ਪਾਵਰ ਵਧਾਣੀ ਹੈ ਵੱਡਿਆਂ ਲਈ ਵੀ ਮੈਮਰੀ ਜਿਹੜੀ ਘੱਟ ਹੁੰਦੀ ਰਹੇ ਫੋਕਸ ਕਨਸੈਂਟਰੇਸ਼ਨ ਕਿੱਦਾਂ ਬਣਾਣਾ ਆਪਣਾ ਬੱਚੇ ਆਈਕਿਊ ਕਿੱਦਾਂ ਇੰਪਰੂਵ ਕਰ ਸਕਦੇ ਇਹਦੇ ਵਾਸਤੇ ਵੀ ਔਰ ਕਿਹੜੀ-ਕਿਹੜੀਆਂ ਸਾਨੂੰ ਆਪੇ ਵੀ ਵੱਡਿਆਂ ਨੂੰ ਵੀ ਐਕਸਰਸਾਈਜ਼ ਕਰਨੀਆਂ ਚਾਹੀਦੀਆਂ ਔਰ ਕਿਹੜੀਆਂ ਨਹੀਂ ਕਰਨੀ ਚਾਹੀਦੀਆਂ ਜਾਂ ਫਿਰ ਔਰ ਸੀਨੀਅਰ ਬੋਸਟੇ ਕਿਹੜੀਆਂ ਦਵਾਈਆਂ ਸਾਨੂੰ ਖਾਣੀਆਂ ਚਾਹੀਦੀਆਂ ਕਿਹੜੀਆਂ ਦਵਾਈਆਂ ਨਹੀਂ ਖਾਣੀਆਂ ਚਾਹੀਦੀਆਂ ਕਿਉਂਕਿ ਕਈ ਦਵਾਈਆਂ ਵੀ ਸਾਨੂੰ ਅੰਦਰ ਸਾਈਡ ਇਫੈਕਟ ਜ਼ਿਆਦਾ ਕਰਦੀਆਂ ਨੇ ਔਰ ਕਿਹੜੀਆਂ ਚੀਜ਼ਾਂ ਅਸੀਂ ਬਚ ਰੱਖਣੀਆਂ ਔਰ ਅਗਰ ਐਂਟੀਬਾਇਓਟਿਕਸ ਵੀ ਜ਼ਿਆਦਾ ਖਾਣੇ ਪੈਣੀਆਂ ਤੇ ਉਹ ਕਿਹੜੇ-ਕਿਹੜੇ ਤਰੀਕੇ ਦੇ ਤੁਸੀਂ ਸੇਫਲੀ ਚੀਜ਼ਾਂ ਖਾ ਸਕਦੇ ਹੋ ਤਾਂ ਕਿ ਤੁਹਾਡੀ ਬੋਡੀ ਨੂੰ ਨੁਕਸਾਨ ਨਾ ਹੋਏ ਔਰ ਖਾਸ ਕਰ ਜਿਹੜੇ दारू ਪਿੰਦੇ ਨੇ ਕਿ ਕਿੱਦਾਂ ਤੁਸੀਂ ਸੇਫਲੀ दारू ਵੀ ਪੀ ਸਕਦੇ ਹੋ ਡਰਿੰਕ ਕਰ ਸਕਦੇ ਹੋ ਲੇਕਿਨ ਤੁਹਾਡਾ ਲੀਵਰ ਵੀ ਪ੍ਰੋਟੈਕਟ ਰਹੇ ਔਰ ਤੁਹਾਡੇ ਹਾਜ ਵੀ ਬਚੇ ਰਹਿਣ ਤੋ ਇਹ ਸਾਰੀ ਜਾਣਕਾਰੀ ਅਸੀਂ ਸੈਮੀਨਾਰ ਚ ਦੇਣੀ ਹੈ ਔਰ ਸਾਰਿਆਂ ਲਈ ਹੈ ਛੋਟੇ ਬੱਚੇ ਵੀ ਆ ਸਕਦੇ ਆ ਵੱਡੇ ਵੀ ਆ ਸਕਦੇ ਬਜ਼ੁਰਗ ਵੀ ਆ ਸਕਦੇ ਲੇਡੀਜ਼ ਜੈਂਟਸ ਸਾਰੇ ਆ ਸਕਦੇ ਠੀਕ ਹੈ ਜੀ ਨਿਸ਼ਾ ਜੀ ਤੁਹਾਡੇ ਸਮੇਂ ਲਈ ਧੰਨਵਾਦ ਨੰਬਰ ਤੇ ਤੁਸੀਂ ਰਜਿਸਟ੍ਰੇਸ਼ਨ ਕਰਾ ਸਕਦੇ ਵਪਾਰਕ ਸੰਦੇਸ਼ ਖਬਰਾਂ 12 ਵਜੇ ਕੇ 9 ਮਿੰਟ ਹੋਏ ਆ ਜੀ ਇਸ ਹਿੱਸੇ ਦੇ ਵਿੱਚ ਪੰਜਾਬ ਦੀ ਰਾਜਨੀਤੀ ਦੇ ਬਾਰੇ ਗੱਲਬਾਤ ਕਰਨ ਲਈ ਡਾਕਟਰ ਸ਼ੰਦਰਪੁਰੇਵਾਲ ਮੇਰੇ ਨਾਲ ਨੇ ਸਵਾਰ ਕੇ ਪੁੱਛਾਂਗੇ ਕਿ ਇਲੈਕਸ਼ਨ ਇਲੈਕਸ਼ਨ ਤੋਂ ਬਾਅਦ ਇਸ਼ੂ ਕੀ ਨੇ ਇਸ਼ੂ ਤੋਂ ਬਾਅਦ ਪਾਰਟੀ ਪਲੈਟਫਾਰਮ ਕੀ ਨੇ ਤੇ ਕੀ ਕੀ ਹੋ ਰਿਹਾ ਤੇ ਕੀ ਹੋਣ ਦੀ ਤਵਕਕੂ ਹੈ ਆਉਣ ਵਾਲੇ ਜਿਹੜੇ 20 ਦਿਨ ਨੇ ਇਹਨਾਂ ਚ ਕੀ ਕੀ ਹੋ ਸਕਦਾ 20 ਵੀ ਕਿੱਥੇ ਰਹਿ ਗਏ ਹੁਣ ਤਾਂ ਰਹਿ ਗਏ ਦਰਸਾ ਤੁਹਾਡਾ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ გილਸਵ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਰਾਜਨੀਤਿਕ ਜਿਨ੍ਹਾਂ ਨੇ ਪੜ੍ਹਾਈ ਕੀਤੀ ਹੈ ਜਿਹੜਾ ਇਲੈਕਸ਼ਨ ਦਾ ਨਾਂ ਨੇ ਥੋੜੇ ਕੁਤਕੁਤੀਆਂ ਦੀ ਨਿਕਲ ਲੱਗ ਜਾਂਦੀ ਹੈ ਸਾਡੇ ਲਈ ਕਈ ਵਾਰੀ ਦੇਖਾ ਨਾ ਬੰਦੇ ਨੂੰ ਮਚਾਈ ਦੇਖ ਕੇ ਤਾਂ ਭੁੱਖ ਜ਼ਿਆਦਾ ਹੋਰ ਹੋ ਜਾਂਦੀ ਹੈ ਸਾਡੇ ਲਈ ਤਾਂ ਹੁੰਦੀ ਕੋਈ ਰਾਜਨੀਤਿਕ ਗੱਲ ਹੋਏ ਤੇ ਸਵਾਦ ਅਸੀਂ ਤਾਂ ਫਿਰ ਸੂ ਤੜਕੇ ਉੱਠ ਕੇ ਖਵਾਰਾ ਮੈਦ ਲਾ ਪੈਂਦੇ ਅਕਾ ਥੋੜੇ ਨਾਲ ਦੇ ਪ੍ਰੋਫੈਸਰ ਕਹਿੰਦੇ ਹੋਣਗੇ ਯਾਰ ਉਹ ਪੰਜਾਬ ਜੀ ਹਲੇ ਤੱਕ ਛੱਡਿਆ ਤੇ 30 35 ਸਾਲ ਹੋ ਗਏ ਕੇ ਹਲੇ ਵੀ ਉੱਥੇ ਦੀ ਗੱਲ ਕਹਦੇ ਹੋਣਗੇ ਹਰੇਕ ਸਾਲ ਹੀ ਪੰਜਾਬ ਤੋਂ ਰਹਿ ਰਹਿੰਦਾ ਹਰੇਕ ਸਾਲ ਹੀ ਉੱਥੇ ਜਾਂਦਾ ਜਿੱਥੇ ਤੁਸੀਂ ਜੰਮੇ ਪਲੇ ਆ ਵੈਸੇ ਉਹਦਾ ਲਗਨ ਹੁੰਦਾ ਹਰ ਇੱਕ ਬੰਦੇ ਦਾ ਮੇਰਾ ਕਲ ਸ਼ਾਇਦ ਲਗਨ ਹੋਵੇ ਅਛੇ ਜੀ ਇਲੈਕਸ਼ਨ ਦੇ ਚੋਣਾਂ ਦੇ ਪਰਪੇਖ ਦੇ ਵਿੱਚੋਂ ਚੋਣਾਂ ਦੇ ਬਾਰੇ ਪਹਿਲਾਂ ਤਾਂ ਸਮਝਾ ਦਿਓ ਲੋਕ ਦੇ ਮਨ ਚ ਇਹ ਫਰਵਰੀ ਨੂੰ ਵੋਟਾਂ ਪੈਣੀਆਂ ਤੇ 10 ਦੇ ਵਿੱਚ ਖਾਸ ਕੀ ਆ ਪਹਿਲੀ ਗੱਲ ਕਿ ਚੋਣਾਂ ਤਾਂ ਪੰਜਾਬ ਦੀਆਂ ਹੋਣੀਆਂ 4 ਫਰਵਰੀ ਨੂੰ 12 ਜਨਵਰੀ ਤੱਕ ਨਾਮੀਨੇਸ਼ਨਸ ਹੋਣੀਆਂ ਸਾਰੇ ਠੀਕ ਹੈ ਜੀ ਜਿਹੜੇ ਰਿਜ਼ਲਟ ਹੈ ਉਹ 11 ਮਾਰਚ ਨੂੰ ਨਿਕਲਣੇ ਇਹ ਇਸ ਕਰਕੇ ਇਸ ਵਕਤ ਪੰਜ ਰਾਜਾਂ ਦੇ ਵਿੱਚ ਹੋ ਰਹੀਆਂ ਇਲੈਕਸ਼ਨਸ ਔਰ ਸਭ ਤੋਂ ਮਹੱਤਵਪੂਰਨ ਸ਼ਾਇਦ ਯੂਪੀ ਦੀਆਂ ਇਲੈਕਸ਼ਨਸ ਔਰ ਉੱਥੇ ਯੂਪੀ ਆ ਪਹਿਲਾਂ ਉਹਨੂੰ ਇੱਕ ਫੇਜ਼ ਚ ਲੈ ਆ ਫਿਰ ਦੂਸਰੇ ਫੇਜ਼ ਚ ਲੈ ਕੇ ਜਾਂਦੇ ਫਿਰ ਹੌਲੀ-ਹੌਲੀ ਮੂਵ ਕਰਦੇ ਆ ਉਹਨਾਂ ਨੂੰ। ਅਖੀਰ 'ਚ ਜਾ ਕੇ ਜਦੋਂ ਉਹਨਾਂ ਦੀਆਂ ਚੋਣਾਂ ਖਤਮ ਹੋਣੀਆਂ ਯੂਪੀ ਦੇ ਵਿੱਚ ਉਸ ਤੋਂ ਬਾਅਦ ਇਲੈਕਸ਼ਨ ਕਮਿਸ਼ਨ ਨੇ ਉਹ ਸਾਰਿਆਂ ਨੂੰ ਕਹਿਣਾ ਤੁਸੀਂ ਹੁਣ ਗਿਣਤੀ ਤਾਂ ਉਹਨਾਂ ਦੀ ਫਟਾਫਟ ਹੋ ਜਾਂਦੀ ਕਿਉਂਕਿ ਮਸ਼ੀਨਾਂ ਲੱਗੀਆਂ ਆ ਉਹ ਗਣ ਦਿੰਦੇ ਨੇ 11 ਮਾਰਚ ਦੀ ਸਵੇਰ ਨੂੰ ਰਿਜ਼ਲਟ ਪਹਿਲਾਂ ਦੇ ਚੋਣਾਂ 'ਚ ਕੀ ਫਰਕ ਇਹਨਾਂ ਦਾ ਫਰਕ ਤਾਂ ਪੈਂਦਾ ਹੈ ਨੂੰ ਪਤਾ ਲੱਗ ਜਾਂਦਾ ਜੀ ਵੀ ਇੱਕ ਪਾਰਟੀ ਜਿੱਤ ਜੇ ਉੱਥੇ ਲੋਕਾਂ ਨੂੰ ਇਦਾਂ ਲੱਗਣ ਲੱਗ ਪੈਂਦਾ ਇਹਨਾਂ ਦੀ ਚੜ੍ਹਤ ਹੋ ਗਈ ਜਿਹੜਾ ਪਿਛਲੀ ਵਾਰੀ ਤੁਸੀਂ ਦੇਖਿਆ ਹੋਣਾ ਇੱਥੇ ਕੈਨੇਡਾ ਦੇ ਵਿੱਚ ਜਦੋਂ 32 ਸੀਟਾਂ ਜਿਹੜੀਆਂ ਸੀਗੀਆਂ ਅਟਲਾਂਟਿਕ ਕੈਨੇਡਾ ਦੀਆਂ ਅਨਾਉਂਸ ਕਰ ਰਿਹਾ ਸੀ ਨਾ 5 ਵਜੇ ਸੀ ਅਜੇ ਇੱਥੇ ਕਿ ਲਿਬਰਲ ਜਿੱਤ ਗਏ ਸਾਰੀਆਂ ਸੀਟਾਂ ਉਹ ਲੋਕਾਂ ਦੇ ਘੰਟਿਆਂ ਦੇ ਵਿੱਚ ਉਹ ਸਾਰੀ ਵੋਟ ਜਿਹੜੀ ਆ ਉਹ ਜੇਤੂ ਧਿਰ ਨੂੰ ਜ਼ਿਆਦਾ ਪਈ ਹੈ ਉਹ ਚਾਹੁੰਦੇ ਆ ਕਿ ਰਿਜ਼ਲਟ ਇੱਕ ਦਿਨ ਕਲੀਅਰ ਕੀਤੇ ਜਾਣ ਔਰ 5 ਰਾਜਾਂ ਦੇ ਵਿੱਚ ਖਾਸ ਤੌਰ ਤੇ ਬਾਕੀ ਤਾਂ ਛੋਟੇ ਛੋਟੇ ਆ यूपीディア इलेक्शंस ਨੂੰ ਮਹਾਯੁੱਧ ਸਮਝਿਆ ਜਾਂਦਾ ਹੁੰਦਾ ਪੰਜਾਬ ਨੂੰ ਜਿੱਥੇ ਤੁਸੀਂ ਉੱਥੇ ਜੰਮੇ ਪੜ੍ਹਿਓ ਜੀ ਵਿਦਵਤਾ ਦੇ ਤੌਰ ਤੇ ਪੰਜਾਬ ਦਾ ਹਰ ਇੱਕ ਰੰਗ ਤੁਸੀਂ ਨੇੜੇ ਵੇਖਿਆ ਤੁਹਾਡੀਆਂ ਕਿਤਾਬਾਂ ਤੁਸੀਂ ਨੇੜੋਂ ਵੇਖਿਆ ਇਸ ਵਾਰ ਇਸ ਚੋਣਾਂ ਦੇ ਵਿੱਚ ਕਿਹੜੀਆਂ ਚੀਜ਼ਾਂ ਜਿਹੜੀਆਂ ਤੁਹਾਡੇ ਤੁਹਾਡੇ ਦਿਮਾਗ ਦੇ ਵਿੱਚ ਵੀ ਚੋਣਾਂ ਦੇ ਵਿੱਚ ਕਿਹੜੇ ਨੁਕਤੇ ਹੋਣੇ ਚਾਹੀਦੇ ਸੀ ਕਿਹੜੇ ਨਹੀਂ ਹੈ ਤੇ ਕਿਹੜੇ ਹੈ ਸਭ ਤੋਂ ਪਹਿਲਾਂ ਦੇ ਤੁਸੀਂ ਦੇਖੋ ਨਾ ਇਸ ਵਾਰ ਥੋੜੀਆਂ ਜਿਹੀਆਂ ਚੀਜ਼ਾਂ ਬਾਕੀਆਂ ਨਾ ਪਹਿਲੀਆਂ ਚੋਣਾਂ ਨਾਲ ਵੱਖਰੀਆਂ ਇਹ ਪਹਿਲੀ ਵਾਰ ਆ ਕਿ ਐਕਚੁਅਲੀ ਤਿੰਨ ਤਰੀ ਚੋਣਾਂ ਹੋ ਰਹੀਆਂ ਤਿੰਨ ਤਰ੍ਹਾਂ ਜਿਹੜੀਆਂ ਇੱਕ ਤਾਂ ਕੰਬਣ ਦਾ ਬੀਜੇਪੀ ਅਕਾਲੀ ਦਲ ਦੂਸਰੀ ਪੁਰਾਣੀ ਪਾਰਟੀ ਆ ਕਾਂਗਰਸ ਤੀਸਰੀ ਨਵੀਂ ਪਾਰਟੀ ਆਮ ਆਦਮੀ ਪਾਰਟੀ ਦੂਸਰੀ ਜਿਹੜੀ ਵਿਲੱਖਣਤਾ ਦੀ ਗੱਲ ਇਹ ਪਹਿਲੀ ਵਾਰ ਆ ਕਿ ਇੱਕ ਪਾਰਟੀ ਨੇ ਦੋ ਵਾਰ ਰੋਲ ਕੀਤਾ ਹੋਇਆ ਦੋ ਵਾਰ ਇਕੱਠਾ ਨਹੀਂ ਕੋਈ ਦੋ ਵਾਰ ਇਕੱਠਾ ਨਹੀਂ ਕੀਤਾ ਸੀ ਇਹਨਾਂ ਨੇ ਹਮੇਸ਼ਾ ਇਹ ਹੁੰਦਾ ਸੀ ਕਿ ਇੱਕ ਵਾਰ ਇੱਕ ਸਿਆਸੀ ਧਿਰ ਆਈ ਹੈ ਦੂਸਰੀ ਵਾਰ ਦੂਸਰੀ ਧਿਰ ਸਾਲ ਰਾਜ ਬਹੁਤ ਅਸੀਂ ਆਹ ਕਰ ਦਿਆਂਗੇ ਅਸੀਂ ਸਾਲਾਂ ਬਾਅਦ ਤੁਸੀਂ ਕਹਿ ਸਕਦੇ ਕਿ ਸਾਡੇ ਤੋਂ ਪਿਛਲੇ ਸਾਲ ਆਹ ਨਹੀਂ ਹੋਇਆ ਆਹ ਨਹੀਂ ਹੋਇਆ ਜਾਂ ਉਦੋਂ ਇਹ ਵੀ ਇਸ਼ੂ ਸੀ ਕਿ ਸੈਂਟਰ ਦੇ ਵਿੱਚ ਜਿਹੜੀ ਸਰਕਾਰ ਦੂਸਰੀ ਪਾਰਟੀ ਦੀ ਸੀ ਉਹ ਸਾਨੂੰ ਆਹ ਨਹੀਂ ਸੀ ਕਰ ਦਿੰਦੀ ਉਹ ਨਹੀਂ ਸੀ ਕਰਨ ਹਮੇਸ਼ਾ ਇਦਾਂ ਕਹਿੰਦੇ ਹੁੰਦੇ ਆ ਹਣ ਤੀਸਰੀ ਗੱਲ ਜਿਹੜੀ ਆ ਬਿਲਕੁਲ ਬਲਖਣਤਾ ਦੀ ਕਿ ਇੱਕ ਬਿਲਕੁਲ ਨਵੀਂ ਤੇ ਰਾਈ ਆ ਹਮ ਹਾਲਾਂਕਿ ਪਿਛਲੇ ਇਲੈਕਸ਼ਨ ਚ ਵੀ ਪੀਪੀ ਬਣੀ ਸੀ ਪਰ ਚੋਣਾਂ ਤੋਂ ਪਹਿਲਾਂ ਨਿਕਲ ਚੁੱਕੀ ਸੀ ਇਲੈਕਸ਼ਨ ਸ਼ੁਰੂ ਕੀਤੀ ਆ ਤੋਂ ਇੱਕ ਮਰੀ ਹੋਈ ਪਾਰਟੀ ਇੱਕ ਰਹੀ ਸੀ ਹੌਲੀ ਹੌਲੀ ਪਰ ਇਹ ਇੱਕ ਕਲਾ ਇਸ ਵਿੱਚ ਮਤਲਬ ਜੋਸ਼ ਦੇ ਵਿੱਚ ਜਾ ਰਹੇ ਆ ਕਿ ਅਸੀਂ ਸਰਕਾਰ ਬਣਾਉਣੀ ਹੈ ਇਹ ਬਿਲਕੁਲ ਨਵੀਂ ਪਾਰਟੀ ਹੈ ਸੋ ਇਸ ਕਰਕੇ ਇਹ ਤਿੰਨ ਗੱਲਾਂ ਤੁਸੀਂ ਕਹੋ ਕਿ ਪਹਿਲੀਆਂ ਚੋਣਾਂ ਨਾਲੋਂ ਵੱਖਰੀਆਂ ਹੋਈਆਂ ਜੀ ਤੇ ਇੱਕ ਚੀਜ਼ ਅਜੇ ਤੱਕ ਨਹੀਂ ਬਦਲੀ ਜਦੋਂ ਤੱਕ ਪੰਜਾਬ ਬਣਿਆ ਚਾਹੇ ਪਹਿਲਾਂ ਸਾਂਝਾ ਪੰਜਾਬ ਸੀ ਜਾਂ 1966 ਤੋਂ ਬਾਅਦ ਤਿੰਨ ਤਰ੍ਹਾਂ ਚ ਵੰਡ ਹੋਇਆ ਪੰਜਾਬ ਦੀ ਕੋਈ ਵੀ ਪਾਰਟੀ ਜਿਹੜੀ ਆ ਉਹਦਾ ਮੁੱਖ ਮੰਤਰੀ ਬਣਿਆ ਇਹਦੀ ਵਾਗਡੋਰ ਹਮੇਸ਼ਾ ਪੰਜਾਬ ਤੋਂ ਬਾਹਰ ਰਹੀ ਹੈ ਜੇ ਅਕਾਲੀ ਦਲ ਭਾਜਪਾ ਦੀ ਸਰਕਾਰ ਬਣੀ ਇਹਨਾਂ ਦੀ ਵਾਗਡੋਰ Nagpur ਹੈ ਕਾਂਗਰਸ ਨੇ ਵਾਲਡੋਰ ਸ਼ੌਕ ਕਿੱਧਰ ਉੱਤੇ ਪੁੱਠੇ ਪਾਸੇ ਨੂੰ ਚੱਲਿਆ ਦੂਜੇ ਦੀ ਕੋਲ ਆ ਤੀਸਰੀ ਧਰ ਜਿਹੜੀ ਵੀ ਦਿੱਲੀ ਦੇ ਵਿੱਚ ਹੋ ਤੁਸੀਂ ਦੇਖ ਲਿਆ ਹੋਣਾ ਕਿ ਇਤਰੀ ਮੈਂ ਪ੍ਰੋਮਿਸ ਕਰਦਾ ਤੁਹਾਡੇ ਨਾਲ ਮਤਲਬ ਜੇ ਪੰਜਾਬ ਦਾ ਚੁਣਿਆ ਹੋਇਆ ਕੋਈ ਐਮਐਲਏ ਬਣੂੰਗਾ ਵੀ ਚੀਫ ਮਿਨਿਸਟਰ ਵਾਗਡੋਰ ਜਿਹੜੀ ਉਹ ਦਿੱਲੀ ਹੋ ਗਈ ਸੋ ਪੰਜਾਬ ਦੇ ਲਈ ਇੱਕ ਚੀਜ਼ ਨਹੀਂ ਬਦਲੀ ਬਾਕੀ ਚੀਜ਼ਾਂ ਕਾਫੀ ਬਦਲੀਆਂ ਆ ਹਮ ਹੁਣ ਪੰਜਾਬ ਦੇ ਵਿੱਚ ਜਸਟ ਅੰਕੜਿਆਂ ਦੀ ਅਸੀਂ ਗੱਲ ਕਰਦੇ ਹਾਂ ਥੋੜਾ ਜਿਹਾ ਜੀ ਕਿ ਮਿਲੀਅਨ ਸਾਡੇ ਲੋਕ ਹੈ 2 ਕਰੋੜ 80 ਲੱਖ ਇਹ ਪੰਜਾਬ ਦੇ ਵਿੱਚ ਇੱਕ ਮੁਲਖਣ ਤਾਂ ਇਹ ਵੀ ਹੈ ਕਿ ਸਾਡੇ ਜਿਹੜੀ ਸਿਟੀ ਦੀ ਪਾਪੂਲੇਸ਼ਨ ਟਾਊਨ ਤੇ ਸਿਟੀ ਦੀ ਜਿਹੜੀ ਸ਼ਹਿਰੀ ਪਾਪੂਲੇਸ਼ਨ ਆ ਉਹ ਕੋਈ 35% ਹੈ ਬਾਕੀਆਂ ਨਾਲੋਂ ਜ਼ਿਆਦਾ ਆਮ ਇੰਡੀਆ ਦੇ ਵਿੱਚ 75% ਓਵਰ ਆਲ ਪਿੰਡਾਂ 'ਚ ਰਹਿੰਦੇ 25% ਸ਼ਹਿਰਾਂ 'ਚ ਰਹਿੰਦੇ 35% ਸ਼ਹਿਰਾਂ 'ਚ ਰਹਿੰਦੇ 65% ਪਿੰਡਾਂ 'ਚ ਰਹਿੰਦੇ। ਬਾਕੀ ਕਰੋੜ ਦੇ ਕਰੀਬ ਲੋਕ ਸ਼ਹਿਰਾਂ 'ਚ। ਹਾਂਜੀ ਤੁਸੀਂ 2.5 ਇੱਕ ਕਿੱਥੇ ਕਰੋੜ ਤੇ 92 ਵੋਟਰ ਆ ਸਾਡੇ ਤਕਰੀਬਨ 20 ਮਿਲੀਅਨ ਸੱਜਣਾਂ ਨੂੰ। ਜੀ। 117 ਸੀਟਾਂ ਆ ਉਹਦੇ ਵਿੱਚ 34 ਰਿਜ਼ਰਵ ਹੈ ਉਹਨਾਂ ਦੇ ਵਿੱਚ ਦੇ ਵਿੱਚ ਸ਼ਡਿਊਲ ਕਾਸਟ ਜਿਹਨੂੰ ਲਿਆ ਜਾਂਦਾ ਹੈ। ਵਰਗ ਦਾ। अच्छा पंजाब ਦੇ ਵਿੱਚ ਇੱਕ ਇਹ ਵੀ ਬਲੱਖਣਤਾ ਹੈ ਕਿ ਪੰਜਾਬ ਬਾਕੀ ਸੂਬਿਆਂ ਦੇ ਹਿਸਾਬ ਦੇ ਨਾਲ ਸਭ ਤੋਂ ਜ਼ਿਆਦਾ ਪਰਸੈਂਟੇਜ ਦਲਦਲੀ ਹੈ 30% ਹੂੰ ਕਿਸੇ ਵੀ ਹੋਰ ਸੂਬੇ ਦੇ ਬੰਦਾ ਉਹ ਦੇਖਣਗੇ ਕਿ ਬਹੁਜਨ ਸਮਾਜ ਪਾਰਟੀ ਖਾਸ ਤੌਰ ਤੇ ਆ ਇਦਾਂ ਦੀ ਪਾਰਟੀ ਨੂੰ ਤਾਂ ਇੱਥੇ ਪੰਜਾਬ ਦੇ ਵਿੱਚ ਉੱਭਰ ਕੇ ਅੱਗੇ ਆਉਣਾ ਚਾਹੀਦਾ ਜਿਹਦੀ ਤਕਰੀਬਨ ਇਹ ਉਹ ਸਾਡੇ ਵੋਟ ਵੋਟ ਹੋਵੇ ਔਰ ਇਦਾ ਕਾਰਨ ਸਿਰਫ ਇਹ ਆ ਕਿ ਜਿਹੜੀ ਲੀਡਰਸ਼ਿਪ ਬੀਐਸਪੀ ਦੀ ਉਹ ਪੰਜਾਬ ਤੋਂ ਬਾਹਰ ਚਲ ਗਈ ਕਿਉਂਕਿ ਜਿਹੜੇ ਉਹਨਾਂ ਦੇ ਫਾਊਂਡਰ ਸੀਗੇ ਉਹਨਾਂ ਦੀ ਡੈਥ ਹੋ ਗਈ ਜਿਹੜੇ ਪੰਜਾਬ ਤੋਂ ਸੀ ਉਹ ਔਰ ਮਾਇਆਵਤੀ ਦੇ ਹਿੱਤ ਚ ਨਹੀਂ ਕਿ ਪੰਜਾਬ ਦਾ ਕੋਈ ਲੀਡਰ ਉੱਠ ਖੜੇ ਚਾਹੁੰਦੀ ਨਹੀਂ ਹੋਣੀ ਚਾਹੁੰਦੀ ਉਹਨੇ ਪੰਜਾਬ ਨੂੰ ਇਦਾਂ ਹੀ ਰੱਖਿਆ ਕਿ ਇੱਥੇ ਕੈਂਡੀਡੇਟਸ ਖੜੇ ਕਰੋ ਹਾਲਾਂਕਿ ਜੇ ਉਹਨਾਂ ਦਾ ਕਿਸੇ ਨਾਲ ਲਾਇਅੰਸ ਹੋਵੇ ਤੇ ਬੜਾ ਜ਼ਬਰਦਸਤ ਲਾਇਅੰਸ ਹੋਊਗਾ ਕਰਦੀ ਉਹ ਜੀ ਉਹ ਨਹੀਂ ਉਹ ਕਰਦੀ ਇਸ ਕਰਕੇ ਨਹੀਂ ਕਿ ਉਹ ਜਿਹੜੀ ਦੂਜੀਆਂ ਤੇਰਾਉ ਉਹਨੂੰ ਪੈਸੇ ਦੇਣਦੀ ਆ ਹਾਂ ਤਕਰੀਰ ਕਰ ਜਾਂਦੀ ਆ ਔਰ ਉਹਨੂੰ ਉਹਦੇ ਹਿੱਤ ਦੀ ਵੀ ਹੈ ਨਹੀਂ ਉਹਦੇ ਉਹ ਕੱਲੀ ਮਾਇਆਵਤੀ ਆਪਣੀ ਯੂਪੀ ਸੰਭਾਲਣੇ ਯੂਪੀ ਦੇ ਆਸਰੇ ਉਹ ਪ੍ਰਾਈਮ ਮਿੰისტਰ ਬਣਨਾ ਚਾਹੁੰਦੀ ਕਿਸੇ ਦਿਨ ਦੇ ਵਿੱਚ ਤੇ ਉਹ ਨਹੀਂ ਚਾਹੂਗੀ ਕਿ ਪੰਜਾਬ ਦੇ ਵਿੱਚ ਮੇਰੇ ਕੋਈ ਰਾਈਵਲ ਉੱਠ ਖੜੇ ਕਿਸਮਤੀ ਹੈ ਇਹ ਚਲੋ ਹੈ ਰਾਜ ਰਾਜਨੀਤੀ ਦੇ ਵਿੱਚ ਤਾਂ ਲੀਡਰ ਥੋੜਾ ਉੱਠਣ ਨੂੰ ਦੇ ਗਿਨ ਆ ਫੌਨਿਸ ਮੂਵਮੈਂਟ ਨਹੀਂ ਨਹੀਂ ਦੱਸਦਾ ਪੰਜਾਬ ਦੀ ਫੌਨਿਸ ਮੂਵਮੈਂਟ ਖਤਮ ਕਰ ਦਿੱਤੀ ਉਹਨਾਂ ਨੇ ਨਹੀਂ ਤਾਂ ਪੰਜਾਬ ਦੇ ਵਿੱਚ 1957 ਦੇ ਵਿੱਚ ਤੀਜੀ ਧਿਰ ਜਿਹੜੀ ਸੀਗੀ ਸੀਪੀਆਈ ਸੀ ਬਹੁਤ ਵੱਡੀ ਧਿਰ ਦੇ ਤੌਰ ਦੇ ਬਹੁਤ ਜੁੜੇ ਹੋਏ ਬਹੁਤ ਲੋਕ ਔਰ ਕੋਸ਼ਲ ਇਲਾਕੇ ਵਿੱਚ ਤਾਂ ਸਿੱਟਾ ਹੀ ਹੋ ਜਾਂਦੇ ਸੀ ਸੰਗਰੂਰ ਚੱਲ ਜਾਓ ਬਿਟਿੰਡੇ ਚੱਲ ਜਾਓ ਇਹ ਇਲਾਕੇ ਤਾਂ ਉਹਨਾਂ ਦੇ ਮੱਲੇ ਹੋਏ ਸੀ ਹਾਰੇਖ ਦੇ ਹਿੱਤ ਚ ਹੁੰਦਾ ਵੀ ਮੈਂ ਆਪਣੇ ਬਰਾਬਰ ਦਾ ਕੋਈ ਖਾਸ ਤੌਰ ਤੇ ਉਹ ਲੀਡਰ ਜਿਹੜੇ ਜਿਨ੍ਹਾਂ ਨੂੰ ਆਪਣਾ ਦਰ ਹੁੰਦਾ ਵੀ ਮੈਂ ਮੇਰੇ ਸੌਦਾ ਦੀ ਲੀਡਰਸ਼ਿਪ ਤਾਂ ਹੈ ਨਹੀਂ ਮੈਂ ਉਸ ਲੈਵਲ ਦਾ ਤਾਂ ਹੈ ਨਹੀਂ ਸਾਹੇ ਕੋਈ ਨਹੀਂ ਹੋਰ ਲੀਡਰ ਅਹੀਂ ਖਾਰੇਖ ਮਤਲਬ ਪਾਰਟੀ ਦੇ ਵਿੱਚ ਦੂਸਰੀ ਲੀਡਰਸ਼ਿਪ ਸਰ ਦੀ ਕੋਸ਼ਿਸ਼ ਹੁੰਦੀ ਹੈ ਜਿਹੜੇ ਮਾਰੇ ਲੀਡਰ ਹੈ ਜਿਹੜੇ ਤਕੜੇ ਲੀਡਰ ਹੋਣਗੇ ਉਹ ਚਾਹਣਗੇ ਕਿ ਮੇਰੇ ਵਰਗੇ ਬਰਾਬਰ ਆਉਣ ਮੇਰੇ ਨਾਲ ਕਿਉਂਕਿ ਉਹਨਾਂ ਨੂੰ ਆਪਣਾ ਫਿਕਰ ਨਹੀਂ ਕੋਈ ਹੁੰਦਾ ਕਿ ਹੁਣ ਇੱਕ 10 ਇਅਰ ਪ੍ਰੋਫੈਸਰ ਹੋਵੇ ਪੀ ਐਚ ਡੀ ਹੋਵੇ ਕਿਤਾਬਾਂ ਲਿਖੀਆਂ ਆ ਜਾਓ ਕੋਈ ਗੱਲ ਨਹੀਂ ਹੋਰ ਵੀ ਲਿਆਓ ਤੇ ਜਿਹੜਾ ਵਿਚਾਰੇ ਤੋਂ ਹਾਲੇ 10 ਇਅਰ ਨਹੀਂ ਹੋਇਆ ਹੁੰਦਾ ਲੀਡਰਸ਼ਿਪ ਦੇ ਵਿੱਚ ਵੀ ਇਹਨਾਂ ਦੇ ਹੈ ਥੋੜਾ ਬਹੁਤਾ ਫਿਰ 34 ਸੀਟਾਂ ਇਹਨਾਂ ਦੇ ਰਿਜ਼ਰਵ ਤੋਂ ਬਾਅਦ ਤੁਸੀਂ ਦੇਖ ਲਓ ਮਾਲਵੇ ਦੇ ਵਿੱਚ ਸਭ ਤੋਂ ਜ਼ਿਆਦਾ ਸੀਟਾਂ 68 ਸੀਟਾਂ 25 ਦੁਆਬੇ ਦੇ ਵਿੱਚ 26 ਮਾਝੇ ਦੇ ਵਿੱਚ ਸੋ ਮਾਲਵੇ ਦੀ ਜਿਹੜੀ ਤੁਸੀਂ ਕਹਿੰਦੇ ਆਪੀਨੀਅਨ ਹੁੰਦਾ ਉਹ ਤੋਂ ਪਤਾ ਜਾ ਲੱਗ ਜਾਂਦਾ ਕਿ ਕਿਹੜੀ ਸਰਕਾਰ ਬਣੂਗੀ ਅੱਛਾ ਹਾਲਾਂਕਿ ਪਿਛਲੀ ਵਾਰ ਇਹ ਤੁਸੀਂ ਦੇਖਿਆ ਹੋਣਾ ਕੈਪਟਨ ਅਮਿੰਦਰ ਸਿੰਘ ਨੇ ਕਾਫੀ ਵਧੀਆ ਕਾਫੀ ਵੋਟਾਂ ਲਈਆਂ ਸੀ ਉੱਥੇ ਮਾਲਵੇ ਦੇ ਵਿੱਚ ਪਰ ਕਾਲੀਆਂ ਨੂੰ ਜਿਜਤਾਇਆ ਤਾਂ ਦਵਾਦੇ ਦਾ ਮਾਝ ਨੇ ਜਿਜਾਤਾ ਕਾਂਗਰਸ ਇਹਨਾਂ ਦੀ ਫੱਗ ਗਈ ਇਹਨਾਂ ਦੇ ਆ ਆਪੋ ਤਾਂ ਹੋਏ ਸੀ ਤੇ ਕੁਝ ਸੀਟਾਂ ਜਿਹੜੀਆਂ ਇਹਨਾਂ ਦੇ ਬਹੁਤ ਥੋੜੀਆਂ ਥੋੜੀਆਂ ਵੋਟਾਂ ਨਾਲ ਹਰੇ ਆ ਹੁਣ ਇਸ ਵੇਲੇ ਜਿਹੜੀ ਆ ਕਿ ਇਹ ਕਦੇ ਵੀ ਇਹਨਾਂ ਦੇ ਕੋਲ ਕੈਂਡੀਡੇਟ ਹੀ ਨਹੀਂ ਡਿਸਾਈਡ ਹੁੰਦੇ ਅਜੇ ਤਾਈਂ ਦੇਖੋ ਮਹੀਨਾ ਨਹੀਂ ਰਹਿ ਗਿਆ ਉਹਨਾਂ ਦੇ ਕੈਂਡੀਡੇਟ ਅਜੇ ਤੀ ਪੂਰੇ ਨਹੀਂ ਹੁੰਦੇ ਸੀ ਕਿਹੜਾ ਬੰਦਾ ਕਿੱਥੋਂ ਖੜੂਗਾ ਤੇ ਜੇ ਉਸ ਬੰਦੇ ਨੂੰ ਹਫ਼ਤੇ ਹੀ 2 ਮਿੰਨੇ ਆ ਕੀ ਕਰ ਲੂਗਾ ਆ ਮੈਂ ਸਮਾਜਵਾਦੀ ਪਾਰਟੀ ਦਾ ਪਿਛਲੀ ਵਾਰੀ ਦੇਖਦਾ ਸੀ ਐਤਕੀ ਤਾਂ ਚਲੋ ਉਹਨਾਂ ਨੇ ਥੋੜਾ ਜਿਹਾ ਹਾਲਾਂਕਿ ਵੀ ਨੇ ਦੱਸਿਆ ਸੀ ਪਹਿਲਾਂ ਹੀ ਇੱਕ ਸਾਲ ਪਹਿਲਾਂ ਦੱਸ ਦਿੰਦੇ ਕਾਂਗਰਸ ਪਾਰਟੀ ਨਾਲ ਅਲਾਈਂਸ ਕੀਤਾ ਸੋ ਕੁਝ ਥੋੜਾ ਜਿਹਾ ਕੈਂਡੀਡੇਟ ਹਟਾਉਣੇ ਪਏ ਉਹਨਾਂ ਨੂੰ ਪਰ ਇਹ ਜੇਸ ਬੰਦੇ ਨੂੰ ਇੱਕ ਸਾਲ ਪਹਿਲਾਂ ਹੀ ਪਤਾ ਆ ਬਹੁਤ ਕੰਮ ਕਰਸਾ ਉਹ ਇੱਕ ਸਾਲ ਤੱਕ ਧੂਪ ਆ ਕੇ ਰੱਖ ਦਿੰਦੇ ਹੋ ਪਿੰਡਾ ਪਿੰਡਾਂ ਦੇ ਘਰਾਂ ਘਰਾ ਦੇ ਵਿੱਚੋਂ ਆਪਣੀਆਂ ਕਮੇਟੀਆਂ ਆਪਣੇ ਜਾ ਕੇ ਉਹਨਾਂ ਨੇ ਸਟੈਬਲਿਸ਼ ਕਰ ਦੇ ਨਾਲ ਨਾਤਾ ਜੋੜ ਲੈਣਾ ਤੇ ਜਿਹੜੇ ਬੰਦੇ ਨੂੰ ਪਹਿਲਾਂ 14 ਆਉਂਦੇ ਆ ਉੱਥੋਂ ਬਿਜਾਰੀ ਟਿਕਟ ਲੈ ਕੇ ਮੁਰਥਲ ਚੈਨ ਨੂੰ ਫੋਨ ਆ ਜਾਂਦਾ ਤੇਰੀ ਸੀਟ ਬਦਲਦੀ ਉਹ ਫੇਰ ਨਾਲ ਜਾਂਦੇ ਇਸ ਕਰਕੇ ਪਰ ਇਹ ਸਾਰੀਆਂ ਪਾਰਟੀਆਂ ਦੇ ਨਾਲ ਆ ਕੇ ਪੰਜਾਬ ਦੇ ਵਿੱਚ ਇੱਕ ਚਲੋ ਅਸਲੀ ਦਾ ਲੇਖ ਕਹਿ ਸਕਦੇ ਕਿ ਸੀਟਾਂ ਬਣੁੰਦੇ ਆ ਪਰ ਮੇਰਾ ਖਿਆਲ ਹੈ ਵੀ ਜੇ ਨਾਗਪੁਰ ਵਾਲੇ ਕਹਿਣ ਫਲਾਣੇ ਬੰਦੇ ਦੀ ਸੀਟ ਚੇਂਜ ਕਰਦੇ ਕਰਦੇ ਕਿਉਂਕਿ ਉਹਨਾਂ ਦਾ ਜੋਰ ਚੱਲਦਾ ਸੋ ਤਕਰੀਬਨ ਤਕਰੀਬਨ ਜਿਹੜੇ ਇਸ਼ੂਜ਼ ਬਣਦੇ ਆ ਉਹਨਾਂ ਦੀ ਤੁਸੀਂ ਇਹ ਕਹਿ ਲਓ ਕਿ ਇੱਕ ਗੱਲ ਖਾਸ ਤੌਰ ਤੇ ਕਾਂਗਰਸ ਤੇ ਆਮ ਨੇ ਪਾਰਟੀ ਨੇ ਕਿਹਾ ਜਿਹੜੀ ਹਜੇ ਤੱਕ ਜਿਹੜੀ ਰੂਲਿੰਗ ਪਾਰਟੀ ਡਿਨਾਈ ਕਰ ਰਹੀ ਹੈ ਕਿ ਉੱਥੇ ਇੱਕ ਮਾਫੀਆ ਡਰੱਗ ਮਾਫੀਆ ਦਾ ਜਿਹੜਾ ਰੂਲ ਹੋ ਗਿਆ ਨਾ ਉਹ ਬੜਾ ਡੇਂਜਰਸ ਹੈ ਹਮਮ ਉਹ ਇੱਕ ਤੁਸੀਂ ਦੇਖਿਆ ਹੋਣਾ ਜੇ ਤੁਸੀਂ ਦੁਨੀਆ ਦੇ ਵਿੱਚ ਕਈ ਨਾ ਦੇਸ਼ ਚੰਗੇ ਕੌਣ ਆ ਉਹ ਇੱਕ ਲਾਈਫ ਇੰਡੈਕਸ ਆ ਬਣਾਇਆ ਉਹਨਾਂ ਨੇ ਕਿ ਜਿੱਥੇ ਲਾਈਫ ਜੀਣੀ ਬਿਹਤਰ ਮੁਲਕ ਨੂੰ ਸਵੀਡਨ ਨਾਰਵੇ ਮੁਲਕਾਂ ਨੂੰ ਉੱਪਰ ਸਮਝਦੇ ਕਿ ਵਧੀਆ ਮੁਲਕ ਇੰਡੀਆ ਦੇ ਵਿੱਚ ਵੀ ਇੰਡੈਕਸ ਉੱਕੜਦੇ ਇਦਾਂ ਦਾ ਉਹਦੇ ਵਿੱਚ ਪੰਜਾਬ 19ਵੇਂ ਨੰਬਰ ਤੇ ਹਮਮ ਦੇਸ਼ ਆ ਸੂਬਾ ਆ ਜਿੱਥੇ ਲੋਕੀ ਸਮਝਦੇ ਹੁੰਦੇ ਸੀ ਕਿ ਖੁਸ਼ਕਿਸਮਤੀ ਹੈ ਜੇ ਮੇਰਾ ਉੱਥੇ ਦਾ ਨੰਬਰ ਆ ਜਾਵੇ ਮੇਰੀ ਜੇ ਆਈਐਸ ਨੂੰ ਉੱਥੇ ਪੋਸਟਿੰਗ ਮਿਲ ਜਾਂਦੀ ਸੀ ਆਈਪੀਐਸ ਨੂੰ ਕੰਮ ਕਰਨ ਵਾਲਾ ਮਾਫੀਆ ਉੱਥੇ ਝਾਰਖੰਡ ਚ ਹੁੰਦਾ ਸੀ ਉਹ ਤਾਂ ਆਈਪੀਐਸ ਬੰਦੇ ਨੂੰ ਕੋਈ ਸਮਝਦਾ ਕੁਛ ਨਹੀਂ ਸੀ ਤੇ ਇਹ ਹੁਣ ਇਹ ਹਾਲਾਤ ਹੋ ਚੁੱਕੀ ਕਿ ਪਹਿਲਾਂ ਚਲੋ ਕੁਝ ਕੁ ਬੰਦੇ ਕਨੈਕਟਡ ਵੀ ਹੋਣਗੇ ਇੱਕ ਧਿਰ ਦੇ ਨਾਲ ਹੌਣ ਜਦੋਂ ਜਦੋਂ ਮਾਫੀਆ ਰਾਜ ਤੁਸੀਂ ਕਹਿੰਦੇ ਗੁੰਡਾ ਰਾਜ ਫੈਲ ਜਾਂਦਾ ਨਾ ਫਿਰ ਉਹਨੂੰ ਇੱਕ ਬੰਦੇ ਨੂੰ ਕੰਟਰੋਲ ਕਰਨਾ ਬੜਾ ਮੁਸ਼ਕਲ ਹੈ ਤੇ ਜਿਹੜੀ ਜਿਹਨੂੰ ਫੜਿਆ ਉਹਦਾ ਫੋਨ ਆ ਜਾਣਾ ਤੇ ਜੇ ਤੁਹਾਡੀ ਐਡਮਿਨਿਸਟ੍ਰੇਸ਼ਨ ਹੀ ਕੰਟਰੋਲ ਕੀਤੀ ਸਾਰੀ ਤੁਸੀਂ ਕੁਝ ਕਰਨ ਯੋਗੇ ਨਹੀਂ ਜੇ ਤੁਹਾਡਾ ਹੁਣ ਐਸਐਸਪੀ ਜਿਹੜਾ ਪੰਜਾਬ ਦੇ ਵਿੱਚ ਇੱਕ ਥਾਣੇਦਾਰ ਨੂੰ ਨਹੀਂ ਹੈ ਕੁਸੀਂ ਇਹ ਦੇਖ ਲਓ ਜੀ ਲੋਕੀ ਜੀ ਕਾਲ ਬੈਠ ਕੇ ਵੇਖਿਆ ਜੀ ਕਰਦਾ ਨਹੀਂ ਸਕਦੇ ਕੁਝ ਨਹੀਂ ਕਰ ਸਕਦਾ ਤੇ ਜਿਹੜੀ ਅਥਾਰਟੀ ਜਾਂਦੀ ਲੱਗੀ ਹੈ ਤੇ ਉਹ ਅੱਗੇ ਇਹ ਕੀ ਕਹ ਲੂਗਾ ਕਿ ਤੂੰ ਆਹ ਬਹੁਤ ਵੱਡਾ ਹਰ ਇੱਕ ਜਿਹਦਾ ਜਵਾਕ ਇਸ ਕੰਮ ਤੇ ਨਹੀਂ ਲੱਗਿਆ ਉਹ ਵੀ ਇਹੀ ਕਹਿੰਦਾ ਚਿੱਟਾ ਚਿੱਟਾ ਚਿੱਟਾ ਚਿੱਟਾ ਗੱਲ ਹੁਣ ਜਿਹੜੇ ਉੱਥੇ ਤੁਸੀਂ ਦੇਖੋ ਕਿ ਜਿਹੜੇ ਅਸੀਂ ਸਮਝਦੇ ਸੀ ਬੰਦਾ ਠੀਕ ਠਾਕ ਹੈ ਫੈਮਲੀ ਇਹਨਾਂ ਦੇ ਪ੍ਰੋਸਪੈਕਟ ਵੀ ਉੱਥੇ ਹੈਗੇ ਤੁਹਾਨੂੰ ਪੰਜਾਬ ਦੇ ਵਿੱਚ ਰਹਿ ਲੈਣਾ ਚਾਹੀਦਾ ਪੜ ਲਿਖ ਗਿਆ ਉਹਨਾਂ ਦੀ ਇਹ ਹੀ ਤਮੰਨਾ ਹੈ ਕਿ ਇਹਨੂੰ ਇੱਥੋਂ ਕੱਢ ਲਈ ਲੈ ਜਾਓ ਬਸ ਡਰ ਇਸ ਦਾ ਹੀ ਮਾਫੀਆ ਰਾਜ ਆ ਪਤਾ ਨਹੀਂ ਅਗਲੇ ਕਿਹਨੂੰ ਲਾਉਣਾ ਹੋਣਾ ਧੀ ਪੁੱਤ ਜਿਹੜਾ ਉਥੇ ਸੇਫ ਨਹੀਂ ਹੈ ਤੋਂ ਬਾਅਦ ਪਾਰਟੀ ਬਾਈ ਪਾਰਟੀ ਡਾਕਟਰ ਸਾਹਿਬ ਵਿਚਾਰਸ਼ਣ ਕਰਨਗੇ ਤੇ ਫਿਰ ਮੁੱਦਿਆਂ ਦੀ ਗੱਲ ਜਿਹੜਾ ਚੱਲ ਰਿਹਾ ਹੈ ਵੇ ਜਾਦੂ ਦੀ ਛੜੀ ਕੋਈ ਆ ਆਮ ਆਦਮੀ ਕਿ ਸਾਫ਼ ਸਿੱਖ ਗੱਲ ਹੋ ਦਿੱਲੀ ਬੈਠੇ ਕੀ ਹੋਊਗਾ ਵੇਖਦਾ ਸੀ ਐਮ ਆਪ ਦਾ ਕੌਣ ਹੋਊਗਾ ਕਿਹਜਾ ਸਮਾਂ ਬਹੁਤ ਕਈ ਬਾਦਲ ਉਹਨਾਂ ਦੀ ਤਾਕੀਤੀ ਦਿਖਦੀ ਸੀ ਕੇਜਰੀਵਾਲ ਦੀ ਕੀਤੀ ਵੀ ਨਹੀਂ ਲਿਖਣੀ ਉਹਨੇ ਜਦ ਗੱਲ ਘਮਾਉਣੀ ਹੈ ਕੇਜਰੀਵਾਲ ਦਾ ਆਪਣਾ ਜਿਹੜਾ ਮੁੱਦਾ ਹੈ ਪੰਜਾਬ ਪੰਜਾਬ ਨਹੀਂ ਉਹਦਾ ਮੁੱਦਾ ਦਿੱਲੀ ਦਾ ਆ ਖੁੱਲ੍ਹਣ ਦੀ ਗੱਲ ਮੁਬਾਰਕ ਸਮੇਸ਼ 12:27 ਮਿੰਟ ਹੋਇਆ ਜੀ ਪ੍ਰੋਗਰਾਮ ਦੇ ਸਪਾਂਸਰ ਦੀ ਜੇ ਗੱਲ ਕਰ ਲਈਏ ਉਹਦੇ ਵਿੱਚ ਗੇਟਵੇ ਪੀਜ਼ਾ 6545903333 ਨਿਊਟਨ ਦੀ ਲੋਕੇਸ਼ਨ ਤੇ 6545993333 ਗਿਲਫਰਡ ਦੀ ਲੋਕੇਸ਼ਨ gatewaypizza.com ਜਿੱਥੇ ਮੈਨੂੰ ਵੇਖ ਕੇ ਤੁਸੀਂ ਭਾਰਤੀ ਖਾਣੇ ਤੇ ਪੀਜ਼ਾ ਆਰਡਰ ਕਰ ਸਕਦੇ ਹੋ ਤੇ ਬਹੁਤ ਖਾਣੇ ਤੇ ਬਹੁਤ ਵਧੀਆ ਪੀਜ਼ਾ ਜਿਹੜਾ ਇਸ ਗੇਟਵੇ ਪੀਜ਼ਾ ਸੇ ਜਾਂਦਾ ਹੈ ਵੱਡਾ ਬ੍ਰਦਰਸ ਦੀ ਹੈ ਫੈਸਿਲਿਟੀ ਹੈ ਤੇ gatewaypizza.com 6045903333 6045993333 OS windows 6045975033 windows.com ਅਵਾਰਡ winning windows 26 ਸਾਲ ਹੋ ਗਏ ਭਾਈ ਚਾਰੇ ਨੂੰ ਸਰਵ ਕਰਦੇ ਆ ਮਲਟੀ ਫੈਮਿਲੀ ਟਾਊਨ ਹਾਊਸ ਕਾਂਡੋ ਤੇ ਵੱਧ ਘਰ ਬਣਾਉਣੇ ਆ ਤੇ ਕਸਟਮ ਕੋਈ ਘਰ ਬਣਾਉਣਾ ਹੈ ਕੋਈ ਰੈਨੋਵੇਸ਼ਨ ਦੀ ਜੌਬ ਵੀ ਹੈ ਤਾਂ ਵੀ 6045975033 ਵਿੰਡੋ ਇੰਡਸਟਰੀ ਦੇ ਵਿੱਚ ਨਵੇਂ ਕੀਰਤੀ ਮੰਸਟਾਪਟ ਕੀਤੇ ਹੋਏ ਇਸ ਵਿੰਡੋਜ਼ ਨੇ 65595033 ਅਚੇਦਰ ਸਾਹਿਬ ਪਾਰਟੀ 바이 ਪਾਰਟੀ ਵਿਸ਼ਲੇਸ਼ਣ ਦੇ ਵਿੱਚ ਇੱਕ ਇੱਕ ਪਾਰਟੀ ਤੋਂ ਸ਼ੁਰੂ ਕਰਨਾ ਆਪੀ ਸ਼ੁਰੂ ਕਰ ਲੈਣੇ ਆ ਆਵਾਜ਼ ਜੀ ਗੱਲਾਂ ਆਆਂ ਦਿੱਲੀ ਦੀ ਐਗਜ਼ਾਮਪਲ ਨੂੰ ਕੰਟਰੋਲ ਨੇ ਪੂਰਾ ਕਰਦੇ ਸਿੱਧਾ ਸਾਹਮਣੇ ਵਿੱਚ ਰੱਖਣਾ ਚਾਹੀਦਾ ਜੁਤੀ ਹੈ ਸਮਝ ਲਓ ਤੁਸੀਂ ਸਟੇਟ ਪੁਲਿਸ ਨੇ ਕੰਟਰੋਲ ਕਰਦੀ ਦੂਜੀ ਡੀਡੀਏ ਜਿਹੜੀ ਦਿੱਲੀ ਡਿਵੈਲਪਮੈਂਟ ਅਥਾਰਟੀ ਹੈ ਉਹਨਾਂ ਨੇ ਕੰਟਰੋਲ ਕਰ ਲਈ ਅੱਛਾ ਜੀ ਫਿਰ ਕਿਵੇਂ ਸਰਵਾਈਵ ਵੀ ਜਿੰਨੀ ਨੂੰ ਪਾਵਰਸ ਦਿੱਤੀਆਂ ਹੈ ਹੈਲਥ ਡਿਪਾਰਟਮੈਂਟ ਸੁਧਾਰ ਲਿਆਂਦੇ ਆ ਜਿਹੜਾ ਪੰਜਾਬ ਜਿਹਨਾਂ ਬਜਟ ਆ ਉਹ ਤਕਰੀਬਨ ਡਬਲ ਕੀਤਾ ਅਹ ਹੈਥਰੇ ਵਿੱਚ ਇੱਕ ਪੋਜ਼ਿਟਿਵ ਗੱਲ ਖਾਸ ਤੌਰ ਤੇ ਗਰੀਬ ਲੋਕਾਂ ਲਈ ਹੁੰਦੀ ਹੈ ਜਿਨ੍ਹਾਂ ਦੇ ਕੋਲ ਪੈਸੇ ਆ ਮੈਂ ਉਹਨਾਂ ਦੀ ਗੱਲ ਨਹੀਂ ਕਰਦਾ ਪੈਸੇ ਆ ਜਿਨ੍ਹਾਂ ਦੇ ਕੋਲ ਵਿਚਾਰਿਆਂ ਦੇ ਕੋਲ ਲੱਖਾਂ ਡਾਲਰ ਰੁਪਏ ਦੇਣ ਲਈ ਨਹੀਂ ਆ ਨੂੰ ਜੀ ਉਹਨਾਂ ਲਈ ਇਹਨਾਂ ਨੇ ਨੇ ਉਹ ਆਪਰੇਸ਼ਨਲ ਹੈ ਹਾਂ ਐਕਚੁਅਲੀ ਤੁਸੀਂ ਜੇ ਦਿੱਲੀ ਜਾਓਗੇ ਤਾਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਉਹ ਉਹਦੇ ਚ ਲੋਕੀ ਜਿਹੜੇ ਆਮ ਵਰਗ ਵਾਲੇ ਸੁਖੀ ਆ ਤੁਸੀਂ ਕਲੀਨਿਕ ਦੇ ਵਿੱਚ ਜਾਓ ਉਹ ਡਾਕਟਰ ਬੈਠੇ ਆ ਨਰਸਾਂ ਹੈਗੀਆਂ ਉਹਨਾਂ ਦੇ ਕੋਲ ਤੇ ਫਿਰ ਉਹ ਦਵਾਈ ਦੇ ਦਿੰਦੇ ਆ ਤੁਹਾਨੂੰ ਇਹਦੇ ਨਾਲ ਕਾਫੀ ਹੱਦ ਤਾਈ ਹਾਲਾਂਕਿ ਚਲੋ ਇਸ ਤੋਂ ਉੱਪਰ ਉੱਠ ਕੇ ਅਸੀਂ ਇਹ ਵੀ ਚਾਹਾਂ ਚਾਵਾਂਗੇ ਕਿ ਗਰੀਬ ਦਾ ਹਰੇਕ ਦਾਜ ਕਰਨ ਲਈ ਹੋਣ ਕਿ ਕਿਸੇ ਗਰੀਬ ਬੰਦੇ ਨੂੰ ਵੀ ਹਾਰਟ ਅਟੈਕ ਹੋ ਜਾਦਾ ਉਹਨੂੰ ਕੈਂਸਰ ਹੋ ਸਕਦੀ ਹੈ ਜੀ ਤਾਂ ਉਸ ਲੈਵਲ ਤੇ ਅਜੇ ਨਹੀਂ ਪਹੁੰਚੇ ਸ਼ਾਇਦ ਉਹ ਪਰ ਜਿਹੜੀਆਂ ਛੋਟੀਆਂ ਛੋਟੀਆਂ ਗੱਲਾਂ ਸੀ ਉਹ ਕੀਤੀਆਂ ਫਿਰ ਇਹਨਾਂ ਨੇ ਜਿਹੜਾ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਮੈਂ ਸਮਝਦਾ ਕਿ ਤੁਸੀਂ ਦੇਖ ਲਓ ਦੁਨੀਆ ਦੇ ਵਿੱਚ ਜਿਹੜੇ ਅਮੀਰ ਤੋਂ ਅਮੀਰ ਮੁਲਕ ਆ ਉਹਨਾਂ ਦੇ ਮੈਜੋਰਟੀ ਬੱਚੇ ਜਿਹੜੇ ਪਬਲਿਕ ਸਕੂਲਾਂ 'ਚ ਪੜਦੇ ਇਹ ਸਰਕਾਰੀ ਸਕੂਲ ਹੈ ਇੱਥੇ ਵੀ ਇਤੋਂ ਵਧੀਆ ਅਮੀਰ ਮੁਲਕ ਨਹੀਂ ਲੱਭਣਾ ਬਿਲਕੁਲ ਸਾਰੇ ਪਬਲਿਕ ਸਕੂਲ ਸਾਡੇ ਪਬਲਿਕ ਸਕੂਲਾਂ ਪੜਦੇ ਨੇ ਥੋੜੇ ਜਿਹਾ ਚ ਪੜਦੇ ਸਕੂਲ ਹੋਇਆ ਕੈਫਟਕ ਸਕੂਲ ਹੋਇਆ ਇਦਾਂ ਦੇ ਫਰਕ ਨਹੀਂ ਸੋ ਇਸ ਕਰਕੇ ਪਬਲਿਕ ਦਾ ਰੋਲ ਹੋਣਾ ਸਰਕਾਰ ਦਾ ਰੋਲ ਹੋਣਾ ਸਾਰੇ ਲੋਕਾਂ ਲਈ ਐਜੂਕੇਸ਼ਨ ਲੈਣਾ ਐਜੂਕੇਸ਼ਨ ਦੇ ਕੋਚ ਜਿਨ੍ਹਾਂ ਨੂੰ ਕਹਿੰਦੇ ਕਿ ਨੀਂ ਇੰਗਰੇਜ਼ੀ ਦੇ ਵਿੱਚ ਜੇ ਕਿਸੇ ਤੁਸੀਂ ਸਿਖਾਓਗੇ ਫਿਸ਼ ਫਾਈਂਡਿੰਗ ਕਿਦਾਂ ਖਾਊਗਾ ਖਾਸ ਤੌਰ ਅੱਜ ਕੱਲ੍ਹ ਦੀ ਦੇ ਵਿੱਚ ਸਮਾਜ ਦੇ ਵਿੱਚ ਜਿਹਨੂੰ ਇਨਫੋਰਮੇਸ਼ਨ ਟੈਕਨੋਲੋਜੀ ਦਾ ਨਹੀਂ ਕੁਝ ਪਤਾ ਉਹ ਬਚਾਰਾ ਤਾਂ ਅਨਪੜਾ ਅਨਪੜੀ ਰਿਹਾ ਇਸ ਕਰਕੇ ਉਹ ਜਿੰਨੇ ਵੀ ਤੁਸੀਂ ਲੋਕਾਂ ਨੂੰ ਪੜ੍ਹਾਓਗੇ ਉਹ ਆਪਣਾ ਖੁਦ ਰੋਜ਼ਗਾਰ ਪੈਦਾ ਕਰ ਲਵਗੇ ਜੇ ਜੇ ਤੁਸੀਂ ਉਹਨਾਂ ਨੂੰ ਸਹੀ ਤੌਰ ਤੇ ਐਜੂਕੇਸ਼ਨ ਦੇ ਦੋਗੇ ਸਾਡੇ ਪੰਜਾਬ ਦੇ ਵਿੱਚ ਉਹ ਖਤਮ ਹੋ ਗਿਆ ਵੱਧ ਕਿਸਮਤੀ ਦੀ ਗੱਲ ਹੈ ਕਿ ਜਿਹੜੇ ਮੇਰਾ ਖਿਆਲ 60ਵੇਂ ਜਾਂ 70ਵੇਂ ਪੜੇ ਹੋਣਗੇ ਉਹਨਾਂ ਨੇ ਵੀ ਉਹ ਪਬਲਿਕ ਸਕੂਲ ਸਿਸਟਮ ਜਾਂ ਦੇ ਵਿੱਚ ਪੜੇ ਹੋਣੇ ਐਸੀ ਵਿੱਚ ਕੀਤੀ ਜਦ ਤੱਕ ਵੇਖਿਆ ਉੱਥੇ ਸਾਡੇ ਮੈਨੂੰ ਯਾਦ ਹੈ ਸਾਡੇ ਸਕੂਲ ਪਹਿਲਾਂ ਖਾਸਾ ਸਕੂਲ ਹੁੰਦਾ ਸੀ ਉਸ ਤੋਂ ਬਾਅਦ ਸਰਕਾਰੀ ਬਣ ਗਿਆ ਸਟੈਂਡਰਡ ਜਿਹੜਾ ਬੜਾ ਅੱਛਾ ਸੀ ਉਹਨਾਂ ਨੂੰ ਸਾਡੇ ਹੈਡਮਾਸਟਰ ਸਾਹਿਬ ਪੁੱਛਦੇ ਹੁੰਦੇ ਸੀ ਜੇ ਕਿਸੇ ਟੀਚਰ ਦਾ ਕੋਈ ਸਟੂਡੈਂਟ ਫੇਲ ਹੋ ਗਿਆ ਕਿ ਕਿਉਂ ਹੋਇਆ ਹੈ ਫਿਰ ਉਹਨਾਂ ਹੋ ਜਾਂਦੀ ਹੈ ਸਾਡੇ ਸਕੂਲ ਦਾ ਬੱਚਾ ਫੇਲ ਨਹੀਂ ਹੋਣਾ ਜੇਰਾ ਉਹਨਾਂ ਕੀਤਾ ਇਹਨਾਂ ਨੇ ਤੁਸੀਂ ਉਲਟਾ ਹੋਣ ਕੰਮ ਦਿੱਲੀ ਛੋਇਆ ਥੋੜਾ ਜਿਹਾ ਕਿ ਲੋਕੀ ਜਿਹੜੇ ਸਰਕਾਰ ਜਿਹੜੇ ਪ੍ਰਾਈਵੇਟ ਸਕੂਲਾਂ ਤੋਂ ਕੱਢ ਕੇ ਜਿੱਥੇ ਖਰਚੇ ਜਾ ਰਹੇ ਆ ਸਰਕਾਰੀ ਸਕੂਲਾਂ 'ਚ ਪਾ ਰਹੇ ਆ। ਹੋਣਾ ਚਾਹੀਦਾ ਦੀ ਫੋਟੋ ਬਹੁਤ ਵਧੀਆ ਆਈ ਵਧੀਆ ਆਇਆ। ਮਤਲਬ ਇਹਨਾਂ ਨੇ ਜ਼ੋਰ ਲਾਇਆ। ਪੜ੍ਹੇ ਲਿਖੇ ਬੰਦੇ ਆ ਥੋੜਾ ਜਿਹਾ ਇਹਨੂੰ ਤੇ ਜ਼ੋਰ ਲਾਓ ਤੇ ਮੈਨੂੰ ਲੱਗਦਾ ਪਤਾ ਨਹੀਂ ਮੈਂ ਗਲਤ ਹਾਂ ਤੇ ਸ਼ਾਇਦ ਇਹ ਪੰਜਾਬ ਦੇ ਵਿੱਚ ਵੀ ਇਦਾਂ ਹੀ ਕਰਨਾ ਅੱਗੇ ਸਾਡੇ ਵੀ ਸਮਝ ਲਓ ਮਹੱਲਾ ਕਲੀਨਿਕ ਹੀ ਹੁੰਦੀ ਸੀ ਪੰਜਾਬ ਦੇ ਵਿੱਚ ਛੋਟੇ ਛੋਟੇ ਹਸਪਤਾਲ ਹੁੰਦੇ ਸੀ ਪਿੰਡਾਂ ਦੇ ਵਿੱਚ ਅਸੀਂ ਜਾਂਦੇ ਹੁੰਦੇ ਸੀ ਦਸੀ ਲੱਗਦੀ ਸੀ 10 ਪੈਸੇ ਦਾ ਦੇਖਣਾ ਤੇ ਉਹ ਟੀਕਾ ਵੀ ਲਾਣਦੇ ਹੁੰਦੇ ਸੀ ਮੁਫਤ ਬਿਲਕੁਲ ਉਸ ਤੋਂ ਬਾਅਦ ਉਹ ਗੜਕ ਦਾ ਗੜਕ ਦਾ ਜੇ ਤੁਸੀਂ ਜਾਓ ਇੱਕ ਤਾਂ ਸਰਕਾਰੀ ਹਸਪਤਾਲ ਵਾਲੇ ਬਥੇਰੇ ਪੈਸੇ ਲੈਂਦੇ ਦੂਸਰਾ ਬਿਲਕੁਲ ਫਾਰਮੇਸੀ ਬਣੀ ਹੈ ਜਿਹੜੀ ਦਵਾਈਆਂ ਵੇਚੇ ਮੇਰਾ ਖਿਆਲ ਸਰਕਾਰੀ ਹਸਪਤਾਲ ਦੀਆਂ ਦਵਾਈਆਂ ਵੇਚਦਾ ਜੇ ਕੋਈ ਬੰਦਾ ਬਿਮਾਰ ਹੋ ਜਾਂਦਾ ਬਹੁਤ ਸਾਰਨ ਪਰਿਵਾਰ ਦੇ ਵਿੱਚ ਬਹੁਤ ਵੱਡੀ ਉਹਦੇ ਲਈ ਬੜੀ ਵੱਡੀ ਜੇ ਦੋ ਗੱਲਾਂ ਤੇ ਫੋਕਸ ਕਰ ਲੈਣਾ ਜਿਹੜਾ ਸਾਡੀ ਕਾਂਗਰਸ ਪਾਰਟੀ ਦੀ ਜਿਹੜੀ ਮੈਨੀਫੈਸਟੋ ਆਇਆ ਉਸ 'ਚ ਜ਼ਿਕਰ ਨਹੀਂ ਕੀਤਾ ਉਹਨਾਂ ਨੇ ਨਾ ਐਜੂਕੇਸ਼ਨ ਦਾ ਜ਼ਿਕਰ ਕੀਤਾ ਨਾ ਹੀ ਹੈਲਥ ਕੇਅਰ ਦਾ ਜ਼ਿਕਰ ਕੀਤਾ माफिया राज वाले वो भी कह ही जाते हैं कि ठीक है जबों पर वो उदा रिकॉर्ड ये शो करता है कि जबों मजीठिए नु सीबीआई इंक्वायरी दी गल चलदी ਤੁਸੀਂ ਲਵਾਉਣੀਆਂ ਜਾਂ ਐਕਚੁਅਲੀ ਪਾਲਿਸੀ ਤੁਸੀਂ ਚੰਗੀ ਕੱਢਣੀ ਨੇ ਡਿਸਾਈਡ ਕਰਨਾ ਐ ਨੂੰ ਫੈਸਲਾ ਕਰਨਾ ਅੰਤਮ ਦੇ ਵਿੱਚ ਦੂਸਰੀ ਗੱਲ ਜਿਹੜਾ ਕਰਜ਼ਾ ਆ ਨਾ ਉਹ ਉਹ ਇੱਕ ਐਸਪੈਕਟ ਆ ਵੈਸੇ ਐਗਰੀਕਲਚਰ ਜਿਹੜਾ ਸੰਕਟ ਆਇਆ ਸਾਡੇ ਸੰਕਟ ਆਇਆ ਉਹ ਚ ਪਾਣੀ ਦਾ ਸੰਕਟ ਜਿਹੜੀ ਉਹਦੇ ਚ ਪਹਿਲਾਂ ਗ੍ਰੀਨ ਰੈਵੋਲੂਸ਼ਨ ਦੇ ਟਾਈਮ ਤੇ 5 5.7% 8% ਗਰੋਥ ਹੁੰਦੀ ਸੀ ਉਹ ਖਤਮ ਹੋ ਗਈ ਦੇਖੋ ਤੇ ਜਿਹੜਾ ਖਰਚਿਆਂ ਦਾ ਹਿਸਾਇਆ ਉਹ ਜ਼ਿਆਦਾ ਵਧ ਗਿਆ ਅ ਆਮਦਨੀ ਘਟ ਗਈ ਹੈ ਇੱਕ ਗੱਲ ਕਹੀ ਜਾਨੀ ਮੋੜ ਮੋੜ ਕੇ ਕਿ ਅਸੀਂ ਕਿਸਾਨਾਂ ਨੂੰ ਜਿਹੜੀ ਪਾਣੀ ਮੁਫਤ ਬਿਜਲੀ ਮੁਫਤ ਦਿੰਨੇ ਆ ਹੁਣ ਜਿਹੜੀ ਸੈਂਟਰਲ ਗਵਰਨਮੈਂਟ ਦੀ ਨੀਤੀ ਹੈ ਨਾ ਜੋ ਪ੍ਰਾਈਸ ਉਹ ਕਣਕ ਦੀ ਤਾਂ ਝੋਨੇ ਦੀ ਉਹ ਸਬਸਿਡੀਆਂ ਦੇਖਦੇ ਆ ਵੀ ਇਹਨਾਂ ਨੂੰ ਕਿਸਾਨਾਂ ਨੂੰ ਕਿਹੜੀਆਂ ਮਿਲਦੀਆਂ ਜਿਨ੍ਹਾਂ ਦੇ ਵਿੱਚ ਫਰਟੀਲਾਈਜ਼ਰ ਵੀ ਆ ਕਿਸਾਨਾਂ ਨੂੰ ਤਾਂ ਦਿੰਦੇ ਨਹੀਂ ਉਹ ਵੈਸੇ ਫਰਟੀਲਾਈਜ਼ਰ ਪ੍ਰੋਡਿਊਸਰਜ਼ ਨੂੰ ਦਿੰਦੇ ਆ ਉੱਥੇ ਜਾ ਕੇ ਸਬਸਿਡੀ ਕੰਪਨੀਆਂ ਨੂੰ ਮਿਲਦੀਆਂ ਉਹ ਕੰਪਨੀਆਂ ਆਏ ਨਹੀਂ ਕੁਝ ਕਹਿੰਦੇ ਸਾਨੂੰ ਸਬਸਿਡੀ ਨਾ ਦਿਓ ਤੇ ਦੂਸਰਾ ਉਹ ਸਾਰੀਆਂ ਸਬਸਿਡੀਆਂ ਵਿੱਚ ਕਾਊਂਟ ਕਰਦੇ ਕਿ ਇਹਨਾਂ ਨੂੰ ਇੰਨੀ ਸਬਸਿਡੀ ਮਿਲਦੀ ਐ ਇੰਨੀ ਕੋਸਟ ਆਉਂਦੀ ਇਸ ਕਰਕੇ ਉਹਦੀ ਗਾਇਟ ਨਹੀਂ ਕੱਟ ਤਾਂ ਸੋ ਜੇ ਉਹਨਾਂ ਨੂੰ ਪੂਰਾ ਪਾਣੀ ਮਿਲੇ ਪਰ ਪਾਣੀ ਇਦਾਂ ਨਾ ਹੋਵੇ ਤੁਸੀਂ ਹੁਣ ਉਹਨਾਂ ਨੇ ਛੱਡਿਆ ਮੋਟਰ ਚੱਲਦੀ ਛੱਡ ਦਿੰਦੇ ਆ। ਅੱਛਾ ਉਹਦੀ ਯੂਟਿਲਾਈਜੇਸ਼ਨ ਕਿੰਨੀ ਮਾੜੀ ਐ ਹਾਲਾਂਕਿ ਇਹ ਕੋਈ ਲੋਕਲ ਸਾਇੰਸ ਨਹੀਂ ਐ ਤੁਸੀਂ ਜਾ ਕੇ ਦੇਖ ਲਓ ਕੈਲੀਫੋਰਨੀਆ ਉਹ ਪਾਣੀ ਨੂੰ ਲਿਜਾ ਕੇ ਲੈ ਕੇ ਜਾਂਦੇ ਨੇ ਛੋਟੇ ਛੋਟੀਆਂ ਪਾਈਪਸ ਦੇ ਵਿੱਚ ਦੇ ਚਾਹੇ ਡ੍ਰਿਪ ਸਿਸਟਮ ਡ੍ਰਿਪ ਸਿਸਟਮ ਉਹ ਮਾੜਾ ਮਾੜਾ ਡ੍ਰਿਪ ਕਰਦਾ ਹੈ ਤੇ ਉਹਦੇ ਨਾਲ ਤੁਸੀਂ ਜਿਹੜਾ 100 ਲੀਟਰ ਪਾਣੀ ਵਰਤਦੇ ਮੇਰੇ ਖਿਆਲ 10 ਲੀਟਰ ਨਾਲ ਜੋ ਉਨੀ ਵੱਡੀ ਗੱਲ ਨਹੀਂ ਹੈ ਵੀ ਮਾਰਸ ਤੇ ਜਾ ਕੇ ਅਸੀਂ ਖੇਤੀ ਕਰਨੀ ਸਰਕਾਰ ਕਰ ਸਕਦੀ ਹੈ ਬਾਕੀ 37000 ਡਾਲਰ ਰੁਪਇਆ 37000 ਕਰੋੜ ਦਾ ਕਰਜ਼ਾ ਸਾਰੇ ਪੰਜਾਬ ਦੇ ਕਿਸਾਨਾਂ ਦੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਜਿਹੜਾ ਅਦਾਨੀ ਹੈ ਨਾ ਉਹ ਮੋਦੀ ਦਾ ਮਿੱਤਰ ਹੈ ਇਹ ਇਹ ਹਾਲੇ ਬਹੁਤਿਆਂ ਵੱਡਿਆਂ ਚ ਨਹੀਂ ਹੈ ਜੀ ਹਾਂ ਹਾਲੇ ਗਵਲੇ ਜੀ ਚ ਹੈ ਜੋ ਲਾ ਰਿਹਾ ਕਰੋੜ ਦਾ ਕਰਜ਼ਾ ਹੈ ਖਾਸ ਤੌਰ ਸਟੇਟ ਬੈਂਕ ਦਾ ਹੂੰ ਕਿਸੇ ਦਿਨ ਮਾਫ ਕਰ ਦੇਣਗੇ ਆ ਮਾਲਿਆ ਨਹੀਂ ਸੀ 95000 ਕਰੋੜ ਲੱਗਣਾ ਸੀ ਜੈਕੋ ਲੈ ਕੇ ਸ਼ਰੀਆਮ ਗਿਆ ਪਾਸਪੋਰਟ ਸੀ ਉਹਨੂੰ ਮੋਰੋ ਕੰਦੇ ਸੀ ਸਾਨੂੰ ਪਤਾ ਨਹੀਂ ਲੱਗਾ ਚਲੋ ਉਹ ਖਬਰਾਂ ਦੱਸਣ ਨੂੰ ਹੁੰਦੀ ਹੈ ਔਰ ਇਹਨਾਂ ਨੂੰ ਸਾਰਿਆਂ ਨੂੰ ਪਤਾ ਸੀ ਉਹ ਕਿੱਥੇ ਚੱਲਿਆ ਕਿੱਥੇ ਜਾਣਾ ਉਹਨੇ ਕਿੰਨਾ ਕਰਜਾ ਸੀ ਉਹਦੇ ਸਰ ਸੋ 37000 ਕਰੋੜ ਨਹੀਂ ਕਰੋੜਾਂ ਕਰੋੜਾਂ ਖਤਮ ਕਰ ਸਕਦੇ ਕਰਜੇ ਤੇ ਬੰਦੇ ਤੁਹਾਨੂੰ ਦੇਸ਼ ਨੂੰ ਫੀਡ ਕਰ ਰਹੇ ਆ ਸਵੇਰ ਨੂੰ ਉੱਠ ਕੇ ਚੱਲ ਜਾਂਦੇ ਤੜਕੇ ਉੱਠ ਕੇ ਕੰਮ ਕਰਦੇ ਆ ਫਿਰ ਇੱਕ ਫਿਲਮ ਬਣਾਈ ਸੀ ਮੈਨੂੰ ਯਾਦ ਆ ਕਿ ਉਹ ਹੁੰਦਾ ਕਿ ਜੇ ਇਸ਼ੂ ਆ ਗਈ ਹੁਣ ਪੈਸੇ ਬਣਾਓ ਉਦੋਂ ਇੱਕ ਬੜੀ ਗਲਤ ਧਾਰਨਾ ਪੇਸ਼ ਕੀਤੀ ਗਈ ਜਿਹੜੀ ਸਲਾਹ ਨਹੀਂ ਸੀ ਕੇ ਪੈਸੇ ਜਿਹੜੇ ਲੋਨ ਸ਼ਰਾਬ ਤੇ ਲਾਉਂਦਾ ਆ ਉਹ ਡੌਰੀ ਤੇ ਪੈਸੇ ਦਿੰਦਾ ਆ ਮਤਲਬ ਹੋਰ ਚੀਜ਼ਾਂ ਖਰੀਦਦਾ ਹੈ ਇਹ ਸਟੱਡੀਜ਼ ਕੀਤੀਆਂ ਉਹਨਾਂ ਨੇ ਬੰਦੇ ਜਰਨਲਸ ਦੇ ਵਿੱਚ ਸਟਡੀ ਇੱਕ ਦੇ ਆ ਉਹਨਾਂ ਨੇ ਇਹ ਗੱਲਾਂ ਮੰਨੀਆਂ ਠੀਕ ਆ ਬੰਦੇ ਕਿ ਹਰ ਇੱਕ ਬੰਦੇ ਤੇ ਪ੍ਰੈਸ਼ਰ ਹੈ ਹਾਂ ਕਿ ਮੈਂ ਲਾਉਣਾ ਹੈ ਹਰ ਚੀਜ਼ ਤੇ ਤੁਸੀਂ ਹੁਣ ਇੱਕ ਸਟੈਂਡਰਡ ਬਣਾ ਦਿੰਦੀ ਹੈ ਨਾ ਸੁਸਾਇਟੀ ਸਮਾਜ ਦੇ ਵਿੱਚ ਇੱਕ ਆ ਜੇ ਉਹਨਾਂ ਤੇ ਆ ਬਾਕੀਆਂ ਨੇ 70 ਜ਼ਰੂਰ ਤੇ ਪਾਉਣਗੇ ਇੱਕ ਧੀ ਨੂੰ ਤੁਸੀਂ ਘਰੋਂ ਤੋੜਦੇ ਆ ਜੇ ਉਹਨੂੰ ਖਾਲੀ ਤੋੜਦੇ ਆ ਦੂਜੀ ਧੀ ਇੱਕ ਤੇ 5 ਕਰੋੜ ਜਾਂਦੀ ਉਹਦੇ ਮਨ 'ਚ ਜ਼ਰੂਰ ਹੁੰਦਾ ਸੋ ਹਰ ਬਾਤ ਦੇ ਸਿਰ ਤੇ ਇਹ ਇੱਕ ਕਰਜ਼ਾ ਚੜਿਆ ਉਹਦੀ ਧੀ ਦਾ ਉਹਦਾ ਫਰਕ ਕੀ ਬਣਦਾ ਇਹ ਸਮਾਜ ਨੇ ਚੜਿਆ ਸਾਰੇ ਨੇ ਉਹ ਗੱਲਾਂ ਹੁੰਦੀਆਂ ਹਨ ਉਹਨਾਂ ਨੇ ਜਿਹੜੇ ਸਟੱਡੀਅੰਟ ਕੀਤੀਆਂ ਨਾ ਪੰਜਾਬ ਦੀਆਂ ਮੈਂ ਕਹਿੰਦਾ ਜਿਹੜਾ ਕਰਜ਼ਾ ਲੈਂਦੇ ਆ ਉਹ ਧੱਕੇ ਤੇ ਲੱਗਦਾ ਹੈ ਜਿਹੜਾ ਇਹਨਾਂ ਨੇ ਫਿਲਮ 'ਚ ਜ਼ਿਕਰ ਨਹੀਂ ਕੀਤਾ ਵੀ ਪੀਂਦੇ ਆ ਇਹਨਾਂ ਨੂੰ ਸਬਸਿਡੀ ਮਿਲਦੀ ਇਹਨਾਂ ਦੀ ਇੰਡਸਟਰੀ ਤਵਾਹ ਹੋ ਜਾਂਦੀ ਜਿੰਨੇ ਕਮਰਸ਼ੀਅਲ ਆ ਜਿੰਨੇ ਸ਼ੌਪਸ ਵਾਲੇ ਆ ਇਹ ਵੀ ਸ਼ਰਾਬ ਪੀਂਦੇ ਆ ਇਹ ਨੀਤੀ ਉਹ ਵਿਆਪੀ ਖर्चा ਕਰਦੇ 4 ਗੁਣਾ ਕਰਦੇ ਜੱਟ ਤੋਂ 5 ਗੁਣਾ ਕਰਦੇ ਕੇ ਉਹ ਉਹਦੀ ਸ਼ੈਲ ਲਾਉਣੀ ਔਰ ਫਿਰ ਉਹ ਥੀਸਿਸ ਦੇ ਤੌਰ ਤੇ ਸਮਾਜ ਦੇ ਵਿੱਚ ਛੱਡਣਾ ਇੱਕ ਬੁੱਢੀ ਆਹ ਗੱਲ ਹੋ ਰਹੀ ਆ ਉਹ ਵੈਸੇ ਗੰਤ ਪਿਕਚਰ ਕਰਨੀ 70% ਸਟੱਡੀਜ਼ ਨੇ ਕਿਹਾ ਕਿ ਜਿਹੜਾ ਵੀ ਖੇਤੀ ਤੇ ਲੱਗਦਾ ਉਹ ਖਰਚਦੇ ਆ ਉਹ ਵੀ ਤੁਸੀਂ ਇਹ ਕਰ ਲੋਗੇ ਸਮਾਜ ਨੇ ਜਿਹੜਾ ਸਾਡੇ ਦਿਮਾਗ ਤੇ ਬੋਝ ਪਾਇਆ ਹੈ ਨਾ ਵੀ ਆ ਖਰਚੇ ਕਰਨੇ ਆ ਖਰਚੇ ਕਰਨੇ ਆ ਹਾਲਾਂਕਿ ਮੈਂ ਸਾਂਝਦਾ ਕਿ ਜੇ ਅਸੀਂ ਸਾਰਾ ਸਮਾਜ ਇੰਨੀ ਕਕਲ ਕਰ ਲਈਏ ਜਿੱਦਾਂ ਹੁਣ ਨੋਟਬੰਦੀ ਨੇ ਇੱਕ ਮਾੜੀ ਜੀ ਗੱਲ ਕਰਦੀ ਸੀ ਲੋਕੀ ਪੈਸੇ ਘੱਟ ਖਰਚਣਗੇ ਬਿਲਕੁਲ ਵੈਸੇ ਪੁੱਪਾ ਉਹ ਕਹਿੰਦਾ ਦੇ ਮਾਰੀ ਲਾਤ ਤੋਂ ਕਮ ਆ ਗਈ ਲੋਕਾਂ ਨੂੰ ਵੈਸੇ ਹੋਣਾ ਚਾਹੀਦਾ ਕੋਈ ਬੰਦਾ ਇੱਥੋਂ ਗਿਆ ਹੋਊਗਾ ਕਹਿੰਦਾ ਕਿ ਅਸੀਂ ਪੰਜ ਸੱਤ ਫੰਕਸ਼ਨ ਰੱਖੇ ਸੀ ਵਿਆਹ ਦਾ ਕਰਕੇ ਸਾਨੂੰ ਆ ਪਰ ਇਹ ਮੋੜ ਕੇ ਫੇਰ ਆ ਜਾਣਾ ਉਹ ਕਿਉਂਕਿ ਨੋਟ ਤਾਂ ਬਾਹਰ ਆ ਜਾਣੇ ਉਹ ਜਿੰਨੇ ਪਹਿਲਾਂ ਸੀਗੇ ਉੰਨੇ ਫੇਰ ਆ ਜਾਣੇ ਆ ਤੇ ਉਹ ਉਹ ਗੱਲਾਂ ਉਹ ਸਾਰਾ ਸਮਾਜ ਨੇ ਸਾਰੇ ਨੇ ਪ੍ਰੈਸ਼ਰ ਪਾਇਆ ਇੱਕ ਅੱਧਾ ਬੰਦਾ ਤੁਸੀਂ ਜਜ਼ਬਾਤੀ ਹੋ ਕੇ ਜੇ ਕਰ ਵੀ ਦਿੰਦਾ ਹੈ ਲੋਕੀ ਉਹਦੇ ਧੀਆ ਪੁੱਤ ਨਹੀਂ ਉਹਨਾਂ ਬੋਲਦੇ ਤੁਸੀਂ ਦੇਖਿਆ ਉਹ ਜਿਹੜਾ ਇਮਾਨਦਾਰ ਦਾ ਵੀ ਤਾਂ ਸਾਨੂੰ ਭੁੱਖਾ ਮਾਰੂ ਬਿਲਕੁਲ ਕਹਿੰਦੇ ਉਹਨੂੰ ਬੰਦੇ ਨੂੰ ਉਹ ਰਿਸ਼ਤੇਦਾਰ ਕਹਿਣਗੇ ਉਹਦੇ ਯਾਰ ਦੋਸਤ ਕਹਿਣਗੇ ਦੇਖ ਲਓ ਕਹਿੰਦਾ ਬਾਕੀ ਦੇ ਪੈਸੇ ਖਾ ਤੋਂ ਜੇ ਸਰਕਾਰ ਜੱਟ ਸਾਹਿਬ ਬਣਦੀ ਹੈ ਐਨਾ ਛੇਤੀ ਪੰਜਾਬ ਦਾ ਵਿਗੜਿਆ ਕੰਮ ਠੀਕ ਕਿਵੇਂ ਉਹ ਰਹੀ ਉਹ ਸਾਡਾ ਪਾਣੀ ਮੁੱਕ ਰਿਹਾ ਉਹ ਕਿਵੇਂ ਪਾਣੀ ਤੇ ਕਿਸੇ ਦਾ ਵੀ ਰਵਈਆ ਮਤਲਬ ਪਹਿਲੀ ਤਾਂ ਗੱਲ ਸਟੈਂਡ ਹੀ ਹੈ ਨਹੀਂ ਕਿਸੇ ਪਾਰਟੀ ਦਾ ਵੀ ਜਿਹੜਾ ਮੈਂ ਆਪਾਂ ਮੁਰਮੁਰ ਕੇ ਗੱਲ ਕੀਤੀ ਹੈ ਦੋਹਾਂ ਜਣਿਆਂ ਨੇ ਕਿ ਇਸ ਇਸ਼ੂ ਜਿਹੜੀ ਉਸ ਰਾਜਸਥਾਨ ਨੂੰ ਜਿਹੜਾ ਪਾਣੀ ਜਾਂਦਾ ਹੈ ਬਿਲਕੁਲ ਇਹ ਤਾਂ ਬਣੀ ਨਾ ਪਾਣੀ ਉਹ ਹਮੇਸ਼ਾ ਹਰਿਆਣੇ ਦਾ ਲਿਆ ਕੇ ਸ਼ੁਰੂ ਕਰ ਦੇਣਗੇ ਜਿਹੜਾ ਰਾਜਸਥਾਨ ਨੂੰ ਪਾਣੀ ਜਾਂਦਾ ਕਿਸੇ ਵੀ ਪਾਰਟੀ ਨੇ ਕਿੰਨਾ ਤਿਹਰਾ ਚੋਂ ਅਜੇ ਤੱਕ ਨਾ ਲਿਆ ਬਾਕੀ ਗੱਲਾਂ ਛੱਡ ਦਿਓ ਤੁਸੀਂ ਪੰਜਾਬ ਦਾ ਇਹ ਪਾਣੀ ਅੱਛਾ ਦੂਜਾ ਜਿਹੜਾ ਪੰਜਾਬ ਦੇ ਵਿੱਚ ਸਾਡੇ ਥੱਲੇੋਂ ਪਾਣੀ ਆਉਂਦਾ ਹੈ ਜੇ ਟਿਊਬਵਲ ਦਾ ਉਹ ਥੱਲੇ ਨੂੰ ਜਾ ਰਿਹਾ ਹੂੰ ਥੱਲੇ ਜਾ ਰਿਹਾ ਉਹ ਡੇਂਜਰਸ ਹੈ ਬੜਾ ਖਤਰਨਾਕ ਹੈ ਜੇ ਤੁਹਾਡਾ ਸਾਡਾ ਥੱਲੇ ਵਾਲਾ ਪਾਣੀ ਖਤਮ ਹੋ ਜਵੇ ਫਿਰ ਸਾਡੀ ਜਿਹੜੀ ਪੰਜਾਬ ਦੀ ਜ਼ਮੀਨ ਹੈ ਬੰਜਰ ਹੋ ਇਹ ਇੱਕ ਵੱਡਾ ਮਸਲਾ ਹੈ ਜਿਹੜੀ ਵੀ ਸਰਕਾਰ ਬਣੇ ਉਹ ਇਹ ਮਸਲਾ ਨੂੰ ਨਹੀਂ ਛੱਡਣਾ ਚਾਹੀਦਾ ਕਿ ਅਸੀਂ कि ਸੇ ਨੂੰ ਕੰਪਰੋਮਾਈਜ਼ ਕਰ ਲਈਏ ਤੋਂ ਵੱਡੀ ਇਸ਼ੂ ਪਹਿਲੀ ਹੋਣੀ ਹੈ ਬੰਦ ਕਰੋ ਦੂਸਰਾ ਨਹਿਰਾਂ ਦਾ ਪਾਣੀ ਸ਼ੁਰੂ ਕਰੋ ਜਿਹੜਾ ਪਹਿਲਾਂ ਹੁੰਦਾ ਵੀ ਟਿਊਬ ਵਾਲੇ 24 ਘੰਟੇ ਚੱਲੀ ਜਾਂਦੇ ਆ ਵਪਾਰਕ ਸੰਦੇਸ਼ਾ ਤੋਂ ਬਾਅਦ ਦੂਜੀਆਂ ਦੋ ਪਾਰਟੀਆਂ ਦੀ ਗੱਲਬਾਤ ਕਰਾਂਗੇ ਡਾਕਟਰ ਸ਼ਿੰਦਰ ਮੇਰੇ ਨਾਲ ਸੰਦੀ ਗੱਲ ਚੱਲ ਰਹੀ ਹੈ ਡਾਕਟਰ ਸਾਹਿਬ ਉਹਨਾਂ ਦੇ ਨਾਲ ਅਲੱਗ-ਅਲੱਗ ਬਸ਼ਰੇਸ਼ ਅੱਛਾ ਡਾਕਟਰ ਸਾਹਿਬ ਕਿਹੜੇ ਕਾਰਨ ਹੋਗੇ ਇਹਦਾ ਘਾਗ ਸਿਆਸਤਦਾਨ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਸੀਐਮ ਬਣਿਆ ਤੇ ਚਿਤ ਕਰਨ ਦਾ ਉਹਦੇ ਕੋਲ ਜਗਾਰਡ ਆ ਬੰਦਿਆਂ ਨੂੰ ਚਿਤ ਕਰ ਦਿੰਦਾ ਕੋਈ ਨਹੀਂ ਉਹਨੇ ਏਰੀਆ ਦੇ ਵਿੱਚ ਪੈਦਾ ਹੋਣ ਦਿੱਤਾ ਰੋਲ ਤੇ ਟੱਬਰਾਂ ਦੇ ਟੱਬਰ ਪੰਜਾਬ 'ਚ ਵੀ ਨਹੀਂ ਹੋਣ ਦਿੱਤਾ ਭੂੰਦੜੋਣੀ ਕੱਦੇ ਢੀਂਡ ਸਿਉਣੀ ਕੱਦੇ ਵਡਾਲੇ ਉਣੀ ਕੱਦੇ ਤੁਰੇ ਫਿਰਦੇ ਕੋਈ ਨੇੜੇ ਨਹੀਂ ਤਲਵੰਡੀ ਗਾਲਾਂ ਕੱਢਦੇ ਤੁਰਗੇ ਨੇੜੇ ਨਹੀਂ ਲੱਗਣ ਦਿੱਤੇ ਟੌੜਾ ਅਖੀਰ ਚ ਕਰਕੇ ਗਿਆ ਇਸ ਵਾਰ ਲੱਗਦਾ ਨਹੀਂ ਕਿ ਗ੍ਰਾਫ ਡਾਊਨ ਹੋ ਗਿਆ ਕਾਰਨ ਕੀ ਹੋਵੇਗਾ ਇਸ ਕਾਰਨ ਤਾਂ ਹੈਗਾ ਸਿਰਫ ਵਿਥ ਫੋਕਸ ਜਿਹੜਾ ਉਹ ਫੈਮਲੀ ਤੇ ਵਿਅਕਤੀ ਆ ਵੀ ਸਾਡਾ ਜੀ ਪੰਥਕ ਮਸਲਾ ਆ ਹ ਹ ਹਾਲਾਂਕਿ ਉਹਨਾਂ ਨੂੰ ਸਾਨੂੰ ਸਾਰਿਆਂ ਨੂੰ ਪਤਾ ਉਹ ਪੰਥਕ ਕੋਈ ਨਹੀਂ ਹੁੰਦਾ ਉਹ ਬਸ ਗੋਲਖਾਂ ਤੇ ਕੰਟਰੋਲ ਕਰਨ ਲਈ ਹੁੰਦਾ ਕੰਮ ਦੂਸਰੀ ਇਸ਼ੂ ਸੀ ਕਿ ਪੰਜਾਬ ਦੇ ਪਾਣੀਆਂ ਦਾ ਪੰਜਾਬ ਦੇ ਇਲਾਕਿਆਂ ਦਾ ਮਸਲਾ ਠਾਲ ਹੁੰਦੇ ਸੀ ਖਾਸ ਤੌਰ ਤੇ ਮੰਦਵਾਲ ਸਾਹਿਬ ਦੇ ਰੈਜ਼ੋਲੂਸ਼ਨ ਤੋਂ ਬਾਅਦ ਵੱਦਦਕਾਰ ਹੋਣੇ ਚਾਹੀਦੇ ਤਾਂ ਫਿਰ ਅ ਇੱਕ ਗੱਲ ਇਹਨਾਂ ਨੇ ਪਤਾ ਲੱਗ ਗਿਆ ਸੀ ਨੇ ਕਿ ਸਾਡੀ ਜਿਹੜੀ ਜੱਟਾਂ ਆ ਬਸ ਲਈ ਨੂੰ ਜੋ ਕੁਝ ਦੇ ਸਕਦੇ ਆ ਦੇ ਦਿਓ ਉਹਨਾਂ ਲਈ ਵੀ ਕਦੇ ਇਹਨਾਂ ਨੇ ਦੂਰ ਅੰਦੇਸ਼ੀ ਨਹੀਂ ਸੋਚੀ ਕਿ ਐਗਰੀਕਲਚਰ ਦੇ ਵਿੱਚ ਇਹਨੂੰ ਐਗਰੀਕਲਚਰ ਪ੍ਰੋਸੈਸਿੰਗ ਇੰਡਸਟਰੀ ਲਿਆਉਣੀ ਚਾਹੀਦੀ ਆ ਜਾਂ ਇਹਦੇ ਵਿੱਚ ਇਰੀਗੇਸ਼ਨ ਦੇ ਵਿੱਚ ਵੀ ਕੋਈ ਤਰੀਕੇ ਲੱਭਣੇ ਚਾਹੀਦੇ ਜੇ ਉਹ ਤਰੀਕਿਆਂ ਵਾਲਾ ਕੰਮ ਹੈ ਨਹੀਂ ਉਹ ਸਿੱਧਾ ਪੁਰਾਣਾ ਹੀ ਤਰੀਕਾ ਵੀ ਬਿਜਲੀ ਆ ਉਹ ਪੁਰਾਣੇ ਹੀ ਨਹੀਂ ਕੀ ਨਵੀਂ ਸੋਚਣੀ ਹੈ ਨਹੀਂ ਲੋਕ ਨਵੀਂ ਸੋਚ ਚਲੇਗਾ ਲੋਕ ਨਵੀਂ ਸੋਚ ਚਲ ਗਏ ਲੋਕਾਂ ਨੂੰ ਇਹ ਵੀ ਪਤਾ ਲੱਗ ਜਾਂਦਾ ਕਿ ਸਿਰਫ ਵੋਟਾਂ ਲੈਣ ਦਾ ਟਾਈਮ ਹੀ ਹੁੰਦਾ ਜਦੋਂ ਪੰਥ ਨੂੰ ਕੋਈ ਖਤਰਾ ਪੈਂਦਾ ਉਹ ਸਿਰਫ ਵੋਟਾਂ ਦੀ ਉਹ ਵੀ ਆ ਨਿਕਲ ਗਈ ਗੱਲਬਾਤ ਜਦੋਂ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਨੂੰ ਦਾ ਕਿ ਦੇ ਖਿਲਾਫ ਇਹਨਾਂ ਨੇ ਆ ਕੀਤਾ ਕਿ ਕੋ ਕੋਈ ਨਹੀਂ ਫਿਰ ਬੰਦੇ ਮਾਰ ਗਏ ਤੇ ਉਹ ਜਿਹੜਾ ਪੰਥਕ ਜਾਂਦਾ ਵੀ ਉਹ ਨਾ ਜਾਂਦਾ ਲੱਗਾ ਫਿਰ ਤੁਸੀਂ ਦੇਖ ਲਓ ਸਿੱਖ ਮੂਵਮੈਂਟ ਦੇ ਵਿੱਚ ਵੀ ਜੇ ਹੁਣ ਸੰਤ ਜਿਹੜਾ ਵਿਆਸਾ ਵਾਲੇ ਆ ਉਹ ਉਹਨਾਂ ਦੇ ਮਜੀਠੀ ਦੇ ਰਿਸ਼ਤੇਦਾਰ ਆ ਜੇ ਪਹਿਲਾਂ ਕੋਈ ਢਾਉਂਦਾ ਹਾਸ ਤਾਂ ਸਿੱਖਾਂ ਨੂੰ ਔਰ ਹੁਣ ਉੱਥੇ ਸੰਤ ਤੇ ਸੰਤ ਖੜਿਆ ਆ ਤੁਸੀਂ ਇਹ ਕਹੋ ਤੇ ਔਰ ਇਹ ਸਾਰੇ ਦੇ ਸਾਰੇ ਸਾਥ ਜਿਹੜੇ ਆ ਕੰਟਰੋਲ ਕਰਦਾ ਇਹਨਾਂ ਨੂੰ ਜਿਹੜਾ ਮਰਜ਼ੀ ਹੋਵੇ ਤੁਸੀਂ ਬਾਬੇ ਉਹਨਾਂ ਦੇ ਉਹਨਾਂ ਨੇ ਸੰਸਥਾ માં ਬਹੁਤ ਬਣਾਈ ਇੱਕ ਗੱਲ ਮਨ ਉਹਨਾਂ ਦੀ ਗੱਲ ਹਮ ਕਿ ਨਾਗਪੁਰ ਕੱਲੀ ਉਹ ਹੀ ਨਹੀਂ ਉਹ ਤਾਂ ਠੀਕ ਹੈ ਲੀਟ ਬੈਠਾ ਆ ਉਹ ਉਹਨਾਂ ਦੇ ਟ੍ਰੇਨਿੰਗ ਵੀ ਦਿੰਦੇ ਉਹਨਾਂ ਨੂੰ ਪਤਾ ਹੁੰਦਾ ਕਿਹੜੇ ਬੰਦੇ ਨੇ ਪ੍ਰਾਈਮ ਮਿਨਿਸਟਰ ਬਣਨਾ ਕਿੰਨੇ ਆ ਬਣਨਾ ਪਰ ਉਹਨਾਂ ਨੇ ਦੇਖੋ ਤੁਸੀਂ ਬਵੇਕਾਨੰਦ ਫਾਊਂਡੇਸ਼ਨ ਵਗੈਰਾ ਤੁਸੀਂ ਜਾ ਕੇ ਦੇਖੋ ਚੜਕਿਆਪੁਰੀ ਦੇ ਵਿੱਚ ਹਮ ਆਲਾ ਦਰਜ ਦੀ ਸੰਸਥਾ ਕਿੰਨੀ ਮਹਿੰਗੀ ਜਗ੍ਹਾ ਇੰਚਾਂ ਚ ਵੇਖਣਾ ਉੱਥੇ ਸਾਰੀਆਂ ਐਮਬੈਸੀਜ਼ ਆ ਉੱਥੇ ਨਹੀਂ ਜਦੋਂ ਉਹ ਸੈਮੀਨਾਰ ਕਰਦੇ ਸਾਰੇ ਐਮਬੈਸਡਰ ਆ ਕੇ ਬੱਠੇ ਹੁੰਦੇ ਉਹਨਾਂ ਦੇ ਜਾ ਕੇ ਦੇਖੋ ਕਿ ਤੇ ਸੈਮੀਨਾਰ ਲੋਕ ਯਸ ਦਾ ਸਟਾਈਲ ਹੈ ਨਾ ਕਿ ਇਹ ਫੰਕਸ਼ਨ ਕਰਦਾ ਔਰ ਉਹਨੂੰ ਕਦੇ ਨਹੀਂ ਉਹ ਜੋਣਗੇ ਆਪਣੇ ਨਾਲ ਅਕਲ ਨਾਲ ਗੱਲ ਕਰਨ ਦੀ ਜਿਹੜੀ ਹੁੰਦੀ ਮੈਨੂੰ ਯਾਦ ਹੈ 1978 ਦੇ ਕਾਰਟੂਨ ਵਾਇਆ ਸੀ ਕਿਸੇ ਨੇ ਉਹ ਨਾਰਾਇਣ ਹੁੰਦਾ ਸੀ ਉਹਨੇ ਪਹਾੜ ਨੂੰ ਰੱਸਾ ਪਾਇਆ ਤਾਂ ਕੱਲ ਹੀ ਲੀਡਰ ਖਿੱਚਣ ਲੱਗੇ ਰੇ ਅੱਛਾ ਉਹ ਕਹਿੰਦਾ ਇਹਨਾਂ ਨੇ ਅਕਲ ਅਸੀਂ ਆਹ ਕਰਦੇ ਆਂ ਇਹ ਸੰਘਰਸ਼ ਅਸੀਂ ਕੁਰਬਾਨੀਆਂ ਦੇ ਅਕਲ ਜਿਹੜੀ ਆ ਵੱਡੀ ਚੀਜ਼ ਆ ਅਕਲ ਦੇ ਨਾਲ ਕੋਈ ਵੀ ਕੰਮ ਕਰਨਾ ਅਕਲ ਨਾਲ ਤੁਸੀਂ ਦੇਖ ਲਓ ਐਗਰੀਕਲਚਰ ਜਿਹੜੇ ਮੁਲਕਾਂ ਨੇ ਇਜ਼ਰਾਈਲ ਤੇ ਜਾ ਕੇ ਦੇਖੋ ਹਾਂ ਡ੍ਰਿਪ ਸਿਸਟਮ ਬੀ ਆ ਬਾਂ ਹਾਂ ਬਿਲਕੁਲ ਹਾਂ ਉਹ ਪਾਣੀ ਉੱਥੇ ਲਾਉਂਦੇ ਆ ਜਿੱਥੇ ਕਦੇ ਕੋਈ ਸੋਚ ਨਹੀਂ ਸਕਦਾ ਪਾਣੀ ਪਹੁੰਚ ਜਾਵੇ ਬਿਲਕੁਲ ਤੇ ਨਾਂ ਧਰਤੀ ਦਾ ਪੰਜ ਆਬ ਪਾਣੀ ਪਾਣੀ ਦਾ ਕਰਕੇ ਪਿਆ ਹੋਵੇ ਔਰ ਉੱਥੇ ਸਾਇੰਸਦਾਨ ਉਹਨਾਂ ਨੂੰ ਬਾਹਰਲੇ ਦੱਸਦੇ ਆ ਨਾਟਾ ਵਾਲਿਆ ਪਾਣੀ ਮੁਕਣ ਲੱਗਾ ਹੈ ਤੇ ਉੱਥੇ ਜਿਹੜਾ ਬੰਦਾ ਆਪਣੇ ਆਪ ਨੂੰ ਪੰਜਾਬ ਦਾ ਲੀਡਰ ਕਹਿੰਦਾ ਔਰ ਪਰ ਉਹਦੀ ਇੱਕ ਗੱਲ ਮੈਨੂੰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਇੱਕ ਪ੍ਰੋਫੈਸਰ ਨੇ ਸਾਂਝੀ ਉਹਨਾਂ ਨੇ ਜਿਹੜੇ 15-20 ਮਿੰਟ ਦੀ ਸ਼ਾਰਟ ਡਾਕੂਮੈਂਟਰੀ ਦੇ ਪੀਏਯੂ ਦੇ ਵਿੱਚ ਤੇ ਉਹਨਾਂ ਨੇ ਪਹਿਲਾਂ ਹੀ ਪਾਣੀ ਦਾ ਕਿੰਨਾ ਗੰਭੀਰ ਸੰਕਟ ਹੈ ਉਹ ਕਹਿੰਦੇ ਜੀ ਇਹਨਾਂ ਨੇ ਕਾਫੀ ਦੇਰ ਦੀ ਗੱਲ ਹੈ ਉਹ ਕਹਿੰਦੇ ਇਹਨਾਂ ਨੇ 2 ਮਿੰਟ ਦੇਖੀ ਤਾਂ ਇਹਨਾਂ ਅਸੀ ਸਾਲਾਂ ਚ ਤਾਂ ਨਹੀਂ ਖਤਮ ਹੋਣ ਲੱਗਾ ਸਾਡੇ ਤਾਂ 2 ਹੀ ਸਾਲ ਰਹਿੰਦੇ ਆ ਚਲੋ ਉਸੀਂ ਦੇਖੀਏ ਉਸ ਮਾੜੀ ਲੀਡਰਸ਼ਿਪ ਦਿਖਾਉਣ ਦੀ ਗੱਲ ਹੈ ਲੀਡਰਸ਼ਿਪ ਦਾ ਇਹ ਕੰਮ ਕਰ ਲਿਆ ਕਿ ਉਹ ਫੈਮਲੀ ਚ ਸਾਰਾ ਕੁਝ ਕੰਟਰੋਲ ਕਰ ਲਿਆ ਲੋਹੇ ਨਾਲ ਨ ਵੀ ਲੱਗ ਗਿਆ ਜੀ ਮੇਰੇ ਅਰਗੇ ਨੇ ਜੀ ਨੇ ਟੈਂਪੂ ਪਾਉਣਾ ਨੂੰ ਦੇਖਣ ਲੱਗ ਗਿਆ ਸੁੱਖ ਬਿਲਾਸ ਇਹ ਬਿਲਾਸ ਲੋਕਾਂ ਨੂੰ ਐ ਹੋ ਗਿਆ ਵੀ ਸਾਨੂੰ ਲੁੱਟ ਲੈ ਮੈਨੂੰ ਪੁੱਤ ਜਿਹੜਾ ਪਿਓ ਦੀ ਇੱਜ਼ਤ ਕਰਦਾ ਮਾਣ ਬਣਾਉਂਦਾ ਮੈਨੂੰ ਇਹੋ ਲੱਗਦਾ ਸੁਖਵੀਰ ਦਾ ਰਾਈਜ਼ ਹੋਣ ਬਾਅਦ ਡਾਇਨੇਸਟੀ ਦਾ ਪਤਨ ਦਾ ਕਾਰਨ ਮੈਂ ਨਿੱਜੀ ਤੌਰ ਤੇ ਐਸੋ ਨੇ ਉਹ ਭਾਰਤ ਸਾਹਿਬ ਨੇ ਤਾਂ ਇਹੇ ਕੋਸ਼ਿਸ਼ ਕੀਤਾ ਨਾ ਜੇ ਉਹਨਾਂ ਨੇ ਉਦੋਂ ਤਾਂ ਸੁਖਵੀਰ ਵੱਡਾ ਨਹੀਂ ਸੀ ਜਦੋਂ ਇਹਨਾਂ ਨੇ ਆਰਬਿਟ ਦੀ ਜ਼ਮੀਨ ਤੋਂ ਪਾਣੀ ਵੇਚਣ ਲਈ ਉਦੋਂ ਤਾਂ ਸੁਖਵੀਰ ਫੈਸਲੇ ਨਹੀਂ ਸੀ ਕਰਦਾ ਸ਼ੁਰੂ ਤੋਂ ਲੈ ਕੇ ਆਹ ਕੰਮ ਕਰਦੇ ਰਹੇ ਸਰਕੂਲ ਜੀ ਕੰਸਟਰੀ ਸਭਾ ਦੇ ਵਿੱਚ ਦੇਵੀ ਲਾਲ ਨੇ ਬੋਲਿਆ ਕਿ ਮੇਰਾ ਯਾਰ ਬੈਠਾ ਪਰਲੇ ਬੰਨਾਏ ਉਹਨੇ ਕਹਿ ਦਿੱਤਾ ਹੁਣ ਲੋਕਾਂ ਨੂੰ ਪੈਸੇ ਅਸੀਂ ਦੇ ਦਿੰਦੇ ਤੇ ਜ਼ਮੀਨ ਐਕਵਾਇਰ ਹੋ ਰਹੀ ਆ ਬਰਨਾਲਾ ਤੁਰ ਗਿਆ ਐਸਵਾਈਐਲ ਨੇ ਇਹਨੇ ਪੂਰੀ ਕੀਤੀ ਬੰਦੇ ਤੁਰ ਜਾਂਦੇ ਆ ਚਲੋ ਇਧਰ ਨੂੰ ਹੁਣ ਛੱਡ ਦਈਏ ਫੇਰੇ ਕਹਿੰਦੇ ਨੇ ਵੀ ਇਧਰ ਨੂੰ ਹੋ ਜਾਂਦਾ ਅੱਛਾ ਕਾਂਗਰਸੀਆਂ ਦਾ ਉਹ ਮਸਖਰਾ ਹੁਣ ਜਿਹਨੂੰ ਪੱਪੂ ਕਹਿੰਦਾ ਈ ਉਹਦੇ ਮੂਰੇ ਦੇਖੋ ਹਰੇਕ ਹਰ ਇੱਕ ਬੰਦੇ ਦੇ ਡਰਾਮੇ ਦੀ ਕਿਸੇ ਨਾ ਕਿਸੇ ਦਿਨ ਅੰਤ ਹੁੰਦਾ ਆ ਮੈਨੂੰ ਲੱਗਦਾ ਹੁਣ ਇਹਦਾ ਅੰਤ ਜਿਹੜਾ ਉਹ ਦੇ ਤੌਰ ਤੇ ਮੈਂ ਉਹਨੂੰ ਸਮਝਦਾ ਜੰਗ ਵਗਦਾ ਇੰਟਰਟੇਨਰ ਆਪ ਤਾਂ ਨਹੀਂ ਲਿਆਂਦਾ ਹੋਵੇ ਨਾ ਇਹਦੀ ਵਾਈਫ ਨੇ ਤਾਂ ਨਾ ਹੀ ਇਹਨੇ ਕਦੇ ਕਹਿੰਦਾ ਪਰ ਹੁਣ ਮੈਨੂੰ ਲੱਗਦਾ ਕਿ ਉਹ ਜਦੋਂ ਕਹਿੰਦੇ ਹੁੰਦੇ ਕਿ ਨਹੀਂ ਜਿੱਦੜ ਦੀ ਮੌਤ ਆ ਜਿੰਨੇ ਖੁਦਾ ਦਾ ਬੈ ਤੇ ਖੁਦਾ ਦਾ ਬੈਰ ਆ ਗਿਆ ਇਹ ਕਈ ਇਦਾਂ ਦੇ ਮੁੰਦੇ ਜਾਣੇ ਪਰ ਵੱਧ ਕਿਸਮਤੀ ਇਹ ਆ ਵੀ ਇਦਾਂ ਦੀ ਕਈ ਦੂਜੀਆਂ ਪਾਰਟੀਆਂ ਜੀ ਵੀ ਜਿਹੜੇ ਸਕਸੈਸਫੁਲ ਹੋ ਜਾਣੇ ਹੂੰ ਹੂੰ ਇਹ ਇੱਕ ਦੀ ਨਹੀਂ ਹੁੰਦੀ ਬਿੱਟੀ ਨੂੰ ਟਿਕਟ ਦਿੱਤੀ ਹੈ ਮਤਲਬ ਕੋਘੀ ਨੂੰ ਟਿਕਟ ਦਿੱਤੀ ਹੈ ਟਿਕਟਾਂ ਵੇਚਣ ਆ ਆ ਇਹਨਾਂ ਨੇ ਕਦੋਂ ਕੋਈ ਅਨਾਲਿਸਿਸ ਦਿੱਤਾ ਪੰਜਾਬ ਦਾ ਕਿ ਪੰਜਾਬ ਦੇ ਵਿੱਚ ਆਹ ਪ੍ਰੋਬਲਮ ਹੈ ਤੇ ਇਹਦਾ ਸੋਲੂਸ਼ਨ ਹੈ ਇਹ ਸੋਚਦੇ ਆ ਲੀਡਰ ਜਿਹੜੇ ਆ ਕਿ ਇਹਨਾਂ ਨੂੰ ਅਸੀਂ ਕੰਟਰੋਲ ਕਿਦਾ ਕਰਨਾ ਜੇ ਸਮ ਅਪ ਕਰਨਾ ਹੋਵੇ ਆਪਣੇ ਤੌਰ ਤੇ ਲੋਕ ਭਾਵਕ ਨੇ ਇਥੋਂ ਜਾਂਦੇ ਆ 2-3 ਮਿੰਟ ਹੋ ਨੇ ਪੰਜਾਬ ਦੀ ਇਲੈਕਸ਼ਨ ਨੂੰ ਤੁਹਾਡੇ ਸ਼ਬਦਾਂ ਦੇ ਨਾਲ ਤੁਸੀਂ ਤੇ ਤੇ ਨਿਜ ਦੇ ਤੌਰ ਤੇ ਤੇ ਲੋਕਾਂ ਦੀ ਜਿਹਦਾ ਰੁਝਾਨ ਬਣ ਜਾਂਦਾ ਨਾ ਤੁਸੀਂ ਦੇਖਿਆ ਹੋਣਾ 1977 ਦੇ ਵਿੱਚ ਐਮਰਜੈਂਸੀ ਤੋਂ ਬਾਅਦ ਲੋਕਾਂ ਕਾਂਗਰਸ ਦੇ ਨਾਲ ਬਹੁਤ ਦਫਾ ਹੋਏ ਸੀ ਬਿਲਕੁਲ ਉਹਨਾਂ ਨੇ ਕਾਫੀ ਹੋ ਕੇ ਦੂਜਨੋਂ ਵੋਟ ਪਾਤੀ ਉਹਨਾਂ ਨੇ ਕੀ ਸੋਲੂਸ਼ਨ ਦਿੱਤਾ ਉਹ ਸਾਡੇ ਸਾਹਮਣੇ 1997 ਦੇ ਵਿੱਚ ਲੋਕਾਂ ਨੇ ਖਫਾ ਹੋ ਕੇ ਕਾਂਗਰਸ ਲਈ ਹੂੰ ਉਹਨਾਂ ਦੇ ਸਰ ਬਹੁਤ ਚਲੇ ਪਾਵਰ ਚ ਰਹੇ ਬਹੁਤ ਚਲੇ ਇਹਨਾਂ ਨੇ ਆ ਕੰਮ ਕੀਤਾ ਤਾਂ 2017 ਵਿੱਚ ਲੱਗਦਾ ਕਿ ਲੋਕੀ ਹੁਣ ਅ ਅਕਾਲੀ ਦਲ ਬੀਜਪੀ ਦੇ ਖਿਲਾਫ ਹੈ ਇਹਦਾ ਬਦਲ ਹੈਗਾ ਵੀ ਇਸ ਵੇਲੇ ਲੱਗਦਾ ਮੈਨੂੰ ਕਿ ਆਮ ਆਦਮੀ ਪਾਰਟੀ ਜਿਹੜੀ ਸਰਕਾਰ ਬਣਾਉਗੀ ਪਰ ਉਹਦੇ ਕੰਟਰੋਲ ਜਿਹੜਾ ਵੀ ਚੀਫ ਮਿਨਿਸਟਰ ਬਣਾਇਆ ਉਹਨਾਂ ਨੇ ਪੰਜਾਬ ਦੇ ਵਿੱਚੋਂ ਉਹ ਤੇ ਕੇਜਰੀ ਵਾਲੇ ਕਰੂਗਾ ਜੇ ਉਹ ਕੰਮ ਕਰਨਗੇ ਚੰਗੇ ਕਿ ਤਾਂ ਉਹਨਾਂ ਦਾ ਹੈਗਾ ਕਿ ਨੈਸ਼ਨਲ ਲੈਵਲ ਤੇ ਐਗਜ਼ਾਮਪਲ ਦੇਣ ਵਾਲੇ ਹੋ ਜਾਣਗੇ ਕਿ ਅਸੀਂ ਦੇਖੋ ਪੰਜਾਬ ਨੂੰ ਕੀ ਕਰ ਦੱਸ ਜਿਹੜਾ ਟਾਰਗੇਟ ਆ ਉਹਦਾ ਜਿਹੜਾ ਉਹਨਾਂ ਦਾ ਟਾਰਗੇਟ ਲੱਗਦਾ ਆ ਬਿਲਕੁਲ ਮੈਨੂੰ ਆਪਣੇ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਜਾਣੀ ਕੁਛ ਅਜਿਹਾ ਹੋ ਸਕਦਾ ਜਾਵੇ ਦੇਖੋ ਵੇਵ ਨੂੰ ਇੱਕ ਹੁੰਦੀ ਨਾ ਜਦੋਂ ਤੁਸੀਂ ਦੇਖਿਆ ਉਹਨਾਂ ਪੀਪੀਪੀ ਦੀ ਥੋੜੇ ਜਿਹਾ ਵੇਵ ਸੀਗੀ ਥੋੜਾ ਜਿਹਾ ਉਹ ਇਲੈਕਸ਼ਨ ਤੋਂ ਪਹਿਲਾਂ ਹੀ ਖਤਮ ਹੋ ਗਈ ਪਰ ਇਹ ਖੰਗਨਾ ਵੀ ਖਤਮ ਨਹੀਂ ਹੋਈ ਰਾਈਜ਼ ਹੋ ਰਹੀ ਇਹ ਇਹ ਜਿੱਦਾਂ ਜਿੱਦਾਂ ਹੁਣ ਖਾਸ ਕੇਜਰੀਵਾਲ ਪ੍ਰਚਾਰ ਜਿੱਥੇ ਕਰਨ ਜਾਂਦਾ ਉਥੇ ਤੁਸੀਂ ਨੰਬਰ ਦੇਖੋ ਲੋਕਾਂ ਦੇ ਔਰ ਉਹਨਾਂ ਦੇ ਕੈਂਡੀਡੇਟਸ ਦੇ ਨਾਲ ਨੰਬਰ ਦੇਖੋ ਬਹੁਤ ਵੱਡੇ ਹਾਲਾਂਕਿ ਇਹਨਾਂ ਨੂੰ ਜਿਹੜਾ ਮੇਨਸਟ੍ਰੀਮ ਮੀਡੀਆ ਉਹ ਕਵਰ ਨਹੀਂ ਕਰਦਾ ਸੋਸ਼ਲ ਮੀਡੀਆ ਕਰਦੇ ਆ ਨੇ ਤਾਂ ਜੇ ਹੁਣ ਤੁਸੀਂ ਐਨਡੀਟੀਪੀ ਨੂੰ ਜਿਹੜਾ ਕੱਲਾ ਵਾਚ ਕਰਦਾ ਹੋਵੇ ਜਾਂ ਟਾਈਮਜ਼ ਆਫ ਇੰਡੀਆ ਪੜਦਾ ਹੋਵੇ ਜਾਂ ਹਿੰਦੁਸਤਾਨ ਟਾਈਮਜ਼ ਪੜ੍ਹਦੇ ਹੋਣ ਜਾਂ ਜੀਤ ਖਵਾਰ ਉਹਨਾਂ ਨੂੰ ਪੰਜਾਬ ਦੇ ਰੋਜ਼ ਗੱਲਾਂ ਬਾਤਾਂ ਕਰਦੇ ਆ ਦੂਸਰੇ ਨਾਲ ਅਸੀਂ ਸੋਸ਼ਲ ਮੀਡੀਆ ਵਾਚ ਕਰਦੇ ਆ ਉਹਨਾਂ ਨੂੰ ਸਾਨੂੰ ਪਤਾ ਲੱਗਦਾ ਕਿ ਪੰਜਾਬ ਦੇ ਵਿੱਚ ਵੈਸੇ ਕੀ ਹੋ ਰਿਹਾ ਚਾਹੇ ਸ਼ਹਿਰਾਂ 'ਚ ਪਿੰਡਾਂ 'ਚ ਬਿਲਕੁਲ ਜੀ ਜਿਸ ਤਰ੍ਹਾਂ ਲੋਕ ਵੇਗ ਦੇ ਵਿੱਚ ਨੇ ਲੋਕਾਂ ਦਾ ਸ਼ਾਲਾ ਲੋਕਾ ਦੀ ਇਹ ਵੇਗ ਆ ਕਿਸੇ ਸਹੀ ਥਾਂ ਪਵੇ ਤੇ ਲੋਕਾਂ ਦੀਆਂ ਆਸਾਂ ਜਿਹੜੀਆਂ ਉਹ ਪੂਰੀਆਂ ਹੋਣ ਕਿਤੇ ਦਿਲ ਨਾ ਟੁੱਟ ਜਾਵੇ ਇਹ ਵੀ ਗੱਲ ਜ਼ਰੂਰੀ ਹੈ ਕਿਉਂਕਿ ਹਲੇ ਪਰਖਣਾ ਜੋ ਜਿਤਣਗੇ ਫਿਰ ਕੰਮ ਬਹੁਤ ਕਰਨ ਵਾਲੇ ਨੇ ਤੇ ਉਹਨਾਂ ਵਾਲੇ 10-12 ਦਿਨਾਂ ਦੇ ਵਿੱਚ ਹੋਰ ਪਤਾ ਲੱਗਣਾ ਨੇੜੇ ਜਾ ਕੇ ਜੀ ਇੱਕ ਦਾ ਹੋਰ ਕਰਾਂਗੇ ਸੈਗਮੈਂਟ ਜੇ ਤੁਸੀਂ ਉਰੇ ਹੋਏ ਜਿਹੜਾ ਇਥੇ ਜਾਣ ਦਾ ਵੀ ਅੱਛਾ ਚਲੋ ਫਿਰ ਉੱਥੇ ਗਏ ਉੱਥੇ ਅਠਾ ਲਾਂਗੇ ਕਿਸ ਦਿਨ ਦਾ ਠੀਕ ਹੈ ਸਰ ਥੈਂਕ ਯੂ ਸੋ ਬਾਏ ਵਾਧਾ ਸ਼ੁਕਰੀਆ ਡਾਕਟਰ ਸ਼ੰਦਰਪੁਰੇਵਾਰ 647294592 ਉਹਨਾਂ ਦਾ ਨੰਬਰ ਹੈ ਜਿੱਥੇ ਸਟਕਾਰ ਦੇ ਨਾਲ ਤੁਸੀਂ ਮੈਸੇਜ ਛੱਡ ਕੇ ਗੱਲਬਾਤ ਕਰ ਸਕਦੇ ਹੋ ਧਮਕੀਆਂ ਵਾਲੇ ਵੀ ਇਹੀ ਨੇ ਜੱਗੇ ਵੀ ਜਿਹੜੇ ਪਿਛਲੇ ਦਿਨੀ ਸਰੀਚ ਜੰਪੇ ਸੀ ਹੁਣ ਟਿਕੇ ਹੋਏ ਨੇ ਪਰ ਸੱਚ ਸੁਣਨਾ ਜਿਹੜਾ ਹੈ ਉਹ ਔਖਾ ਸੱਚ ਬੋਲਣਾ ਉਦੋਂ ਔਖਾ ਪਤਾ ਹੁੰਦਾ ਬੰਦੇ ਨੂੰ ਮੇਰਾ ਨਿੱਜੇ ਦੇ ਚ ਆ ਜਾਣਾ ਲੋਕਾਂ ਦੇ ਮਿਲ ਨਿੱਜੀ ਤੌਰ ਤੇ ਲੈਣਾ ਪਰ ਸੱਚ ਕਦੇ ਮਰਿਆ ਨਹੀਂ ਕੋਈ ਜਿੰਦਗੀ ਚ ਦੇਵੀ ਪਰਿਵਾਰ ਦੇ ਵਿੱਚੋਂ ਕੋਈ ਚੀਜ਼ਾਂ ਮਿਲ ਜੰਨੇ ਜਿਹਦੇ ਤੇ ਬੰਦੇ ਬੇਰੋਕ ਬੇ ਟੋਕ ਖੜਦੇ ਤੇ ਕੋਈ ਵੀ ਵਿਚਾਰ ਧਾਰਾ ਹੋਵੇ ਮਨੁੱਖਤਾ ਦੀ ਗੱਲ ਸਦਾ ਡਾਕਟਰ ਚੰਦਰਪੁਰੇਵਾਲ ਨੇ ਕੀਤੀ ਆ ਕਿ ਸਹੀ ਕੀ ਹੈ ਔਰ ਇਸ ਗੱਲ ਦਾ ਮਾਣ ਹੈ ਕਿ ਵਰਿਆਂ ਵਧੀ ਹੋ ਗਏ ਪਿਛਲੇ 6 ਸਾਲਾਂ ਤੋਂ ਅਸੀਂ ਸੈਗਮੈਂਟ ਕਰਦੇ ਆ ਰਹੇ ਹਾਂ ਦੱਸਦਾ ਧੰਨਵਾਦ ਹੈ ਤੇ ਸ਼ਾਲਾ ਇਹ ਤੰਦਰੁਸਤ ਰਹਿੰਦੇ ਚੜ੍ਹਦੀ ਕਲਾ ਹੁਣ ਵਪਾਰਕ ਸੰਦੇਸ਼ ਤੇ ਖਬਰਾਂ ਦਸਵ ਦੇ ਵਿਸ਼ਲੇਸ਼ਣ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਉਹਨਾਂ ਨੇ ਗੱਲ ਕੀਤੀ ਹੈ ਕੁਝ ਤਰਕ ਨੇ ਸੁਣਨ ਵਾਲਿਆਂ ਦੇ ਉਹ ਕਹਿੰਦੇ ਵੀ ਬਾਦਲ ਪਰਿਵਾਰ ਨੇ ਬਾਦਲ ਸਰਕਾਰ ਨੇ ਵੀ ਕੰਮ ਜਿਹੜੇ ਚੰਗੇ ਕੀਤੇ ਆ ਚੰਗੇ ਕੀਤੇ ਆ ਸੰਤਾਂ ਦੀ ਯਾਦਗਾਰ ਸ਼ਹੀਦਾਂ ਦੀ ਵਿਰਾਸਤ ਤੇ ਖਾਲਸਾ ਤੇ ਉਸ ਤੋਂ ਬਾਅਦ ਹੋਰ ਸੁੰਦਰੀਕਰਨ ਕੀਤਾ ਹੈ ਤੇ ਸਾਰਾ ਕੁਝ ਮਾਰਾ ਨਹੀਂ ਕੀਤਾ ਦੇਖੋ ਪਾਰਟੀ ਪਲੈਟਫਾਰਮ ਤੇ ਜਦ ਕਿਸੇ ਨੂੰ ਸੰਧ ਕਰਦੇ ਹੋ ਤਾਂ ਉਹਦੀਆਂ ਚੰਗੀਆਂ ਚੀਜ਼ਾਂ ਹੁਣ ਅਕਾਲੀ ਦਲ ਨੂੰ ਜਿਹੜਾ ਸਪੋਰਟ ਕਰਦੇ ਆ ਉਹਨਾਂ ਨੂੰ ਬਾਦਲ ਪਰਵਾਰ ਦਾ ਜਾਂ ਸਰਕਾਰ ਦਾ ਕੁਝ 네ਗੇਟਿਵ ਨਹੀਂ ਦਿਖਦਾ ਉਹਨਾਂ ਨੂੰ ਚੰਗਾ ਇਸ ਤਰ੍ਹਾਂ ਕਾਂਗਰਸ ਦਾ ਨੇ ਜਿਹੜਾ ਪਿਆਰ ਕਰਦੇ ਕਾਂਗਰਸ ਨੂੰ ਪਰ ਜੇ 10 ਸਾਲ ਦਾ ਸਮਾਂ ਕਿਸੇ ਸਰਕਾਰ ਨੂੰ ਮਿਲਿਆ ਹੋਵੇ ਫਿਰ ਕਾਰਨ ਕੀ ਆ ਸਾਰਾ ਪੰਜਾਬ ਇੱਕ ਪਾਸੇ ਕਿੱਧਰ ਨੂੰ ਘੁਰਿਆ ਜਾਵੇ ਹਾਲੇ ਫਿਰ ਵੀ ਬਹੁਤ ਬਹੁਤ ਸਮਾਂ ਭਾਰਤ ਚੌਧਰ ਬਿਨਾਂ ਦੇ ਵਿੱਚ ਪੰਜਾਬ 'ਚ ਕੁਝ ਵੀ ਹੋ ਸਕਦਾ ਹਲੇ ਗੱਲ ਕਰੀ ਜਿਹੜੇ ਅੱਜ ਦੇ ਵਿਸ਼ਲੇਸ਼ਣ ਅੱਜ ਵੀ ਡਾਕਟਰ ਗੱਲ ਕਰਦੇ ਆ ਪਰ ਇੱਕ ਗੱਲ ਸਾਰਿਆਂ ਦੇ ਵਿੱਚੋਂ ਇੱਕ ਚੀਜ਼ ਜਿਹੜੀ ਰੁਲੀ ਲੱਗਦੀ ਹੈ ਉਹ ਲੈ ਕੇ ਸਿੱਖ ਮੰਗਾਂ ਦਾ ਸਾਡੀਆਂ ਹੱਕਾਂ ਦਾ ਸਾਡੇ ਵੱਧ ਅਧਿਕਾਰ ਦਾ ਉਹਦੀ ਕਿਤੇ ਵੀ ਗੱਲ ਨਹੀਂ ਹੋ ਦਾ ਇਹ ਸੰਨ ਦੇ ਨਾਲ ਦੀ ਸੋਚ ਦਾ ਸਿੱਖ ਦੇ ਤੌਰ ਤੇ ਸਾਡੇ ਨਾਲ ਹੋਏ ਧੱਕੇ ਦੀ ਗੱਲ ਕਿਤੇ ਨਹੀਂ ਹੋ ਸਕੀ ਆਮ ਆਦਮੀ ਆਪਣਾ ਇੱਕ ਅਜੰਡਾ ਵੱਡਾ ਗਲਬਾ ਹੈ ਜਿਵੇਂ ਤੇ ਮਹਾਤਮਾ ਗਾਂਧੀ ਨੂੰ ਹੋ ਰੱਬ ਮੰਦ ਪਰ ਫਿਰ ਉਹ ਜਦ ਇੱਕ ਬੰਦੇ ਅਸੀਂ ਉਸ ਦੀ ਗੱਲ ਕਰਦੇ ਆਂ ਮੈਂ ਹਾਂ ਵੀ ਉਸ ਗੱਲ ਦਾ ਵੀ ਸਾਨੂੰ ਕੀਤੇ ਵਾਦੇ ਸਾਡੇ ਪੂਰੇ ਹੁਣ ਆ ਫਿਰ ਉਸ ਗੱਲ ਕੌਣ ਕਰਦਾ ਸਿੰਘ ਬਦਲ ਕੀ ਹੈ ਸਮਝ ਨਹੀਂ ਆਉਂਦਾ ਈਵਨ ਸਮਥਿੰਗ ਬੈਟਰ ਦੈਨ ਆ ਕੀ ਕਰ ਰਾਸ ਖਾਲਸਾ ਤੇ ਸਾਹਿਬ ਤੇ ਬਣਾ ਪਿਆ ਫਿਰ ਉੱਥੇ ਪੰਜਾਬ ਦੇ ਵਿੱਚ ਕਉ ਗੁਰੂ ਦੇ ਪੱਤਰੇ ਨੇ ਜਿਹੜੇ ਗਲੀਆਂ ਦੇ ਵਿੱਚ 파ੜ 파ੜ ਕੇ ਸੁਟੇ ਸੀ ਪੇ ਉਹ ਵੀ ਨਹੀਂ ਫੜੇ ਸੇਮ ਟੋਕਨ ਵੀ ਬਣਾਈ ਕੋਠੀ ਨੂੰ ਮੈਂ ਕੀ ਕਰੂੰ ਫਿਰਦਾ ਮੈਨੂੰ ਕੋਠੀ ਕੀ ਕਰੂ ਉਹ ਮੈਂ ਉਹ ਸੁੰਦਰੀ ਕਰਨ ਤੋਂ ਮੈਂ ਉਸ ਵਿਰਾਸਤੇ ਖਾਲਸਾ ਤੋਂ ਮੈਂ ਉਹ ਸ਼ਹੀਦ ਦੀ ਜਗਾ ਤੋਂ ਜਿਹੜਾ ਮੇਰਾ ਅੰਦਰ ਬੱਥਿਆ ਉਹ ਜਗਾ ਮੈਂ ਕੀ ਕਰੂੰ ਜੇ ਮੇਰੇ ਬਾਪ ਦੀ ਸਾਖ ਪਰਿਆਂ ਚ ਨੋ ਰਹੀ ਸਕੀ। ਉਹ ਗੱਲ ਇਹ ਸੇਮ ਟੋਕ ਨਾ ਸਾਹੀ ਲੋਕ ਦੁਖੀ ਨੇ। ਆਪਾਂ ਇੱਥੇ ਬੈਠੇ ਵਿਸ਼ਲੇਸ਼ਨ ਕਰਦੇ ਆਪਾਂ ਵੋਟ ਨਹੀਂ ਪਾਉਣੀ ਪਰ ਜਿਹੜੀ ਅੱਜ ਗੱਲ ਆ ਉਹ ਗੱਲ ਸੱਚ ਹੈ। ਜਦ ਆਪਾਂ ਆਪਣੀ ਧਿਰ ਅੱਗੇ ਨਹੀਂ ਆ ਰਹੀ ਸਾਡੇ ਮਨ ਚ ਆ ਜਾਣਾ। ਉਹਨਾਂ ਦਾ ਰਾਜ ਸ਼ੁਰੂ ਕਰਨਾ ਆਉਣਗੇ ਜੇ ਆਮ ਆਦਮੀ ਪਾਰਟੀ ਫਿਰ ਉਹ ਕੀ ਕਰਨਗੇ? ਉਹਨਾਂ ਦਾ ਕੰਮ 5 ਸਾਲਾਂ ਬਾਅਦ ਉਹ 2022 ਦੇ ਵਿੱਚ ਵਿਸ਼ਲੇਸ਼ਨ ਹੋ ਸਕਦਾ ਹੌਨ ਬਿਸ਼ਲੇਸ਼ਣ ਦਸਾਂ ਸਾਲਾਂ ਦਾ ਹੋ ਰਿਹਾ ਤਾਂ ਲੋਕ ਤੁਰੇ ਹੋਏ ਨੇ ਗੱਲ ਇਹ ਇਹ ਹੋਈ ਹੋਈ ਐ ਜੇ ਕੰਮ ਚੰਗੇ ਹੈ ਜੇ ਹੁਣ ਇੱਥੇ ਐਮਪੀ ਐਮਐਲਏ ਕੰਮ ਇਹਨੇ ਚੰਗੇ ਕਰਦੇ ਦੁਨੀਆ ਅੱਗ ਵਾਲੇ ਹੋ ਜਵੇ ਨਹੀਂ ਹਿੱਲ ਸਕਦੇ ਕੋਈ ਨਾ ਕੋਈ ਘਾਟਾਂ ਰਹੀਆਂ ਨੇ ਜਿਹਦੇ ਕਰਕੇ ਲੋਕ ਬਾਗੀ ਹੋਏ ਇਸਲੀ ਪਾਰਟੀ ਦਾ ਸੰਕਲਪ ਬਿਲਕੁਲ ਪੰਜਾਬ 'ਚ ਹੈ ਨਹੀਂ ਪਹੋਣੋ ਗੱਲ ਜਿਹੜੀ ਚੱਲ ਰਹੀ ਹੈ ਆਕੀ ਹੋਏ ਫਿਰਦਣੇ ਉੱਥੇ ਗਲੀਆਂ ਬਜ਼ਾਰਾਂ ਭਰੀਆਂ ਪਈਆਂ ਨੇ ਕਿਸੇ ਪੇਪਰ 'ਚ ਨਹੀਂ ਕੋਈ ਟੀਵੀ ਨਹੀਂ ਉਹਨਾਂ ਨੂੰ ਕਵਰ ਕਰ ਰਿਆ ਭਗਵੰਤ ਮਾਨ ਖੜਾ ਸਾਰਾ ਸਹਿਰ ਜਿਹੜਾ ਸ਼ਹਿਰ ਆ ਹੋਇਆ ਪਿਆ ਐਨੇ ਲੋਕ ਕੋਠਿਆਂ ਚਵਾਰਿਆਂ ਤੇ ਖੜੇ ਨੇ ਫਿਰ ਉਹ ਏਜਰੀਬਾਲ ਦੇ ਇਕੱਠ ਹੈ ਤੇ ਸੇਮ ਟੋਕਨ ਤੇ ਅਕਾਲੀ ਤੇ ਕਾਂਗਰਸ ਉਹ ਵੀ ਆਪਣੇ ਕਾਗਜ਼ ਦਿਖਾ ਦੇਣ ਫਿਰ ਚਲੋ ਪੇਪਰ ਵੀ ਕਵਰ ਕਰ ਦਿੰਦੇ ਮੀਡੀਆ ਵੀ ਕਵਰ ਕਰਦਾ ਉਹ ਵੀ ਦਿਖਾਉਣ ਸੋਸ਼ਲ ਮੀਡੀਆ ਤੇ ਕਿੱਥੇ ਕੋਈ ਨਾ ਕੋਈ ਜਿਹੜੀ ਕਮੀ ਰਹੀ ਹੈ ਕਿਉਂ ਲੋਕ ਬਾਗੀ ਨਹੀਂ ਹੋਏ ਕਿ ਦੋਨੇ ਪਾਰਟੀਆਂ ਦੇ ਚੱਕਰ ਚੁੱਪ ਰਹਿੰਦੇ ਜਿਸ ਤਰ੍ਹਾਂ ਹੁਣ ਲੋਕਾਂ ਦਾ ਹਲਾਰਾ ਹਾਂ ਕੱਲ ਨੂੰ ਦਸਾਂ ਦਿਨਾਂ ਚ ਕੀ ਹੋਵੇ ਜਦ ਕੋਈ ਹੋਰ ਹੋ ਜਾ ਵੋਟਾਂ ਵੰਡ ਕੇ ਕੀ ਪਤਾ ਪਾਉਣ ਜਿੱਤ ਪਰ ਵਿਸ਼ਲੇਸ਼ਣਾ ਜਿਹੜਾ ਨੇ ਜੇ ਤੁਸੀਂ ਕਹੋਗੇ ਆ ਆਦਮੀ ਪਾਰਟੀ ਦੇ ਨਾਲ ਉਹਨਾਂ ਦੇ ਕੋਈ ਸਾਂਝਾ ਇਹ ਜੀ ਕੋਈ ਕਹਾਣੀ ਨਹੀਂ ਪਰ ਜੇ ਇਸ ਵਿਸ਼ੇ ਤੇ ਆਪਾਂ ਗੱਲ ਨਹੀਂ ਕੋਈ ਕਰਨੀ ਕਾਲਾ ਨਹੀਂ ਲੈਣੀ ਗੀਤ ਪਰ ਸਰਮੁਖ ਸਿੰਦੂ ਸਰਤਾਜ ਦਾ ਕਰਦਾ ਹੈ ਵਪਾਰ ਖਲੇਸ਼ ਤੋਂ ਬਾਅਦ ਆ ਕੇ ਪ੍ਰਜੈਤ ਸਿੰਘ ਗੋੜਾ ਨਾਲ ਗੱਲਬਾਤ ਜੀਵਨ ਚਰਚਾ ਦੀ ਸੈਗਮੈਂਟ ਹੈ ਜਿਹੜੀ ਉਸ ਨੂੰ ਅੱਗੇ ਤੋਰਾਂਗੇ ਇੱਕ ਵੀਡੀਓ ਹੁਣੇ ਜਨਤਕ ਹੋਈ ਹੈ ਮੇਰੀ ਮੈਂ ਫੇਸਬੁੱਕ ਕੀ ਹੈ ਹਰੀ ਦੇ ਮੁੰਡੇ ਨੂੰ ਇੱਕ ਬਜ਼ੁਰਗ ਸਿਰ ਤੇ ਖੱਟਾ ਪਟਕਾ ਬਨ ਕੇ ਸਵਾਲ ਕਰਦਾ ਤੇ ਤਰਕ ਦੇ ਸਵਾਲ ਦੇ ਵਿੱਚੋਂ ਮੂਹਰੇ ਬੰਦਾ ਕਹਿੰਦਾ ਤੇਰੀ ਪਾਰਟੀ ਕਿਹੜੀ ਹੈ ਬਜ਼ੁਰਗ ਭਵਕੇ ਪਿਆ ਕਹਿੰਦਾ 60 ਸਾਲ ਹੋ ਗਏ ਤੁਹਾਨੂੰ ਵੋਟਾਂ ਪਾਉਂਦੇ ਨੂੰ ਮੈਨੂੰ ਚਲੋ 60 ਬਾਕੀ ਉਹ ਜਾਂ ਮਤਲਬ ਅਕਾਲ ਸਿੱਖ ਨੂੰ ਅਕਾਲੀਆਂ ਨੂ ਉਹਨੂੰ ਧੱਕੇ ਮਾਰ ਕੇ ਉੱਥੋਂ ਕੱਢਿਆ ਜਾਂਦਾ ਹਾਲਾਤ ਸਵਾਲ ਪੁੱਛਣ ਦੇ ਨਾਲ ਜੋੜ ਰਹੇ ਦੁਖੀ ਹੋਇਆ ਬੰਦਾ ਆਪਣੇ ਲੀਡਰ ਨੂੰ ਪੁੱਛ ਰਿਹਾ ਏਰੀਏ ਦੇ ਲੀਡਰ ਦੇ ਮੁੰਡੇ ਨੂੰ ਸਾਡੇ ਕੰਮ ਨਹੀਂ ਹੋਏ ਉਹ ਦੀ ਗੱਲ ਹੈ ਵੀ ਆਹ ਲੈਵਲ ਹੈ ਹੈ ਇਹਦੇ ਵਿੱਚੋਂ ਵੀਰਵਾਰ ਨੂੰ ਮੈਂ ਗੱਲ ਕਰਨੀ ਹੈ ਕਿ ਫਿਰ ਉਹ ਸੋਚ ਕਿੱਥੇ ਗਈ ਜਿਹੜੀ ਪੰਜਾਬ ਦੇ ਅੜੜੜੇ ਘੁੰਮਦੀ ਆ ਪੰਜਾਬ ਦੇ ਵੱਧ ਦੀ ਗੱਲ ਕਰਦੀ ਆ ਉਸ ਦਾ ਕਿਸੇ ਪਾਸੇ ਕਹਾਣੀ ਨਹੀਂ ਪਤਾ ਲੱਗ ਰਹੀ ਵੀਰਵਾਰ ਨੂੰ ਤਰਕ ਇਸ ਗੱਲ ਦਾ ਰੱਖਦੇ ਨੇ ਕਿ ਉੱਥੇ ਕਿਸੇ ਨੇ ਵੀ ਕੁਝ ਨਹੀਂ ਕਰਨਾ ਜਦ ਤੱਕ ਸਿੱਖ ਰਾਜ ਨਹੀਂ ਹੁੰਦਾ ਉੱਥੇ ਚੀਜ਼ਾਂ ਹੋਣੀਆਂ ਉਸ ਦਿਨ ਆਪਾਂ ਗੱਲ ਕਰਾਂਗੇ ਹੁਣ ਗੁਰਜਤ ਸਿੰਘ ਹੋਣੀ ਮੇਰੇ ਨਾਲ ਜੀਵਨ ਚਰਚਾ ਦੀ ਗੱਲਬਾਤ ਹੋਣੀ ਹੈ ਜ਼ਿੰਦਗੀ ਬੋਤ ਸادਗੀ ਨਾਲ ਖੁਸ਼ੀ ਦੇ ਨਾਲ ਨਵਾਈ ਜਾ ਸਕਦੀ ਹੈ ਕੱਢੀ ਜਾ ਸਕਦੀ ਹੈ ਪਰ ਅਸੀਂ ਵਲਫੇਅਰ ਇੰਨੇ ਪਾ ਲਏ ਕਿ ਸਾਡੇ ਤੇ ਵਜ਼ਨ ਰੂਹ ਤੇ ਆ ਜਾਂਦਾ ਫਿਰ ਦੱਬੀ ਜਾਂਦੀ ਹੈ ਤੇ ਉੱਥੋਂ ਅੱਗੇ ਗੱਲ ਚੱਲਦੀ ਖੁਸ਼ੀ ਦੇ ਜਾਂ ਦੋ ਕੜੀਆਂ ਆਪਾਂ ਕਰ ਦਿੱਤੀਆਂ ਸੀ ਕਿ ਸਿਹਤ ਤੁਹਾਡੀ ਤੇ ਦਿਮਾਗ ਉਸ ਤੋਂ ਬਾਅਦ ਰੂਹ ਦੀ ਗੱਲ ਹੈ ਥੋੜੀ ਜੀ ਗੱਲਬਾਤ ਕਰਾਂਗੇ ਰੂਹ ਖੁਸ਼ ਹੋਣ ਨਾਲ ਕਿੰਨੀ ਖੁਸ਼ੀ ਮਿਲਦੀ ਹੈ ਜੀ ਤੁਹਾਡਾ ਸਵਾਗਤ ਸਤਿ ਸ੍ਰੀ ਅਕਾਲ ਅਜੀ ਤੁਹਾਨੂੰ ਤੇ ਸਭ ਸੁਣਨ ਵਾਲਿਆਂ ਨੂੰ ਪਿਆਰ ਭਰੀ ਖੁਸ਼ੀ ਦੇ ਅਚੀਵ ਕਰ ਸਾਡੇ ਕੰਮਕਾਰ ਸਾਡਾ ਮੀਆਂ ਬੀਬੀ ਦਾ ਕਲੇਸ਼ ਇੱਕ ਦੂਜੇ ਨੂੰ ਸਪਰੈਸ ਕਰਨਾ ਉਹ ਨੇ ਸਾਰੀਆਂ ਚੀਜ਼ਾਂ ਜਿਹੜੀਆਂ ਕੁਦਰਤ ਦੇ ਨਿਜ਼ਮ ਤੋਂ ਬਾਹਰ ਹੁੰਦੀਆਂ ਉਸ ਨੇ ਕੁਦਰਤ ਦੀ ਅੰਸ਼ ਕੁਦਰਤ ਦੀ ਰੂਹ ਆ ਜਿਹੜੀ ਬੰਦੇ ਦੇ ਸੋਲ ਸੋਲ ਬਿਲੋਂਗਸ ਟੂ ਨੇਚਰ ਉਹਦੇ ਤੇ ਜ਼ੋਰ ਕਰਨਾ ਇਹ ਚੀਜ਼ਾਂ ਜ਼ੋਰ ਕਰਦੀਆਂ ਨੇ ਫਿਰ ਜੇ ਜ਼ੋਰ ਕਰਦੀਆਂ ਨੇ ਫਿਰ ਖੁਸ਼ ਕਿਵੇਂ ਹੋ ਜਾਓਗੇ ਤੁਸੀਂ ਦੇਖੋ ਭਾਜੀ ਆ ਆਪਾਂ ਪਿਛਲੇ ਦਿਨ ਗੱਲ ਕੀਤੀ ਸੀ ਸ਼ਰੀਰ ਦੀ ਵੀ ਗੱਲ ਕੀਤੀ ਮਾਈਂਡ ਦੀ ਵੀ ਗੱਲ ਕੀਤੀ ਹੈ ਦਿਮਾਗ ਦੇ ਲੈਵਲ ਤੇ ਰੂਹ ਜੇ ਗੱਲ ਜੇ ਆਪਾਂ ਕਰਨੀ ਹੈ ਜਦੋਂ ਆਪਾਂ ਲੈਵਲ ਤੇ ਜਾ ਕੇ ਗੱਲ ਕਰਨੀ ਹੈ ਵੀ ਖੁਸ਼ੀ ਕੀ ਹੈ ਐਕਚੁਅਲੀ ਸੱਚ ਲੈਵਲ ਤੇ ਜਿਹੜੀ ਖੁਸ਼ੀ ਹੈ ਉਸ ਤੋਂ ਉੱਪਰ ਦਾ ਸ਼ਬਦ ਯੂਜ਼ ਕੀਤਾ ਜਾਏਗਾ ਆਨੰਦ ਹੈਨਾ ਉਦੇ ਬਸੋ ਸੋਲ ਬਲੈਸ ਸਾਨੂੰ ਸਮਝਣਾ ਪਊਗਾ ਵੀ ਅਜਾ ਆਤਮਿਕ ਲੈਵਲ ਤੇ ਐਕਲੀ ਰੂਹ ਤੋਂ ਸਾਡਾ ਮਤਲਬ ਕੀ ਹੈ ਸਭ ਤੋਂ ਪਹਿਲੇ ਵਰਡ ਨਹੀਂ ਹੋਣਾ ਚਾਹੀਦਾ ਉਸ ਪਰ ਮੈਂ ਤੁਹਾਨੂੰ ਪਿੱਛੇ ਘਟਨਾ ਘਟੀ ਨੇ ਮੈਨੂੰ ਕਿਹਾ ਕਿ ਬਈ ਲੈਵਲ ਤੋਂ ਮੈਂ ਦੱਸਣ ਲੱਗਾ ਗੱਲ ਰੂਹ ਤਾਂ ਵੀ ਅਸਰ ਹੋਏਗਾ ਸਭ ਕੁਝ ਜੁੜਿਆ ਹੋਇਆ ਅਲੱਗ ਤੁਸੀਂ ਕਿਤੇ ਨਹੀਂ ਹੈਗੇ ਜੇ ਤੁਸੀਂ ਪੂਰੀ ਤਰ੍ਹਾਂ ਸਰੀਰ ਨੂੰ ਅਲੱਗ ਕਰ ਦੋ ਮਾਈਂਡ ਤੋਂ ਮਾਈਂਡ ਨੂੰ ਅਲੱਗ ਕਰ ਦੋ ਇਸ ਤਰ੍ਹਾਂ ਨਹੀਂ ਸਾਰਾ ਕੁਝ ਇੱਕ ਆਰਗੈਨਿਕ ਯੂਨਿਟੀ ਹੈ ਨਾ ਮੇਰੇ ਪ੍ਰੋਗਰਾਮ ਦੇ ਕਰਨਾ ਸੇ ਸਾਰਾ ਆਰਗੈਨਿਕ ਯੂਨਿਟੀ ਹੈ ਯਸ ਹੌਲੀ ਹੌਲੀ ਹਰ ਚੀਜ਼ ਸਮਝ ਕੇ ਆਪਾਂ ਨੂੰ ਤੇ ਬਾਤ ਜਾਣ ਦੀ ਗੱਲ ਹੈ ਹੂੰ ਮੈਨੂੰ ਕਹਿਣ ਲੱਗੇ ਤੁਸੀਂ ਕਹਿੰਦੇ ਹੋ ਪ੍ਰੇਮ ਦੀ ਗੱਲ ਕਰਦੇ ਹੋ ਸਾਡੀ ਆ ਗੱਲ ਨਹੀਂ ਮੰਨੀ ਆ ਨਹੀਂ ਕੀਤਾ ਉਹ ਨਹੀਂ ਕੀਤਾ ਪਰਸਨਲੀ ਹਰਟ ਕੀ ਪਰਸਨਲੀ ਹਰਟ ਕੀਤਾ ਸਾਨੂੰ ਸਾਡੀਆਂ ਗੱਲਾਂ ਨਹੀਂ ਮੰਨਦਾ ਸਾਡੇ ਨਾਲ ਇਹ ਮਾ ਪਰੀਮ ਸੀਗਾ ਅਸੀਂ ਕਿਹਾ ਅਚਾਨਕ ਤਾਂ ਨਹੀਂ ਹੋਣਾ ਤਾਂ ਕਹਿੰਦੇ ਹਾਂ ਬਸ ਕੁਝ ਉਹਨਾਂ ਦਾ ਰੀਜ਼ਨ ਦੱਸਿਆ ਆ ਰੀਜ਼ਨ ਸੀ ਮੈਂ ਕਿਹਾ ਆਪਾਂ ਆਇਆ ਕਰੀਏ ਪਹਿਲੇ ਦਿਨ ਤੋਂ ਵਾਪਸ ਚੱਲਦੇ ਰੀਲਿਵ ਕਰਦੇ ਹਾਂ ਜੋ ਕੁਝ ਤੁਹਾਡਾ ਤੁਹਾਡੇ ਨਾਲ ਘਟਨਾ ਘਟੀ ਤੁਸੀਂ ਅੱਥੇ ਕੈਨੇਡਾ 'ਚ ਰਹਿੰਦੇ ਹੋ ਤੇ ਤੁਸੀਂ ਮੈਨੂੰ ਦੱਸੋਗੇ ਤੁਸੀਂ ਕੈਨੇਡਾ 'ਚ ਕਿੱਦਾਂ ਆਏ ਕਦੋਂ ਆਏ ਅਗਸਟ 'ਚ ਕਿਉਂਕਿ ਮੈਨੂੰ ਦਿਲ ਸਾਡੇ ਮੈਂ ਪਰਸਨਲੀ ਕਿਸੇ ਨੂੰ ਮਿਲਦਾ ਮੈਨੂੰ ਕਿਰਪਾ ਨਾਲ ਆਇਆ ਇਹਨਾਂ ਨੇ ਸਾਡੀ ਬੜੀ ਮਦਦ ਕੀਤੀ ਮੈਂ ਕਿਹਾ ਚਲੋ ਅੱਥੇ ਆ ਕੇ ਤੈਨੂੰ ਰੱਖਿਆ ਕਹਿੰਦੇ ਹਾਂ ਰੱਖਿਆ ਵੀ ਸਾਨੂੰ ਐਨਾ ਹੀ ਨਹੀਂ ਉਹ ਕਹਿੰਦੇ ਜਿਵੇਂ ਮੇਰੇ ਇਨਕਸਾਲ ਤੇ ਕੋਈ ਖਰਚਾ ਪਾਣੀ ਇਹਦੇ ਕੋਲ ਮੰਗਿਆ ਕੋਈ ਕੁਛ ਨਹੀਂ ਕੀਤਾ ਉਹਨੂੰ ਸਭ ਕੀਤਾ ਮੈਂ ਕਿਹਾ ਹੋਰ ਇਹ ਕੰਮ ਕੁਮ ਕੁਛ ਵੀ ਸਾਨੂੰ ਤਾਂ ਕਹਿੰਦਾ ਅਸੀਂ ਤਾਂ ਇਹ ਕਰਦਾ ਤੁਹਾਡੇ ਕੋਲ ਕੋਈ ਝੂਠ ਨਹੀਂ ਬੋਲਾਂਗੇ ਤੁਹਾਡਾ ਸਾਡੀ ਬੜੀ ਮਦਦ ਕੀਤੀ ਚਲੋ ਮੈਂ ਕਹਿੰਦਾ ਕਿ ਠੀਕ ਹੈ ਕੰਮਕਾਰੇ ਮਿਲਵਾਏ ਤੁਹਾਨੂੰ ਨੂੰ ਵੀ ਆਪਣੇ ਨਾਲ ਉਹ ਸਾੰਮੀ ਨੰਬਰ ਦੀ ਹੱਲਪ ਕੀਤੀ ਮੈਂ ਤਾਂ ਹੁਣ ਇੱਕ ਗੱਲ ਕਰਨਾ ਭਾਈ ਲਿਖ ਲੈਣਾ ਕਾਪੀ ਪੈਨ ਲੈ ਲਓ ਗੱਲਾਂ ਨਹੀਂ ਕਰਨੀਆਂ ਦੋ ਦਿਨ ਬਾਅਦ ਮੈਨੂੰ ਕਾਲ ਕਰ ਲਿਓ ਲਿਖ ਲਿਓ ਚੰਗਾ ਕੀ ਕੀਤਾ ਤੇ ਮਾਰਾ ਕੀ ਆ ਉਹ ਵੀ ਦੇਖੋ ਚੰਗਾ ਕੀ ਕੀਤਾ ਅੱਜ ਮਿਸ ਅੰਡਰਸਟੈਂਡਿੰਗ ਆ ਆਪਾਂ ਲਿਸਟ ਬਣਾ ਲਈ ਇਸ ਬੰਦੇ ਦੀ ਉਹਨੇ ਸਾਨੂੰ ਪਤਾ ਹੀ ਹੈ ਤੁਸੀਂ ਕਾਪੀ ਪੈਨ ਲੈਣਾ ਔਰ ਦੇਣਾ ਕਿਉਂਕਿ ਅਸੀਂ ਦੇਖੋ ਜੀ ਉਹ ਟਾਈਮ ਤੇ ਡੰਗ ਗਿਆ ਬਜਾ ਮੰਗਿਆਸਾ ਡੰਗਿਆ ਉਹਦੀ ਕਾਹਦੀ ਗੱਲ ਕਰਨੀ ਮਤਲਬ ਨਹੀਂ ਗੱਲ ਕੱਲ੍ਹ ਦਿਨ ਤੋਂ ਕਰਨੀ ਹੂੰ ਲਿਖੋ ਚਲੋ ਜੀ ਕੱਲ੍ਹ ਤਾਂ ਰਿਲੈਕਟੈਂਸ ਸੀਗੇ ਮੈਂ ਕਿਹਾ ਫਿਰ ਆਪਣੀ ਮੇਰ ਗੱਲ ਕਰਨੀ ਤੇ ਫਿਰ ਐਂ ਕਰਨਾ ਪਿਆ ਕਿਉਂਕਿ ਇੱਕ ਦਿਨ ਮਹਿਮਨ ਚੱਲਦੀ ਬੈਠੇ ਬੈਠੇ ਆਇਆ ਸੀਗਾ ਕਿ ਗੁਰਜਬ ਸਿੰਘ ਤੇਰੀ 31 ਕਰਦਾ ਇੱਕ ਦਿਨ ਤੇ ਗੈਤ ਸ਼ਿਕਾਇਤ ਕਰੀ ਜਾਂਦਾ ਹੂੰ ਕਿ ਬਈ ਸ਼ਨਮਨ ਵੀ ਇਦਾਂ ਹੀ ਐ 31 ਚੀਜ਼ਾਂ ਦਿੱਤੀਆਂ ਹੋਣਗੀਆਂ ਇੱਕ ਜਿਹੜੇ ਨਹੀਂ ਦਿੰਦੀ ਉੱਥੇ ਹੀ ਵੜਦਾ ਜਾਦਾ ਕੇ ਕਿਸੇ ਨੇ 100 ਤੁਹਾਡੇ ਨਾਲ ਚੰਗੀਆਂ ਮਾੜੀ ਹੋ ਗਈ ਮੈਨੂੰ ਫੋਨ ਕੀਤਾ ਲਿਸਟ ਬਣ ਗਈ ਮੈਂ ਦੇਖਿਆ ਪਿੱਛੇ ਪੈ ਗਿਆ ਤੇ ਬਣਾ ਲੈਨੇ ਲਿਸਟ ਲਿਸਟ ਬਣਾਉਣ ਦੇ ਵਾਸਤੇ ਅਸੀਂ ਬੈਠੇ ਜੇ ਸਭ ਅੱਖਾਂ ਸਾਧੀਆਂ ਨਹੀਂ ਬੰਦੇ ਦੇ ਸਾਰਾ ਕੁਝ ਚੰਗਾ ਹੀ ਕੀਤਾ ਸੋ ਇੱਕ ਦੋ ਗੱਲਾਂ ਸੀ ਜਿਨ੍ਹਾਂ ਨੇ ਬਗਾਵਤ ਕਰ ਦਿੱਤੀ ਵੀ ਮੈਂ ਤੁਹਾਨੂੰ ਇਸ ਚੀਜ਼ 'ਚ ਕੋਆਪਰੇਟ ਨਹੀਂ ਕਰ ਸਕਦਾ। ਮੈਂ ਕਹਾਂ ਮੈਨੂੰ ਗੱਲ ਸੁਣੋ ਇਹ ਕੀ ਮੈਂ ਕਰਦੀ। ਲੱਭੋ ਤੁਸੀਂ ਦੇਖੋ ਤੁਸੀਂ ਇਸ ਬੰਦੇ ਦਾ ਕੀਤਾ ਇੰਨੇ ਕਿਰਤ ਕੰਮ ਉਹ ਜਿਹੜਾ ਉਹਨੇ 15 ਚੰਗੇ ਕੰਮ ਕੀਤੇ ਤੁਹਾਡੇ ਨਾਲ ਤੁਹਾਨੂੰ ਇੱਥੇ ਰੱਖਿਆ ਤਾੜ ਤੁਹਾਨੂੰ ਸੈਟਲ ਕੀਤਾ ਤੁਹਾਡੀ ਜੌਬ ਲਵਾਈ ਦੋ ਗੱਲਾਂ ਉਹਨੇ ਨਹੀਂ ਪੂਰੀਆਂ ਕੀਤੀਆਂ ਉਸੀ ਕੀ ਸਮਝਦੇ ਹੋ ਦੂਸਰਾ ਬੰਦਾ ਤੁਹਾਡੀ ਇੱਛਾਵਾਂ ਨੂੰ ਪੂਰਨ ਕਰਨ ਵਾਲੀ ਮਸ਼ੀਨ। ਤੁਸੀਂ ਤਾਂ ਕਦੇ ਫੋਨ ਕਰਕੇ ਇਹ ਤੁਸੀਂ ਜਗਾ ਜਗਾ ਕਹਿੰਦੇ ਫਿਰਦੇ ਵੀ ਤੁਸੀਂ ਤਾਂ ਥੈਂਕਸ ਕਰਦੇ ਹਾਂ ਸਾਡੇ ਕੋਲ ਇੱਕ ਪਰ ਸੱਚ ਪੁੱਛੇ ਤਾਂ ਚੰਗਾ ਵੀ ਬਹੁਤ ਕੀਤਾ ਕਰ ਸਕਦੇ ਹੋ। ਬਹੁਤ ਵੱਡੇ ਦੁੱਖ ਦਾ ਕਾਰਨ ਤੁਸੀਂ ਗੱਲ ਕੀਤੀ ਤੁਸੀਂ ਦੁਨਿਆਵੀ ਜ਼ਿੰਦਗੀ 'ਚੋਂ ਤੁਸੀਂ ਤੁਹਾਡਾ ਤੁਹਾਡਾ ਤੁਸੀਂ ਇੰਜੀਨੀਅਰਿੰਗ ਕੀਤੀ ਜ਼ਿੰਦਗੀ ਤੁਸੀਂ ਪੜ੍ਹੀ ਤੁਹਾਡੇ ਕੋਲ ਵਿਦਵਤਾ ਹੈ ਤੁਹਾਡੀ ਇੱਕ ਜ਼ਿੰਦਗੀ ਚ ਹੋਣ ਦਾ ਮੇਰਾ ਦੋਸਤ ਹੀ ਤੁਹਾਡੀ ਪੈ ਗਈ ਠੀਕ ਆ ਆਪਾਂ ਖੁੱਲ ਕੇ ਕੁਝ ਕੁ ਚੀਜ਼ਾਂ ਮੈਂ ਤੁਹਾਡੇ ਚ ਕਰੈਕਟ ਕਰਨ ਲੱਗਿਆ ਕਰੋ ਜੀ ਆ ਕਰੋ ਜੀ ਆ ਕਰੋ ਜੀ ਤੁਹਾਡਾ ਪਿਛਲਾ ਜ਼ਿੰਦਗੀ ਦਾ ਲੈਵਲ ਇਹ ਰਿਹਾ ਤੁਸੀਂ ਕਦੇ ਨਹੀਂ ਕਿਸੇ ਦੀ ਸੁਣੇ ਪਰ ਤੁਸੀਂ ਮੇਰੇ ਪਿਆਰ ਚ ਸੁਣਨ ਲੱਗ ਲਓ ਜੀ ਐ ਕਰ ਲੈਣਾ ਲਓ ਜੀ ਐ ਕਰ ਲੈਣਾ ਲਓ ਜੀ ਇੱਕ ਦਿਨ ਆਉਣੀਆ ਫਿਰ ਮੈਂ ਤੁਹਾਡੀ ਗਰਦਨ ਚ ਹੱਥ ਪਾਵਾਂ ਬਈ ਤੂੰ ਕੁਛ ਹੁਣ ਮੈਂ ਤੈਨ ਨਾਲ ਜੇ ਗੱਲ ਕਰਾਂਗਾ ਨਹੀਂ ਯੂ ਹੈਵ ਟੂ ਲਿਸਨ ਟੂ ਜੀ ਮੈਂ ਤੈਨੂੰ ਕੀ ਕਹੇ ਬਿਲਕੁਲ ਇਹ ਮਾਰ ਨਹੀਂ ਕੀਤਾ ਵੀ ਯਾਰ ਇੱਕ ਹਾਰਡ ਕੋਰ ਮੈਂ ਇਹ ਬੰਦਾ ਮੇਰੀ ਗੱਲ ਸੁਣ ਜਦ ਤੁਸੀਂ ਕਿਸੇ ਦੇ ਕੀਤੀ ਕੋਈ ਚੀਜ਼ ਨੂੰ ਭੁੱਲ ਜਾਂਦੇ ਸਿਰਫ ਇੱਕੋ ਹੀ ਗੱਲ ਵੀ ਹਾਂ ਇਹ ਮੈਂ ਗੱਲ ਔਰ ਤੁਸੀਂ ਕਈ ਵਾਰ ਉਹ ਜ਼ਿੰਦਗੀ ਚ ਕੁਝ ਚੀਜ਼ਾਂ ਦੱਸਿਆਂ ਦਾ ਮਿਹਣਾ ਵੀ ਮਾਰਦੇ ਆ ਬਿਲਕੁਲ ਜਦ ਮੈਨੂੰ ਟਾਈਮ ਮਿਲ ਗਿਆ ਹੁਣ ਮੈਨੂੰ ਸੱਚੀ ਅਸੀ ਇੱਕ ਵਾਰ ਮੈਂ ਅੰਗਰਜਸ ਨੂੰ ਵੀ ਮੈਂ ਨੰਗੇ ਪੈਰੀਆਂ ਤੁਰਿਆ ਜਾਂਦਾ ਸੀ ਤੇ ਮੈਂ ਅੱਜ ਗੱਡੀ 'ਚ ਬੈਠਾ ਹੋ ਕੇ ਕਹਣਾ ਉਹ ਦਿਨ ਭੁੱਲ ਗਿਆ ਜਦੋਂ ਅਕਸਰ ਹੁੰਦਾ ਮੈਨੂੰ ਨਹੀਂ ਪਤਾ ਜ਼ਿੰਦਗੀ ਦਾ ਸਾਰ ਕੀ ਆ ਮੈਂ ਆਪਣੇ ਕਵਚ 'ਚ ਰਹਾ ਤਾਂ ਮੈਂ ਦੁਖੀ ਆ ਮੈਂ ਕਵਚ ਤੋੜਦਾ ਤਾਂ ਬੰਦੇ ਮੇਰੇ ਪਾਉਂਦੇ ਬਿਲਕੁਲ ਦੇਖੋ ਸਭ ਤੋਂ ਪਹਿਲਾਂ ਜਿੱਦਾਂ ਹੁਣ ਆਪਾਂ ਗੱਲ ਕਰ ਰਹੇ ਆ ਸਭ ਤੋਂ ਪਹਿਲਾਂ ਤਾਂ ਜਿਹੜਾ ਓਵਰঅল ਐਟੀਟਿਊਡ ਜਦੋਂ ਮੈਂ ਆਪਣੀ ਗੱਲ ਕੀਤੀ ਹੈ ਇਹ ਦੋ ਚੰਗੇ ਕੀਤੇ ਤੁਹਾਨੂੰ ਰੱਖਿਆ ਤੁਹਾਨੂੰ ਲਿਆਇਆ ਤੁਹਾਡੇ ਕੀਤਾ ਮੈਂ ਤੁਹਾਡੀ ਸਾਰੀ ਗੱਲਾਂ ਮੰਨਦਾ ਰਿਹਾ ਮੰਨਦਾ ਰਿਹਾ ਮੰਨਦਾ ਰਿਹਾ ਫਿਰ ਤੁਸੀਂ ਰਾਈਟ ਸਮਝ ਲਿਆ ਆ ਹੁਣ ਕਿਉਂ ਕਿੱਦਾਂ ਅੱਗੇ ਹੋ ਸਕਦਾ ਇੱਕ ਲਿਖ ਕੇ ਰੱਖ ਲਿਓ ਕਾਪੀ ਪੈਨ ਨਾਲ ਜਿਹੜਾ ਅੱਜ ਵਾਸਤੇ ਕਿਸੇ ਦੇ ਕੀਤੇ ਵਾਸਤੇ ਥੈਂਕਫੁਲਸ ਹੈ ਨਾ ਉਹ ਭੁੱਲ ਜਾਏ ਨੂੰ ਜ਼ਿੰਦਗੀ ਵਿੱਚ ਕਦੇ ਖੁਸ਼ੀ ਮਿਲ ਸਕਦੀ ਹੈ। ਅੱਲਾਹ ਹੋਰ ਤਾਂ ਗੱਲਾਂ ਦੇ ਚੈਲੰਜ ਕਰਾ ਨਾ ਕਰਾਂ। ਇਸ ਗੱਲ ਤੇ ਮੇਰੇ ਕੋਈ ਲਿਓ। ਕਿਸੇ ਵੀ ਕਰਨ ਦੀ ਮਸ਼ੀਨ ਹੈ ਗੁਰੂ ਸਾਹਿਬ ਵੀ ਆ ਜਾਣ। ਗੁਰੂ ਸਾਹਿਬ ਪਹਿਲੇ ਬੋਝ ਨਹੀਂ ਸਨ, ਫੇਸ ਹੋਰ ਹੈ। ਮੈਂ ਤੁਹਾਨੂੰ ਤੁਹਾਨੂੰ ਨਾਲ ਮੈਂ ਇਹ ਵੀ ਦੱਸੀ ਜਾਣਾ ਤੇਰੀ ਬੈਟਰਮੈਂਟ ਲਈ ਹੈ ਇਹ ਹੈ। ਬਈ ਤੇਰੇ ਲਈ ਇਹ ਕਰ ਰਿਹਾ ਮੈਂ। ਬਿਲਕੁਲ ਇਉਂ ਨੀ ਸੋਚਿਆ ਵੀ ਜਿਹੜਾ ਬੰਦਾ ਮੈਨੂੰ ਕਦੇ ਇਉਂ ਜਿਹਦੇ ਤੋਂ ਮੈਨੂੰ ਭੈ ਆਉਂਦਾ ਸੀ ਯਾਰ ਇਹ ਬੰਦਾ ਬਹੁਤ ਪੜਿਆ ਲਿਖਿਆ ਇਹਨੇ ਕਿਤਾਬਾਂ ਪੜੀਆਂ ਮੈਂ ਇਹ ਨਾਲ ਕੀ ਗੱਲ ਕਰਨੀ ਤੇ ਹੁਣ ਜਦ ਮੇਰੇ ਨਾਲੋ ਚਾਹ ਪਾਣੀ ਪੀਂਦਾ ਹੱਸਦਾ ਖੇਡਦਾ ਹਰ ਰੋਜ਼ ਗੱਲਾਂ ਕਰਦਾ ਤੇ ਮੈਂ ਉਹਨੂੰ ਗੁੱਡੀ ਪਟੋਲਾ ਬਣਾ ਕੇ ਖੀਸੇ ਚ ਪਾ ਦਿਆ ਹਾਂ ਬਿਲਕੁਲ ਇਹ ਮਤਲਬ ਇੱਕ ਇਹ ਦੋਸਤਾਂ ਦੀ ਗੱਲ ਨਹੀਂ ਮੀਆਂ ਵੀ ਵਿੱਚ ਵੀ ਇਹ ਆ ਤੁਸੀਂ ਅੱਜ ਘਰ ਵਾਲੀ ਦੀ ਗੱਲ ਮੰਨਣ ਲੱਗ ਜਓ ਲਓ ਜੀ ਅੱਜ ਨਹੀਂ 7 ਵਜੇ ਆ ਜਾਂਦੇ ਘਰੇ ਅੱਜ 6 ਵਜੇ ਆ ਜਾਂਦੇ ਆ ਕੱਲ ਨੂੰ ਕਹਿੰਦੀ ਵੀ ਚੰਗਾ ਵਜੇ ਘਰੇ ਚਾਹੀਦਾ ਸੇਮ ਟੋਕ ਬੰਦਾ ਕਹਿੰਦਾ ਕਿੰਨੇ ਵਜੇ ਨਿਕਲਿਆ ਬੇਕਰੀ ਚੋਂ ਕੰਮ ਕਰਕੇ ਉਹ ਕਹਿੰਦੀ 3:30 4:05 ਮਿੰਟ ਤੇ ਘਰੇ ਚਾਹੀਦੀਆਂ ਫਰੂਟੀ ਕੰਨੋਂ ਸਾਮਾਨ ਲੈ ਕੇ ਇਹ 10 ਮਿੰਟ ਹੋਏ ਨੇ ਤਾਂ ਖਬਰ ਇਹ ਵੀ ਕਿਉਂਕਿ ਉਹ ਆਉਣ ਲੱਗ ਪਈ ਮੈਂ ਪਹਿਲਾਂ 5 ਵਜੇ ਆਉਂਦੀ ਸੀ ਰਸਤੇ 'ਚ ਰੋਕ ਕੇ ਕਿਸੇ ਦੋਸਤ ਕੋਲ ਕੁੜੀ ਕੋਲ ਬਹਿ ਕੇ ਦੁੱਖ ਸੁੱਖ ਕਰਦੀ ਉਹ ਇੱਕ ਦਿਨ 4:10 ਤੇ ਆ ਗਈ ਮੈਂ ਫਿਰ 4:10 ਤੇ ਫਿੱਟ ਹੋ ਗਿਆ ਸਭ ਤੋਂ ਵੱਡੀਆਂ ਮੁਸ਼ਕਲਾਂ ਸਮਝ ਨਹੀਂ ਆਉਂਦੀਆਂ ਸਭ ਤੋਂ ਜਿਹਨੂੰ ਆਪਾਂ ਸਮਾਲ ਗੱਲ ਆਦਮੀ ਨੂੰ ਕੋਈ ਖੁਸ਼ ਨਹੀਂ ਕਰ ਸਕਦਾ ਉਹਨੂੰ ਕੋਈ ਗੁਰੂ ਨਹੀਂ ਕੁਝ ਕਰ ਸਕਦਾ ਕੋਈ ਧਰਮ ਵੀ ਕੁਝ ਕਰ ਸਕਦਾ ਉਹਦੀ ਰੂਹ ਇਸ ਤੋਂ ਵੱਡਾ ਬੋਝ ਸਹਿ ਨਹੀਂ ਕਰ ਸਕਦੀ ਇਸ ਕਰਕੇ ਮੈਂ ਕਹਿਣਾ ਜੇ ਕਿਸੇ ਨੂੰ ਬੜੇ ਗਿਲੇ ਸ਼ਿਕਾਇਤ ਹੋਏ ਨਿੰਪਲ ਚੀਜ਼ ਹੈ ਇਹ ਸਿਪਲ ਚੀਜ਼ ਹੈ ਜਿਸ ਦੇ ਬੜੇ ਗਿਲੇ ਸ਼ਿਕਾਇਤ ਹੋਏ ਕਿਸੇ ਨਾਲ ਹੈ ਕਾਪੀ ਪੈਨ ਲੈ ਲਓ ਤੇ ਲਿਖ ਲਓ ਇਹ ਨਹੀਂ ਹੋ ਕੇ ਲਿਖੋ ਓਨੈਸਟਲੀ ਕਿਸੇ ਨੂੰ ਪੜਾਉਣ ਦੀ ਲੋੜ ਨਹੀਂ ਖੁਦ ਪੜੋ ਜਿਸ ਬੰਦੇ ਨਾਲ ਮੈਂ ਗੱਲ ਕਰ ਰਿਹਾ ਸੀਗਾ ਮੇਰੇ ਨਾਲ ਗੱਲ ਕਰਨੀ ਹੁਣ ਕਰ ਉਹਨੂੰ ਗਨਾਹ ਕਿ ਮੇਰੇ ਵੱਸੇ ਆ ਕੁਛ ਕੀਤਾ ਜਰਾ ਥੈਂਕ ਯੂ ਪਰ ਇੱਕ ਗੱਲ ਮੈਂ ਤੋਂ ਨਹੀਂ ਕਰ ਪਾਇਆ ਯੂ ਵਿਲ ਬੀ ਸਰਪ੍ਰਾਈਜ਼ਡ ਉਹ ਕਹਿੰਦਾ ਆ ਗੁਰਜਸ ਬਹੁਤ ਕਰਨਾ ਤਾਂ ਬ੍ਰੇਕ ਤਾਂ ਹੀ ਕਰਨਾ ਪਾ ਉਹ ਤੂੰ ਹੁਣ ਵੀ ਗਿਆ ਵੀ ਮੰਨ ਵੈਨ ਹੀ ਹੈਰਾਨ ਹੋਗੇ ਗਿਲ ਖੁਦ ਦੱਸਿਆ ਦੋਨੇ ਬੰਦੇ ਰੋਂਦੇ ਤੇ ਫੋਨ ਹਮ ਦੋਨੇ ਦੇ ਕਾਹਨ ਸੁਸੇਗੇ ਉਹ ਮੈਨੂੰ ਕਹਿੰਦਾ ਵੀ ਥੈਂਕ ਯੂ ਵੈਰੀ ਮਚ ਮੈਂ ਕਦੀ ਸੋਚੀ ਜਦੋਂ ਮੈਂ ਕਾਲਾ ਗੱਲਾ ਸਿੱਖਵਾ ਸੀ ਤੋਂ ਯਾਦ ਰੱਖੀ ਉਹ ਬੰਦਾ ਇੱਛਾਵਾਂ ਪੂਰੀ ਕਰਨ ਦੀ ਮਸ਼ੀਨ ਨਹੀਂ ਹੈਗਾ ਜਿੰਨਾ ਉਹਨੇ ਕਰਤਾ ਉਹਦਾ ਥੈਂਕਫੁਲ ਰਹਾ ਤੇ ਆਪਣੇ ਮੂੰਹ ਹੀ ਕਹਿੰਦਾ ਕਿ ਕੈਨੇਡਾ ਤੇ ਸਾਨੂੰ ਕੋਈ ਨਹੀਂ ਪੁੱਛਦਾ ਕਿੱਥੇ ਆਏ ਸੀ ਉਹਨਾਂ ਗੱਲਾਂ ਨੂੰ ਯਾਦ ਰੱਖੀ 31 ਦਿਨਾਂ ਨੂੰ ਯਾਦ ਰੱਖੀ ਇੱਕ ਗੈਪ ਪੁੱਜੀ ਇੱਕ ਸ਼ਰਤ ਥੱਲੇ ਇੱਕ ਜ਼ਿੰਦਗੀ ਇੱਕ ਦੂਜੇ ਵਾਂਗੂ ਨਹੀਂ ਤੁਰੀ ਜਾ ਸਕਦੀ ਆਪਾਂ ਦੋ ਭਾਈਆਂ ਸ਼ਰਤ ਥੱਲੇ ਰਹਨੇ ਆ ਮੈਂ ਤੁਹਾਡੇ ਸੁਭਾਅ ਨਾਲ ਜਿਉ ਨਹੀਂ ਸਕਦਾ ਬਾਈ ਜੀ ਤੁਸੀਂ ਤੇ ਬਲੱਡ ਰਿਲੇਸ਼ਨ ਜਿੱਥੇ ਸਾਰਾ ਕੁਝ ਤੁਸੀਂ ਸਲੈਂਡਰ ਕਰਦੇ ਆ ਜਿੱਥੇ ਉਹਦੇ ਲਈ ਸਾਰਾ ਇਨਪੁਟ ਕਰਦੇ ਜੇ ਉੱਥੇ ਤੁਸੀਂ ਇੱਕ ਦੂਜੇ ਨੂੰ ਆਪਣੀ ਜ਼ਿੰਦਗੀ ਦੇ ਣਕੂਲ ਬਣਾਉਣ ਨੂੰ ਫਿਰਦੇ ਆ ਇਹ ਇੰਪੋਸੀਬਲ ਹੈ ਦੇਖੋ ਜੀ ਦੂਜੇ ਨੇ ਤੁਹਾਡੇ ਵਰਗਾ ਹੁੰਦਾ ਤੇ ਪ੍ਰਮਾਤਮਾ ਨੇ ਦੋ ਬਣਾਉਣ ਦੀ ਲੋੜ ਹੀ ਨਹੀਂ ਉਹ ਇਕੱਲੇ ਹੀ ਬਣਾ ਦਿੰਦਾ ਇਕੱਲੇ ਹੀ ਬਣਾ ਦਿੰਦਾ ਕਾਰਬਨ ਕਾਪੀਆਂ ਉਹ ਬਣਾਉਂਦਾ ਕਾਰਬਨ ਕਾਪੀਆਂ ਨਹੀਂ ਦੀ ਕੁਆਲਿਟੀ ਕੀ ਬਿਲਕੁਲ ਦੂਸਰੀ ਗੱਲ ਜਿਹੜੀ ਮੈਂ ਸ਼ੇਅਰ ਕਰ ਮੈਂ ਕਹਿੰਦਾ ਕਿੱਥੇ ਗਲਤ ਹੋ ਜਾਂਦੀ ਆਪਾਂ ਇਹ 70 ਸਾਲ ਜੀਣਾ ਨਾ ਇਹਨੂੰ ਆਪਾਂ ਪਰਮਾਨੈਂਟ ਸਮਝ ਮੈਂ ਤੁਹਾਨੂੰ ਇੱਕ ਛੋਟੀ ਜੀ ਸੂਫੀ ਕਹਾਣੀ ਸੁਣਾਉਣਾ ਜੀ। ਸ਼ਾਇਦ ਤੁਹਾਨੂੰ ਚੰਗੀ ਲੱਗੇ। ਮੈਂ ਪੜੀ ਜਾ ਰਿਹਾ ਸੀ ਉਹਦੇ ਪਿੱਛੇ ਸ਼ੇਰ ਲੱਗਾ ਮਾਰੀ ਇੱਕ ਟਰੇਡ ਫਿਰਾਂ। ਉਹ ਟਰੇਡ ਨਾਲ ਲਟਕ ਗਿਆ। ਉਹਦੇ ਜਦੋਂ ਉਹ ਟਰੇਡ ਨਾਲ ਲਟਕਿਆ ਪਿੱਛੇ ਸ਼ੇਰ ਮੂੰਹ ਖੋਡੀ ਖੜਾ। ਹਮ ਤਾਂ ਥੱਲੇ ਨੂੰ ਥੱਲੇ ਦੋ ਸ਼ੇਰ ਹੋਰ ਖੜੇ। ਮੂੰਹ ਖੋਲੀ। ਉਹ ਦੇਖਦਾ ਫਿਰ ਉਹਨੇ ਪੀੜ ਜਿਹੜਾ ਜੜਾ ਉਸ ਨਗਰ ਦੇ ਪੀੜ ਪਿਆ ਜੇ ਵੀ ਚਿੱਟਾ ਤੇ ਇੱਕ ਕਾਲਾ ਚਿੱਟਾ ਤੇ ਕਾਲਾ ਸੂਫੀ ਤਾਂ ਕਹਿੰਦੇ ਤੇ ਰਾਤ ਜਿਹੜੀ ਹੌਲੀ ਹੌਲੀ ਤੁਹਾਡੇ ਤੁਸੀਂ ਖਤਮ ਹੋਣਾ ਇੱਕ ਦਿਨ ਤੇ ਕਾਲਾ ਤੇ ਚਿੱਟਾ ਚੂਹਾ ਉਹਨੂੰ ਖਾਣ ਲੱਗੇ ਹੋਏ ਸ਼ੇਰ ਮੂੰਹ ਖੋਲੀ ਖੜਾ ਇੱਕ ਜਿਹੜੀ ਸ਼ੇਰ ਖੜਾ ਔਰ ਪੀੜ ਹੌਲੀ ਹੌਲੀ ਡਿੱਗਦਾ ਪਿਆ ਤਾਂ ਉਹ ਡਰਿਆ ਥੋੜੀ ਦੇ ਰਸਤੇ ਕਿ ਹੁਣ ਕੀ ਹੋਊਗਾ ਪਰ ਸਟੋਰੀ ਕਹਿੰਦੀ ਹੈ ਸੂਫੀ ਬੜੇ मीनिंगफुल ਲੋਕ ਹੈ ਉਹ ਕੰਦੂ ਅਚਾਨਕ ਉਹਨੇ ਉੱਪਰ ਨੂੰ ਮੂੰਹ ਕੀਤਾ ਤੇ ਮਧੁਮੱਖਿਆ ਦਾ ਛੱਪਾ ਸਿਗਾ ਇੱਕ ਹੂੰ ਉਹਨੇ ਉੱਪਰ ਨੂੰ ਮੂੰਹ ਕੀਤਾ ਡਿੱਗਿਆ ਉਹਨੂੰ ਨੂੰ ਰੱਖਿਆ ਰੱਖੀ ਉਹਨੇ ਨਿਕਲਿਆ ਤੀਜਾ ਨਿਕਲਿਆ ਚੌਥਾ ਨਿਕਲਿਆ ਸੁਹੀ ਕੰਦੇ ਤੁਹਾਡਾ ਇਹ ਹਾਲ ਹੈ ਤੁਹਾਨੂੰ ਪਤਾ ਨਹੀਂ ਇਹ ਜੀਵਨ ਨੂੰ ਦਿਨ ਰਾਤ ਵੀ ਖਾ ਰਿਹਾ ਔਰ ਪਸ਼ਮਾਕਿ ਫੱਲੇ ਸ਼ੀ ਸ਼ੀਗਰਾਂ ਦਾ ਮੂੰਹ ਖੋਲੀ ਖੜੀ ਹੈ ਤੁਹਾਨੂੰ ਥੋੜੀ ਦੇਰ ਇੱਕ ਕਾਰ ਸ਼ਾਇਦ ਇੱਕ ਆੜ ਇੱਕ ਬੱਚੇ بیوی ਇੱਕ ਆੜ ਜਿਨ੍ਹਾਂ ਤੇ ਰਸ ਆਣ ਲੱਗ ਗਿਆ ਤੁਸੀਂ ਇਸ ਰਸ ਚ ਭੁੱਲ ਗਏ ਮੇਰੀ ਜ਼ਿੰਦਗੀ ਦੀ ਖੁਸ਼ੀ ਜਦ ਨਿੱਜੀ ਤੌਰ ਤੇ ਮੈਂ ਤੁਹਾਨੂੰ ਮੇਰੀ ਜ਼ਿੰਦਗੀ ਦੀ ਖੁਸ਼ੀ ਜਿਹੜੀ ਹੈ ਉਹ ਜਦ ਮੇਰੇ ਵਿੱਚੋਂ ਉੱਡਦੀ ਹੈ ਜਦ ਮੈਂ ਸੋਚਦਾ ਮੈਂ ਮਰ ਜਾਣਾ ਬਿਲਕੁਲ ਠੀਕ ਹੈ ਇਹ ਗੱਲ ਸਹੀ ਹੈ ਜਾਣੀ ਚਾਹੀਦੀ ਹੈ ਇਸ ਤਰ੍ਹਾਂ ਜਿਵੇਂ ਮੈਂ ਸੋਚਦਾ ਮੈਂ ਗਲਤ ਸੋਚ ਰਿਹਾ ਜਿਹੜਾ ਮੇਰੇ ਤਾਂ ਮੇਰਾ ਤਾਂ ਹਾਸਾ ਰੁਕ ਜਾਂਦਾ ਵੀ ਯਾਰ ਮੈਂ ਤਾਂ ਮਰ ਜਾਣਾ ਮੈਂ ਤਾਂ ਦੂਰਾ ਤੀਰਾ ਹੋਇਆ ਫਿਰਦਾ ਮੈਨੂੰ 20 ਸਾਲ ਹੋ ਗਏ ਦੇਸ਼ ਚ ਦਾ ਹੋ ਗਿਆ ਸਾਲਾਂ ਨੂੰ ਮੈਂ ਚੱਲੇ ਜਾਣਾ ਮੇਰੇ ਕੋਲ ਸਾਲ ਦੇ 20 ਨੇ ਟੋਟਲ ਇਹ ਨਹੀਂ ਢਿਨੇ 7000 ਟੋਟਲ ਜੀ ਸਰ ਇਹ ਜਦੋਂ ਇਸ ਤਰੀਕੇ ਨਾਲ ਕੋਈ ਸੋਚਦਾ ਨਾ 20 ਸਮਰਾਂ ਨੇ ਬਸ ਸਿਰਫ ਜਿਹੜੀ ਸਮਰ ਜਦੋਂ ਕੋਈ ਇਸ ਤਰੀਕੇ ਨਾਲ ਸੋਚਦਾ ਨਾ ਜੋ ਵੀ ਤੁਸੀਂ ਇਸ ਤਰ੍ਹਾਂ ਹੁਣ ਇਹ ਮਤਲਬ ਤੁਹਾਡੀ ਵੀ ਗੱਲ ਕਰ ਲੈਂਦਾ। ਹਮਮ। ਅਗਰ ਇਹ ਥੌਟ ਤੁਹਾਡੇ ਚ ਹੈਗਾ ਤਾਂ ਹੀ ਇੰਨਾ ਬੇਬਾਕ ਬੀ ਬੋਲ ਸਕਦੇ ਹੋ, ਬੀ ਹੈ ਨਾ ਕਿ ਨੂੰ ਡਰ ਲੱਗਦਾ। ਕੋਈ ਜੀ ਡਰ ਲੱਗਦਾ ਫਿਰ ਤੁਸੀਂ ਗੁਰਬਾਣੀ ਪੜ੍ਹ ਲਿਓ ਵੀ ਮਰਨ ਤੋਂ ਡਰ ਲੱਗਦਾ ਸ਼ਰਨ ਤੇ ਮਰਨ ਤੋਂ ਬਾਅਦ ਜਾਂਦਾ ਬ ਉਹ ਉਹ ਤਾਂ ਜੀ ਹੁਣ ਇਹ ਮਿਲੀਅਨ ਡਾਲਰ ਕੁਸਚਨ ਹੈ ਪਰ ਪਹਿਲਾ ਕੁਸਚਨ ਹੈ ਨੇ ਬੰਦਰ ਬੜਾ ਗਿਆਨੀ ਸੀਗਾ ਉਹਨੇ ਬੱਚਾ ਮੋਮਬਤੀ ਲਾ ਕੇ ਖੜਾ ਸੀਗਾ ਉਹ ਸੰਤ ਨੇ ਕਿਹਾ ਕਹਿੰਦਾ ਮੁੰਡੇ ਨੂੰ ਜਾਣ ਦਿੰਨਾ ਉਹ ਕਹਿੰਦਾ ਤੂੰ ਮੋਮਬਤੀ ਫੜੀ ਤੈਨੂੰ ਪਤਾ ਇਹ ਆਂਦੀ ਕਿੱਥੋਂ ਐ ਬੱਚੇ ਨੇ ਫੁਰਗੁਮਾਰੀ ਕਹਿੰਦਾ ਅੰਕਲ ਜੀ ਗਏ ਕਿੱਥੇ ਉਹ ਉਹਨੇ ਦਿਸ਼ਾ ਕਹਿੰਦਾ ਮਹਾਰ ਗਿਆ ਬੱਚੇ ਕੋਲੋਂ ਹਾਂ ਕਿਉਂਕਿ ਮੈਂ ਤਾਂ ਆਪਣੇ ਨੂੰ ਜਾਣ ਦੇਣ ਦੀ ਕੋਸ਼ਿਸ਼ ਕੀਤੀ ਵੀ ਤੂੰ ਜੋਤ ਸਰੂਪ ਆਇਆ ਕਿ ਤੂੰ ਕਹਿੰਦਾ ਥੋੜੀ ਡੂੰਘਾਈ ਚ ਉਤਰ ਨਹੀਂ ਪਾਊਗਾ ਗੱਲੀਆਂ ਬਾਤੀਆਂ ਗੱਲ ਸੋਲਵ ਨਹੀਂ ਹੋਣੀ ਗੱਲੀਆਂ ਬਾਤੀਆਂ ਸਿਰਫ ਇਸ਼ਾਰੇ ਹੋ ਸਕਦੇ ਆ ਜਿੱਦਾਂ ਮੈਂ ਤੁਹਾਨੂੰ ਕਿਹਾ ਵੀ ਜੀ ਤਾਂ ਨਜ਼ਰ ਹੈਗੀ ਲਾਈਫ ਦੇ ਉੱਪਰ ਜਿੱਦਾਂ ਹੁਣ ਤੁਸੀਂ ਗੱਲ ਜੇ ਲਾਈਫ ਦੇ ਉੱਪਰ ਨਜ਼ਰ ਹੈਗੀ ਹੈ ਤੇ ਲਾਈਫ ਦੇ ਵਿੱਚ ਮੌਤ ਤੇ ਵੀ ਨਜ਼ਰ ਰਹੂਗੀ ਜੇ ਸਿਰਫ ਨਜ਼ਰ ਜਿਹੜੇ ਸ਼ਾਇਦ ਦਿਖਦਾ ਪਿਆ ਉੱਤੇ ਹੀ ਫਸੀ ਹੋਈ ਹੈ ਤੇ ਇਗਨੋਰੈਂਸ ਆਫ ਲਾਜ਼ ਨੋ ਐਕਸਕਿਊਜ਼ ਪੀੜ ਵੀ ਕਦੇ ਨਾ ਕਦੇ ਡਿੱਗਣਾ ਸ਼ੇਰਾਂ ਦੇ ਮੂੰਹ ਵੀ ਖੁੱਲੇ ਹੋਏ ਆ ਤਾਂ ਅੱਗੇ ਜਾਣਾ ਹੀ ਜਾਣਾ ਮੈਂ ਤਾਂ ਉਹਨੂੰ ਕਹਿਣਾ ਸ਼ਾਇਦ ਦਾ ਸਵਾਦ ਲੈਣ ਨੂੰ ਮਮਣਾ ਨਹੀਂ ਕਰਦਾ ਲੇਕਿਨ ਨਾਲ ਨਾਲ ਆ ਦਿਨ ਰਾਤ ਉਹ ਬਿਲੀਅਨ ਈਅਰ ਪੁਰਾਣੀ ਹੋਏ ਵੱਡੀ ਆ ਸਕਿੰਟ ਜਾਂ 1 ਮਿੰਟ ਤੋਂ ਉੱਪਰ ਦੀ ਗੱਲ ਨਹੀਂ ਹੈ ਡਾਇਨਾਸੌਰਾਂ ਨੂੰ ਮਿਊਜ਼ੀਅਮ ਦੇ ਵਿੱਚ ਡਰਾਮਾ ਹੈਲਰ ਮੈਂ ਦੇਖਣ ਲੱਗਿਆ ਵੀ ਆਹ ਇੱਥੇ ਸੀ ਕਦੇ ਉਹ ਕਹਿੰਦੇ ਮੈਂ ਕਿਹਾ ਵੀ ਕੋਈ ਜਲਜਲਾ ਆਇਆ ਛੇਤੀ ਮਰ ਗਏ ਬਸ ਮੈਂਟਲ ਚ ਬਿਲਕੁਲ ਦੇਖੋ ਮੈਂ ਕਿਸੇ ਕਿਸੇ ਸੰਤ ਕੋਈ ਰਿਕਰਡ ਕੀਤਾ ਸੀਗਾ ਮੈਂ ਕੋਈ ਤੁਹਾਡੇ ਕੋਲ ਮੈਂ ਇੱਕ ਕਿਸ ਦਾ ਪੁੱਛਣਾ ਹੈ ਖੁਸ਼ੀਦਾਰ ਜ਼ਿੰਦਗੀ ਦਾ ਮੈਨੂੰ ਤੁਸੀਂ ਸਮਝਾ ਸਕਦੇ ਹੋ ਬਿਨਾਂ ਬਹੁਤ ਜਗਾ ਲੱਗ ਗਏ ਪਤਾ ਲੱਗਦਾ ਨਾ ਮੈਂ ਸੰਤ ਦਾ ਮਤਲਬ ਉਹ ਨਹੀਂ ਕਰ ਰਿਹਾ ਜਿਹੜਾ ਛੁਪ ਢੁਲੀਆਂ ਛਾਣੇ ਕਰਤਾ ਰਿਹਾ ਜਾਂ ਜਿਹੜਾ ਕਿ ਲੱਖ ਦਾ ਘੱਟ ਕਰਕੇ ਕਰ ਰਿਹਾ ਮੈਂ ਉਹਨਾਂ ਦੀ ਗੱਲ ਨਹੀਂ ਕਰ ਰਿਹਾ ਮੈਂ ਉਹਨਾਂ ਲੋਕਾਂ ਕੋਲ ਗਿਆ ਜਿਹੜੇ ਕਿ ਆ ਤੁਹਾਡੇ ਕਹਿੰਦੇ ਬਾਈ ਕਿਹੜਾ 15 ਲਵਿਆਣਾ ਨਾਲ ਪਪਾ ਠੀਕ ਆਪਾਂ ਮौज ਲੈ ਉਦਸਤਾ ਮੈਨੂੰ ਕਹਿੰਦੇ ਸਿੱਖ ਪਰਿਵਾਰ ਤੋਂ ਆਇਆ ਮੈਂ ਕਿਹਾ ਹਾਂਜੀ ਪਰਿਵਾਰ ਤਾਂ ਮੇਰਾ ਸਿੱਖੀ ਹੈ ਤਾਂ ਮੈਨੂੰ ਕਹਨ ਲੱਗੇ ਫਿਰ ਜੋ ਲਾਈਨ ਚ ਪੁੱਛੇ ਤਾਂ ਮੈਂ ਇੱਕ ਗੱਲ ਕਹਿ ਦਿੰਨਾ ਉਹ ਬਾਜੀ ਵੇਖਣਾ ਬਿਲ ਸੁਣਨਾ ਮੈਂ ਬਾਜੀ ਕਰਨਾ ਬਿਰਪੈਰੀ ਚੱਲਣਾ ਹੈ ਨਾ ਕਹਿੰਦੇ ਕਿੱਥੇ ਆ ਜਿਹੜਾ ਹੱਥੋਂ ਅੱਖਾਂ ਤੋਂ ਬਿਨਾ ਕੁਝ ਕਰ ਰਿਹਾ ਬਿਨਾ ਕੰਨਾਂ ਤੋਂ ਬਿਨਾ ਕਾਦੋ ਦੇਖ ਰਿਹਾ ਉਹ ਲੱਬਲਾ ਕਰ ਜਿੱਦ ਨਕਸ਼ਾ ਗੱਲ ਛੋਟੀ ਜਿਹੀ ਸੀਗੀ ਇਸੇ ਕਲੀ ਕਿਸੇ ਦੇ ਸਾਹਮਣੇ ਬੈਠੀਆਂ ਸਾਨੂੰ ਕਿਹੜੀ ਚੀਜ਼ ਚਲਾ ਰਹੀ ਹੈ ਕਿਹੜੀ ਚੀਜ਼ ਹੈ ਜੋ ਸਾਰਾ ਰੱਬ ਕੋਲ ਜੋ ਕਿਹੜੀ ਚੀਜ਼ ਹੈ ਜਿਹੜੀ ਫੂਡ ਨੂੰ ਡਾਈਜੈਸਟ ਕਰਦੀ ਪਈ ਆਪਣੇ ਅੰਦਰ ਕਿਹੜੀ ਚੀਜ਼ ਛੋਟੀ ਜੀ ਬੂੰਦ ਤੋਂ ਇਹਦਾ ਸਰੀਰ ਬਣਾਤਾ ਇੱਕ ਛੋਟੀ ਜੀ ਮੂਰਤੀ ਤੁਸੀਂ ਦੇਖ ਲਿਓ ਕਹਿੰਦੇ ਵਾਹ ਕਿੰਨੀ ਸੋਹਣੀ ਆ ਕਿਵੇਂ ਬਣਾਈ ਆ ਤੇ ਕਿੰਨੇ ਲਿਖੀ ਆ ਲੇਕਿਨ ਇਹ ਅਦਭੁਤ ਸਰੀਰ ਅਜੀਬ ਸਰੀਰ ਦੇਖ ਕੇ ਤੁਹਾਨੂੰ ਇਹ ਨਹੀਂ ਹੁੰਦਾ ਇੱਕ ਬੂੰਦ ਤੋਂ ਕਿਵੇਂ ਰਚਨਾ ਹੋ ਇੰਨਾ ਕੰਪਲੈਕਸ ਤੁਹਾਨੂੰ ਆਪਣਾ ਪਤਾ ਨਹੀਂ ਸਿਰਫ ਉਹਨੂੰ ਪਤਾ ਇੰਡੀਆ ਦੇ ਵਿੱਚ ਵੀ ਆਪਣਾ ਪਤਾ ਨਾ ਹੋਵੇ ਉਹ ਪੁਲਿਸ ਵਾਲੇ ਰੋਗਲਨ ਕਾਰ ਨੂੰ ਕਿੱਥੋਂ ਆ ਰਹੇ ਪਤਾ ਨਹੀਂ ਕਿੱਥੇ ਜਾ ਰਹੇ ਕਿ ਮੈਨੂੰ ਕਹਿੰਦੇ 109 ਦਾ ਚਲਾਨ ਕਾ ਉਤਰਾ ਫਿਰਦੇ ਪਤਾ ਹੈ ਨਹੀਂ ਕਿੱਥੋਂ ਆਏ ਕਿੱਥੇ ਜਾਣੇ 9 ਦਰਵਾਜ਼ਿਆਂ ਟੱਕਰ ਮਾਰਦੇ ਰੱਬ ਨੇ ਵੀ 109 ਦਾ ਚਲਾਨ ਕਰਨਾ ਤੇ ਨਾ ਤੈਨੂੰ ਪਤਾ ਤੂੰ ਹੈ ਕੌਣ ਨਾ ਤੂੰ ਲੱਭਿਆ ਤੂੰ ਕਿੱਥੇ ਗਿਆ ਅਸੀਂ ਸਾਰੇ 10 ਮਗਾ ਨੌ ਤੇਰਾ ਵੀ ਸੌ ਨੌ ਦੇ ਚਲਾਨ ਆਉਣਾ ਕੱਲੂ ਥਲੇ ਤਾਂ ਇਹ ਤਾਂ ਇਹ ਪੋਜੀਸ਼ਨ ਨੇ 30 ਸਾਲ ਪਹਿਲਾਂ ਜਦ ਰਾਤ ਨੂੰ ਘੇਰਦੇ ਸੀ ਉਹ ਕਹਿੰਦੇ ਸਾਨੂੰ ਪਤਾ ਹੀ ਅੱਛਾ ਵਪਾਰਕ ਤੋਂ ਬਾਅਦ ਛੋਟੇ ਛੋਟੇ ਨੁਕਤੇ ਲੋਕਾਂ ਨੂੰ ਦੱਸਿਓ ਠੀਕ ਹੈ ਆਪਣੀ ਜ਼ਿੰਦਗੀ ਨੂੰ ਦੱਸਿਓ ਬਈ ਹਾਊ ਯੂ ਕੈਨ ਬੀ ਹੈਪੀ ਠੀਕ ਛੋਟੇ ਛੋਟੇ ਆ ਚੀਜ਼ ਆ ਚੀਜ਼ ਆ ਚੀਜ ਮੈਂ ਕਦੇ ਕਦੇ ਪੜ ਕੇ ਸੁਣਾਉਂਦਾ ਹੁੰਦਾ ਸੀ ਅੱਜ ਤੁਸੀਂ ਦੱਸੋ ਚਲ ਵਪਾਰਕ ਨਿਸ਼ਾ ਤੋਂ ਮੁੜ ਕੇ ਬਾਸ ਮਨ ਜੀਵਨ ਚਰਚਾ ਹਰਿਆ ਗਰਜਤ ਸਿੰਘ ਪਿਛਲੇ ਦਿਨੀ ਦੋ ਸਾਡੇ ਬੱਚੇ ਐਡਮਿੰਟਨ ਚ ਜੀਣਾ ਦੀ ਮੌਤ ਹੋਈ ਹੈ ਨਵਦੀਪ ਸਿੱਧੂ ਹਰਮਨ ਮਾਗਟ ਹਰਮਨ ਮਾਗਟ ਦਾ ਅੰਤਿਮ ਸੰਸਕਾਰ ਇਸ ਸਸਨ ਕਿਰਵਾਰ 11 ਵਜੇ ਫਾਈਵ ਰਿਵਰ ਫਿਊਨਰਲ ਹਾਲ ਦੇ ਵਿੱਚ ਹੋਣਾ ਹੈ ਤੇ ਉਸ ਤੋਂ ਬਾਅਦ ਸ਼ਮੇਸ਼ਦ ਗੁਰਦਆਰਾ ਸਾਹਿਬ 1:30 ਵਜੇ ਅ ਬਿਛੜੀ ਰੂਹ ਦੀ ਸ਼ਾਂਤੀ ਲਈ ਅਰਦਾਸ ਇਹ ਮੰਗਟ ਪਰਿਵਾਰ ਦਾ ਪਰਿਵਾਰ ਹੈ ਪਿੱਛੋਂ ਸਰਦਾਰ ਦਰਸ਼ਨ ਸਿੰਘ ਮੰਗਟ ਹਰਮਨ ਮੰਗਟ ਦੇ ਪਿਤਾ ਜੀ ਅੱਛਾ ਭਾਈ ਜੀ ਛੋਟੀਆਂ ਛੋਟੀਆਂ ਗੱਲਾਂ ਦੇਖੋ ਤੁਹਾਡਾ ਪਿਆਰ ਨੂਰਪੁਰ ਵੈਦੀ ਰੋਪੜ ਦੇ ਨੇੜੇ ਛੋਟਾ ਜਿਹਾ ਕਸਬਾ ਇੱਕ ਉੱਥੇ ਦੇ 3:30 ਵਜੇ ਸਵੇਰ ਦੇ ਆਪਣੇ ਮਿੱਤਰ ਪਿਆਰੇ ਇਥੋਂ ਮਿਸ਼ਨ ਤੋਂ ਗਏ ਹੋਏ ਨੇ ਉਹ ਸੁਣ ਰਹੇ ਅੱਛਾ ਜੀ ਦੱਸਿਓ ਆਪਣੇ ਕੋਲ ਸਮਾਂ ਕਰ ਜਾਂਦਾ ਆਪਣੇ ਵੱਲੋਂ ਦੱਸੋ ਛੋਟੀ ਛੋਟੀ ਚੀਜ਼ਾਂ ਕਿਹੜੀਆਂ ਨੇ ਜਿਹੜੀਆਂ ਤੁਹਾਨੂੰ ਖੁਸ਼ ਕਰ ਸਕਦੀ ਸਭ ਤੋਂ ਪਹਿਲਾਂ ਅੱਪਾ ਚਲੋ ਇਸ ਤੋਂ ਡੂੰਘਾਈ ਤੇ ਬਾਅਦ ਅਗਲੀ ਵਾਰੀ ਗੱਲ ਕਰਾਂਗੇ ਆਪਣੇ ਜੋ ਤੇ ਮਨ ਕੁਝ ਇਹੋ ਜਿਹਾ ਕੰਮ ਲੱਭੋ ਜਿਹਦੇ ਤੁਹਾਡਾ ਦਿਲ ਕਰਦਾ ਜਿਸ ਤੋਂ ਤੁਹਾਨੂੰ ਮਜ਼ਾ ਆਉਂਦਾ ਯਾਦ ਰੱਖਿਓ ਪਰ ਮਜ਼ਾ ਮੱਛੀਆਂ ਖਾਈ ਜਾਓ ਮੈਂ ਕਹੂੰਗਾ ਤੁਸੀਂ ਆਪਣਾ ਖੁਸ਼ੀ ਲੱਭੋ ਕਿ ਜੀ ਤੁਹਾਨੂੰ ਆਨੰਦ ਦਿੰਦੀ ਹੈ ਹਰਟ ਨਾ ਹੋਵੇ ਦੂਸਰਾ ਹਰਟ ਨਾ ਹੋਵੇ ਕਿਉਂਕਿ ਅਸੀਂ ਸਾਨੂੰ ਕੀ ਹੈ ਸਾਨੂੰ ਕਈ ਵਾਰੀ ਦੂਸਰੇ ਨੂੰ ਹਾਰਟ ਕਰਕੇ ਸਵਾਲ ਹਸਣਾ ਹੋਰ ਗੱਲਾ ਪਰ ਕਿਸੇ ਹੋਰ ਤੇ ਹਸਣਾ ਹੋਰ ਗੱਲ ਹੈ ਹੈਨਾ ਇਹ ਸਿਰਫ ਉਹਨੂੰ ਹਸਣਾ ਆਂਦਾ ਵੈਰੀ ਗੁੱਡ ਪਰ ਨਾਰਮਲੀ ਅਸੀਂ ਕਿਸੇ ਹੋਰ ਤੇ ਹੱਸਦੇ ਆ ਹੈਨਾ ਦੂਸਰਾ ਵੀ ਇਨਸਪਾਇਰਡ ਰਹੋ ਜੋ ਕੁਝ ਵੀ ਹੋ ਰਿਹਾ ਔਰ ਤੀਸਰਾ ਇਹ ਹੈ ਕਿ ਜਿਹੜਾ ਦੇਖੋ ਇੱਕ ਚੀਜ਼ ਯਾਦ ਰੱਖਿਓ ਹੈਪੀਨੈਸ ਸਾਡਾ ਸਰਬਾਤਮਕ ਹੈ ਬੇਸਿਕਲੀ ਜਿਹੜਾ ਲਾਈਫ ਦੀ ਅਸੀਂ ਖੁਸ਼ੀ ਚ ਪੈਦਾ ਹੋਏ ਹੋਏ ਆ ਅਸੀਂ ਗਮਗੀਨ ਹੋ ਗਏ ਆ ਕੁਝ ਮਿਸ ਅੰਡਰਸਟੈਂਡਿੰਗਸ ਕਰਕੇ ਜਿਦਾ ਪਹਿਲੇ ਅਕਿਰਤ ਗੰ ਦਾ ਐਗਜ਼ਾਮਪਲ ਦਿੱਤਾ ਸੀਗਾ ਅਸੀਂ ਉਹ ਕੁਝ ਚੀਜ਼ਾਂ ਨੂੰ ਲੈ ਕੇ ਉਸ ਜਾਲਾ ਫਸ ਗਏ ਆ ਤੋ ਇਸ ਕਰਕੇ ਅਸੀਂ ਦੁਖੀ ਹੋਏ ਆ ਜੋ ਤੁਹਾਨੂੰ ਪਤਾ ਲੱਗਦਾ ਫਿਜ਼ੀਕਲ ਲੈਵਲ ਤੇ ਪਹਿਲੇ ਵੀ ਕਿਹਾ ਸੀ ਐਕਸਰਸਾਈਜ਼ ਕਰ ਲਓ ਕੋਈ ਕਿਸੇ ਤਰੀਕੇ ਦਾ ਮਿਊਜ਼ਿਕ ਸੁਣ ਲਓ ਸਵੇਰੇ ਸ਼ਾਮ ਥੋੜੀ ਜਿਹੀ ਆਪਣੇ ਨਾਲ ਅੱਜ ਦਾ ਦਿਨ ਵਧੀਆ ਨਿਕਲਿਆ ਸਵੇਰੇ ਉੱਠਦੇ ਹੋ ਗ੍ਰੈਟੀਟਿਊਡ 'ਚ ਉੱਠੋ ਤੇ ਇਹ ਛੋਟੇ ਛੋਟੇ ਛੋਟੇ ਛੋਟੇ ਗੱਲਾਂ ਹੈ ਨਾ ਇੱਕ ਬਾਕੀ ਦਿਲਮੇ ਤੇ ਦਲੀਲਾ ਜੰਦਾ ਹੀ ਰਹਿਣਾ ਹੂੰ ਮੈਂ ਤੁਹਾਨਾਂ ਨਾਲ ਪਹਿਲੇ ਵੀ ਇੱਕ ਵਾਰੀ ਗੱਲ ਕੀਤੀ ਸੀਗੀ ਉਹ ਲੁੱਟ ਪਾਈ ਹੈ ਵੀ ਜ਼ਗਾਦਰੀ ਦਿੱਲੀ ਕੇ ਦਲਾਲੋਂ ਨੇ ਸੌਦਾ ਤੇ ਵਿਗਾੜ ਦਿੱਲੀ ਮਤਲਬ ਦਲੀਲਾ ਨੇ ਵੀ ਆਨੇ ਕਿ ਦਿੱਲੀ ਕੇ ਦਲਾਲੋਂ ਨੇ ਸੌਦਾ ਤੇ ਵਿਗਾੜ ਦਿਆ ਅਬ ਲਾਹੌਰ ਕੋ ਛੋੜ ਅੰਮ੍ਰਿਤਸਰ ਜਾਏ ਹਨ ਅਬ ਲਾਹੌਰ ਨੂੰ ਲਿਆ ਹੋਰ ਲਿਆ ਹੋਰ ਲਿਆ ਹੋਰ ਨੂੰ ਛੱਡ ਦੇ ਹੁਣ ਤਾਂ ਅੰਮ੍ਰਿਤਸਰ ਚੱਲ ਹੈ ਹਨਾ ਅੰਮ੍ਰਿਤਸਰ ਕਿੱਥੇ ਅੰਮ੍ਰਿਤਸਰ ਜੇ ਐਕਚੁਅਲ ਖੁਸ਼ੀ ਚਾਹੀਦੀ ਹੈ ਸੋ ਇਟ ਛੋਟੀ ਛੋਟੀ ਗੱਲਾਂ ਜੋ ਕੁਝ ਵੀ ਤੁਸੀਂ ਕਰ ਰਹੇ ਜਿੱਥੇ ਪ੍ਰਮਾਤਮਾ ਨਾਲ ਰੱਖਿਆ ਹੋਇਆ ਜਿਵੇਂ ਮੈਂ ਪਹਿਲੇ ਕਿਹਾ ਗ੍ਰੈਟੀਟਿਊਡ ਨਹੀਂ ਹੈ ਵੀਨਾ ਜਿਹੜਾ ਆਦਿ ਉਹ ਲੱਗਾ ਕਿ ਤੈਨੂੰ ਉਹਦੇ ਵਾਸਤੇ ਕਿਤੇ ਕੋਈ ਖੁਸ਼ੀ ਨਹੀਂ ਹੈਗੀ ਇਹ ਤਾਂ ਮੈਂ ਕਹਿੰਦਾ ਤੁਸੀਂ ਇਹਨੂੰ ਤੇ ਬੇਸਿਕ ਕਾ ਕੇ ਸੋਣੀ ਸੀ ਉਹਦਾ ਚਾਰ ਪੈਗੀ ਵੀ ਲਾਲੇ ਹੁਣ ਆਪਣੇ ਪੂਰਾ ਇੰਤਜ਼ਾਮ ਕੀਤਾ ਸੀ ਜ਼ਿਆਰ ਅੰਦਰ ਤਾਂ ਹਮਮ ਲੇਕਿਨ ਉਹ ਰਾਤ ਤੁਹਾਡੇ ਕਿਨਾਰੇ ਖੜਾ ਰਿਹਾ ਤੁਹਾਡਾ ਸ਼ਰੀਰ ਸਾਫ਼ ਕਰਦਾ ਰਿਹਾ ਕੋਈ ਨਹੀਂ ਪੁੱਤ ਸਵੇਰੇ ਉੱਠ ਕੇ ਫਿਰ ਕੰਮ ਕਰਨੀ ਯਾ ਇਹ ਥੈਂਕਫੁਲਨੈਸ ਬਗਰ ਵੀ ਕਰਦਾ ਕਿ ਨ ਰਾਤ ਬੜਾ ਸਾਰਾ ਸ਼ਰੀ ਉਹ ਮਾਲ ਡਿੱ ਗਿਆ ਫੜਾ ਦੇ ਤੁਸੀਂ ਉਹ థాంక్స్ ਕਰਦੇ ਹੋ ਜਿਨੇ ਰਾਤ ਤੁਹਾਡੀ ਕੋਲ ਵੀ ਸਾਫ ਕੀਤੀ ਤੁਹਾਡਾ ਫੂਡ ਵੀ ਡਾਈਜੈਸਟ ਕੀਤਾ ਉਹ ਪਾਵਰ ਵਾਸਤੇ ਇੱਕ ਜਿਹੜੀ ਮਨ ਚ ਆ ਰਿਹਾ ਸੁੱਤੇ ਹੋਏ ਰਾਤ ਨੂੰ ਮੇਰਾ ਪੁੱਤ ਸਵੇਰੇ ਫਿਰ ਕੰਮ ਕਰ ਸਕੇ thankfulness deserve ਨਹੀਂ ਕਰਦੀ ਖੁਸ਼ੀ ਚਾਹੀਦੀ ਹੈ ਨਾ ਪਰ ਇਹ ਛੋਟੇ ਛੋਟੇ ਗੱਲਾਂ ਨੂੰ ਪਛਾਣਨਾ ਸਿੱਖੀ thankfulness deserve ਨਹੀਂ ਕਰਦੀ ਤੇ ਦੇਖੋ ਲਾਈਫ ਐਂਡ ਤੇ ਹੁੰਦਾ ਕੀ ਹੈ ਮੈਂ ਤੁਹਾਨੂੰ ਇੱਕ ਇੱਕ ساری ਮੈਨੂੰ ਬੜੀ ਪਸੰਦ ਆ ਕਿ ਸਾਹਿਬ ਕਿਸੇ ਹੋੜ ਦੀ ਲਾਈਨ ਆ ਉਹ ਕਹਿੰਦਾ ਨੀਂਹ ਮੁਦਤ guzri ਰਹਿੰਦੇ ਅੰਦਰ ਨਾ ਮੁਲਾਕਾਤ ਹੋਈ ਕਿੰਨੀ ਗੱਲ ਲੋ ਮਰਜੀ ਕਹ ਲੋ ਉਨਾ ਮੇਂ ਮੁੱਦਤ ਗੁਜ਼ਰੀ ਰਹਿੰਦੀ ਆ ਇੱਕ ਮਕਾਨ ਅੰਦਰ ਮੈਂ ਮੁਲਾਕਾਤ ਹੋਈ ਨਾਹੀਂ ਅਸੀਂ ਸੋਹਿਆਂ ਨਾਲ ਗੱਲ ਕੀਤੀ ਐਨ ਸੁੱਤਿਆ ਹੀ ਪ੍ਰਬਾਤ ਹੋਈ ਪੱਛੋ ਤਾਬਾ ਹੋਸੀ ਤਨਾ ਤਹੀਂ ਜਿਨ੍ਹਾਂ ਨਾਲ ਵਾਰਤਤਾ ਸਾਰੀ ਜ਼ਿੰਦਗੀ ਸੁੱਤੇ ਕਰ ਰਹੀ ਸੀ ਵਿੱਚ ਹੀ ਦਿਖ ਰਹੀ ਸੀ ਮੇਰੇ ਕੰਨਾਂ ਦੇ ਥਰੂ ਉਹ ਸੁਣ ਰਹੀ ਸੀ ਮੈਂ ਉਸ ਊਰਜਾ ਨੂੰ ਪਛਾਣਿਆ ਨਹੀਂ ਪਰ ਕਹਿੰਦਾ ਪੱਛੋ ਤਾਬਾ ਹੋਸੀ ਤਨਾ ਤਹੀਂ ਜਿਨ੍ਹਾਂ ਨਾਲ ਵਾਰਤਤਾ ਹੋਈ ਚਤੁਰਦਾਸ ਬੜਾ ਹੈਰਾਨ ਹੋਇਆ ਦਿਨ ਚੜ੍ਹਦੇ ਕਾਲੀ ਰਾਤ ਹੋਈ ਅਰਕੀ ਮਤਲਬ ਹੋਇਆ ਕਲਮੇ ਮੌਤ ਦੇ ਬੈੱਡ ਤੇ ਪਿਆ ਸੀ ਨਾ ਤੇ ਹਲਕੀ ਉਸੇ ਸਮਝ ਆਨ ਲੱਗੀ ਕਿ ਸਾਰੀ ਜ਼ਿੰਦਗੀ ਵੇਸਟ ਕੀਤੀ ਪਰ ਕਰਦਾ ਜੀ ਦਿਨ ਚੜਦੇ ਕਾਲੀ ਰਾਤ ਵੀ ਅੱਗੇ ਮੌਤ ਦੀ ਰਾਤ ਕਰ ਰਹੀ ਸੀ ਉਹ ਸਮਾਂ ਤੱਕ ਨਾ ਗਈਏ ਉਹਨੂੰ ਜੋ ਹੋ ਰਿਹਾ ਉਹਨੂੰ ਪਛਾਣਨਾ ਸਿੱਖੀਏ ਖੁਸ਼ੀ ਕਿਸੇ ਨੇ ਬਾਹਰੋਂ ਨਹੀਂ ਦੇਣੀ ਅਸੀਂ ਅਸੀਂ ਆਮ ਹੀ ਪੜਦੇ ਆ ਅੰਦਰ ਤੇਰੇ ਮਿਜ਼ਾਹ ਆ ਬਾਹਰ ਵਸਤਨਾ ਪਾਗ ਫਿਰ ਦੌੜੇ ਜਾਂਦੇ ਆ ਬਈ ਬਈ ਉਹਦਾ ਕਰੰਟ ਕੋਈ ਇੱਕ ਬਲਦ ਹੈ ਉਹ ਜਗਦਾ ਪਿਆ ਗੁਰੂ ਜੀ ਇੰਪੋਰਟੈਂਟ ਤੁਸੀਂ ਕੀ ਹੈ ਤਾਰਾ ਠੀਕ ਸਿੱਟਾ ਤੇ ਉਹਦੇ ਚ ਇਲੈਕਟ੍ਰਿਸਿਟੀ ਫਲੋ ਕਰੀਏ ਤਾਂ ਦੇ ਰਿਹਾ ਮੇਰੇ ਕਿਤੇ ਕਨੈਕਸ਼ਨ ਟੁੱਟੇ ਹੋਏ ਜੇ ਮੈਂ ਤਾਰ ਜੋੜ ਲਵਾਂ ਉਹ ਕਰੰਟ ਆਂਦਾ ਦਾ ਚਾਨਣ ਆਪੇ ਨਿਕਲਦਾ ਉਹ ਛੋਟੇ ਛੋਟੇ ਕੰਮ ਜਿਹੜੇ ਕਰ ਰਹੇ ਆ ਜਿੱਦਾਂ ਮੈਂ ਕਹਿੰਦਾ ਮੈਂ ਉਹਨਾਂ ਚੀਜ਼ਾਂ ਕਰ ਨਹੀਂ ਜਾਂਦਾ ਕਿਉਂਕਿ ਮੈਂ ਮੱਛੀ ਫੜਨ ਜਾਂਦਾ ਤਾਂ ਸੁਣਨਾ ਜਾਂ ਮੈਂ ਮੋਟਾ ਫੇਦੀ ਮਦਦ ਕਰ ਦੋ ਸਲਕਤੇ ਖੜੇ ਦੀ ਮਦਦ ਕਰ ਦੋ ਕਿੰਨੇ ਚਾਰ ਪੈਸੇ ਦੇ ਦੋ ਜਾਨੂਗਾ ਨੂੰ ਫੀਡ ਕਰ ਲਓ ਕੋਈ ਜਾ ਕੇ ਛਿਲਕਾ ਤਰਾਂ ਕਰ ਦੋ ਚੈਰਿਟੀ ਮੇਰੇ ਘਰੋਂ ਸਟਾਰਟ ਹੋਣੀ ਮੈਂ ਆਪਣੇ ਧੀਆ ਪੁੱਤਾਂ ਨੂੰ ਆਪਣੇ ਪਰਿਵਾਰ ਨੂੰ ਮੇਰੇ ਮਾਪਿਆਂ ਨੂੰ ਸਤਕਾਰ ਦੇਣਾ ਇੱਜ਼ਤ ਦੇਣਾ ਇਤਬਾਰ ਜਾ ਕੇ ਮੈਂ ਝੁਕੀ ਜਾਮਾ ਕਮਾਨ ਬਣੀ ਜਾਮਾ ਉਹਦਾ ਵੀ ਫਾਇਦਾ ਦੇਖੋ ਇੱਕ ਬੰਦਾ ਮੈਨੂੰ ਇਹ ਇਹ ਇਹ ਨਾ ਬੱਕਰਾ ਬਹੁਤ ਸਵਾਦ ਆ ਆਹ ਕੰਮ ਕਰਨਾ ਮੈਂ ਬੱਕਰੇ ਨੂੰ ਪ੍ਰੇਮ ਕਰਦਾ ਹੈ ਨਾ ਸਰ ਮੇਰੇ ਕੋਲ ਮੁੱਕਿਆ ਪੈ ਜੀਵਨ ਚਰਚਾ ਅਗਲੇ ਮੰਗਲਵਾਰ ਫੇਰ ਤੋਰਾਂਗੇ ਬਹੁਤ ਸਬਜੈਕਟ ਨੇ ਜੀ ਹਾਂਜੀ ਹਾਂਜੀ ਪਿਆਰ ਦਾ ਬਹੁਤ ਧਰੋ ਦਾ ਗਦਾਰੀ ਦਾ ਮਨੁੱਖੀ ਮੰਨਦਾ ਇਹਨੂੰ ਆਪਾਂ ਬੰਨ ਬਾਈ ਬਾਨ ਕੋਸ਼ਿਸ਼ ਨੇ ਗੱਲ ਕਰਨੀ ਹੋਈ 6047211004 ਨੰਬਰ 604 721 1000 ਤੇ ਮੈਂ ਕਦੇ ਵੀ ਗੱਲ ਕਰ ਸਕਦੇ ਹਾਂ ਥੈਂਕ ਯੂ ਵੈਰੀ ਮਚੀ ਫਾਰ ਦੀ ਟਾਈਮ ਥੈਂਕ ਸੋ ਮਚੀ ਪ੍ਰੋਗਰਾਮ ਦੇ ਬੋਡੀ ਵਰਕ ਦਾ ਕ ਸਾਮੀਦਾਰ ਗੈਂਡ ਕੰਪਨੀ 604864131 ਸਰੀ ਤੇ ਐਪਸਫੋਰਡ ਦੇ ਵਿੱਚ ਦਫਤਰ ਨੇ ਆਈਸੀਬੀਸੀ ਦੇ ਕੇਸ ਲੜਦੇ ਅਤੇ ਜਿੱਤਦੇ ਐ 6048646131 ਜੀਵਨ ਚਰਚਾ ਅਜੀਤ ਸਿੰਘ ਹੀਰ ਤੇ ਗੁਰਜੀਤ ਸਿੰਘ ਹੀਰ 3500 ਦੇ ਕਰੀਬ ਕਾਰਾਂ ਖੜੀਆਂ ਨਮੀਆਂ ਵਰਗੀਆਂ ਥੋੜਾ ਚੱਲੀਆਂ ਜਿਹੜੀਆਂ ਗੱਡੀਆਂ ਤੇ ਕਬ ਟ੍ਰੱਕ ਤੇ ਕੰਮ ਵਾਲੀਆਂ ਵਹਿਣਾਂ ਲਗਜ਼ਰੀ ਕਾਰ 604 5807755 ਜੈਰੀ ਬਰਾਡ 604782899 ਬੈਸਟੀ ਲੋਨ ਬੈਸਟੇ ਜੈਰੀ ਬਰਾਡ ਦੇ ਨਾਲ ਗੱਲਬਾਤ ਕਰਿਓ ਬੀਸੀ ਤੇ ਮਾਰਗੇਜ ਲੈਣੀ ਹੈ ਤਾਂ ਜੈਰੀ ਬਰਾਡ 7028289604 ਗ੍ਰੈਂਡ ਟਾਰਜ ਕੁਲਵਰ ਸਿੰਘ ਥੇੜਾ ਹਰਪਾਲ ਸਿੰਘ ਸੂਤ ਸੁੱਚਾ ਸਿੰਘ ਪੱਡਾ ਵੱਡੀਆਂ ਛੋਟੀਆਂ ਪਾਰਟੀਆਂ ਰਾਜਨੀਤਿਕ ਕੱਟ ਪਿੰਡੂਆਂ ਦਾ ਕੱਟ ਸੇਵਾ ਪੂਰੀ ਪਾਰਟੀ ਜਿਉਂ 600 ਸੋ 72 13 ਸਿੰਘ ਇੰਸ਼ੋਰੈਂਸ ਅਡੀਏ ਇੱਥੇ ਤੇ ਅਲਵਰਟਾ ਸੁਆਮਾ ਰਾਮਨ ਦੀ ਸਿੰਘ ਸੋਤਤਾ ਤੇ ਪਰਮੇਂਦਰ ਸਿੰਘ ਪੰਦ ਹਰ ਕਿਸਮ ਦੀ ਇੰਸ਼ੋਰੈਂਸ ਲਾਈਫ ਤੋਂ ਲੈ ਕੇ ਸ਼ਾਮਾ ਗਿੱਲ ਕੇਜ ਦੀ ਪਾਰਟੀ ਤੁਹਾਡੇ ਬਜਟ ਦੇ ਨਾਲ ਸਜਾਇਆ ਹੋਇਆ ਪੂਰਾ ਬੈਂਕਟ ਪਾਇਲ ਬਿਜ਼ਨਸ ਸੈਂਟਰ ਦੇ ਵਿੱਚ ਹੈ 604 598 7611 ਤੇ ਪਾਇਲਰ ਵਿਨਸੈਂਟਰ 'ਚ ਕਪਤਾਨਾਂ ਮੀਟ ਸ਼ਾਪ ਹੈ ਕੈਪਟਨ ਮੀਟ ਸ਼ਾਪ ਕੋਈ ਵੀ ਤੁਸੀਂ ਕਿਸੇ ਕਿਸਮ ਦਾ ਮੀਟ ਖਰੀਦਣਾ ਹੈ ਤੇ ਕੋਈ ਮੀਟ ਦਾ ਪਿਕਲ ਜਾਂ achar ਜਿਸ ਅਮਨ ਕੜਕਰੇ 64251314 aman.ca ਸਰੀ ਵੈਨਕੂਵਰ 'ਚ ਦਫ਼ਤਰ ਮੌਰਗੇਜ ਦੀ ਦੁਨੀਆ 'ਚ ਵੱਡਾ 9 aman.ca ਵੈਬਸਾਈਟ ਹੈ aman@aman.ca ਅਮਨ ਖੜਕਰੇ ਮਹਿਕ ਰੈਸਟੋਰੈਂਟ ਨਮੀ ਮੈਨੇਜਮੈਂਟ ਦੇ ਨਾਲ 604 585 3331 94 ਤੇ ਸਕੌਟ ਤੇ ਸਵਾਦਲੇ ਖਾਣੇ ਤੇ ਵਧੀਆ ਸਜਾਇਆ ਹੋਇਆ ਦੇ ਵਿੱਚ ਵੀ ਆਪਾਂ ਅੱਗੇ ਗਏ ਤੇ ਆਸ ਕਰਦਾ ਕਿ ਤੁਸੀਂ ਪ੍ਰੋਗਰਾਮ ਪਸੰਦ ਕੀਤਾ ਹੋਵੇਗਾ ਹੋਰ ਇਸ ਵਧੀਆ ਬਣਾਵਾਂਗੇ ਕੱਲ ਨੂੰ ਕਹਾਣੀ ਤੁਹਾਡੇ ਸਨਮੁਖ ਕੋਈ ਸ਼ਬਦ ਜੇ ਆ ਤੁਹਾਡੇ ਅਨੁਕੂਲ ਨਾ ਹੋਵੇ ਮਾਫੀ ਇਹਦੇ ਤੇ ਕਿਸੇ ਨੂੰ ਅਸ ਤੇਸ ਪਹੁੰਚੀ ਹੋਵੇ ਉਸਦੇ ਲਈ ਵੀ ਮਾਫੀ ਗਰਜਤ ਸਿੰਘ ਬਲੋਂ ਵੀ ਉਹਨਾਂ ਨੇ ਵੀ ਕਿਹਾ 604 7211004 ਅਖੀਰ ਦੇ ਵਿੱਚ ਇੱਕ ਵੀ ਤੁਹਾਡੇ ਲਈ ਤੇ ਕੱਲ ਨੂੰ 11 ਵਜੇ ਸੰਦੇਹਾ ਫੇਰ ਫਤਿਹ ਬੁਲਾਉਣਾ ਆ ਕੇ ਰੱਬ ਰੱਖ